ਤੇ ਸੰਤਨ ਕੇ ਪਾਸ ਸਹੀ ਸਾ ਭਗਵੰਤ ਸਹੀ ਸਾ ਭਗਵੰਤ ਭਗਵੰਤ ਸੇ ਭਗਵੰਤ ਸੇ ਸਹੀ ਸਾ ਭਗਵੰਤ ਭਗਵੰਤ ਸੇ ਸੱਚ ਸੰਪੇ ਸੱਚ ਸੰਪੇ ਹਰ ਰਾਸ ਹਰ ਰਾਸ ਉਹੀ ਸਾਦੇ ਸਹੀ ਸਾ ਭਗਵੰਤ ਭਗਵੰਤ ਭਗਵੰਤ ਸੇ ਉਹ ਭਗਵੰਤ ਅਜਿਹਾ ਤੇ ਆ ਗਿਆ ਉਹੀ ਪਗਿਸ਼ਾਲੀ ਦੇ ਭਗਵੰਤਲੇ ਪਗਾਂ ਵਾਲੇ ਦੇ ਭਗਵੰਤ ਕਿਸੇ ਰੱਬ ਦਾ ਰੋ ਨਹੀਂ ਪਰਮੇਸ਼ਰ ਦਾ ਰੋ ਭਗਵੰਤ ਤੋਂ ਉਹਦਾ ਰੋ ਜੀ ਨੇ ਆਪਣਾ ਕੰਮ ਸਵਾਰ ਲੈ ਜੋ ਖਰੀਦ ਲੈਣ ਆਇਆ ਸੀ ਉਹ ਮਿਲ ਗਿਆ ਤਾਂタル ਦੀ ਜੀ ਪ੍ਰਾਪਤੀ ਹੋ ਗਈ ਉਹ ਬਹੁਤ ਹੈ ਪਗਾਂ ਵਾਲਾ ਅਰ ਅ ਭਗਵ ਸੰਸਾਰ ਦੇ ਲੋਕ ਜੀ ਇਹ ਦੋ ਲਫ਼ਜ਼ ਨੇ ਜੇ ਅਪਾਗਾ ਕੋਈ ਭਾਗਾ ਵਾਲਾ ਵੀ ਹੈ ਜੇ ਭਾਗਾ ਵਾਲਾ ਕੋਈ ਅਪਾਗਾ ਵੀ ਹੋ ਕਿਉਂਕਿ 2 ਲੱਖ ਅਪਾਵਰੋਧੀ ਨੇ ਥੇ ਕੌਣ ਹੁੰਦਾ ਝੂਠੇ ਆਵੇ ਝੂਠੇ ਜਾਵੇ ਝੂਠੇ ਬਰੇ ਅਪਾਕੇ ਕੋ ਕਹ ਪੜਿਆ ਸੂਚਾ ਭੋਜਨ ਖਾਓ ਐੱਟੇ ਦਾ ਸੂਚਾ ਤੋਂ ਖਿਹੜਾ ਜਿੱਥੇ ਬੈਠ ਕੇ ਵੇ ਭੋਜਨ ਛਕੋ ਸੁਚੇਤ ਹੋ ਬੈਠ ਕੇ ਭੋਜਨ ਛਕਣਾ ਚਾਹੀਦਾ ਗੱਲ ਠੀਕ ਹੈ ਪਰ ਸੱਚ ਤਾਂ ਹੈ ਮੰਨੂ ਕਰਨਾ ਸੀ ਮਨ ਦੇ ਵਿੱਚੋਂ ਰਹਿੰਦਾ ਹੋਰ ਛਕਣੇ ਸੀ ਜਿਆਦਾ ਬ੍ਰਹਮ ਗਿਆਨੀ ਨੂੰ ਭੋਜਨ ਗਿਆਨ ਦਾ ਤਾਂ ਮਨ ਪਹਿਲਾਂ ਸੁਚੇਤ ਕਰ ਲੈਣਾ ਸੀ ਸੁਚੇਤ ਹੋ ਬੈਠ ਕੇ ਹੀ ਛਕਦਾ ਉਹ ਗੱਲ ਤਾਂ ਇਹ ਸੀ ਬਾਹਰ ਲੱਪਣ ਲੱਗੇ ਸੁਚੇਤ ਕਰਨਾ ਬਹਾਰਾ ਵਾਲਾ ਬਖਤਾ ਦੇ ਕਹਤੇ ਕੱਲ ਸਾਰੀ ਅੰਦਰ ਲਈ ਸੀ ਸਾਰੀ ਬਾਹਰ ਬੜੀ ਇਸ ਕਰਕੇ ਕਹਿਆ ਗੁਰਬਾਣੀ ਦੇ ਸਭ ਕੁਝ ਘਰ ਮੈਂ ਜੋ ਗੁਰਬਾਣੀ ਦੇ ਲਿਖਿਆ ਹੋਇਆ ਸਾਰਾਈ ਅਰਥ ਕਰੋ ਉਦਰੋ ਹਿਰਦੇ ਚੋ ਬਣੇ ਇਹ ਹਿਰਦੇ ਨਾਲ ਰਿਲੇਟਡ ਹੈ ਸਭ ਕੁਝ ਜੇ ਬਹਾਰਾ ਲਈ ਕੋਈ ਮਿਸਾਲ ਹੈ ਉਹ ਮਿਸਾਲ ਹੈ ਮਿਸਾਲ ਹੈ ਸਿਰਫ ਪ੍ਰਮਾਣ ਹੈ ਪ੍ਰਮਾਣ ਹੈ ਬਾਹਰਲਾ ਇਸ਼ਾਰਾ ਦਰਵਾਲੇ ਗਿਆ ਉਂਗਲੋਂ ਇਸ਼ਾਰਾ ਕਰਦੀ ਹੈ ਵੀ ਉਹ ਦੇਖੀ ਹੈ ਪ੍ਰਮਾਣਤਾ ਉਂਗਲ ਇਸ਼ਾਰਾ ਬਾਹਰ ਨਹੀਂ ਬਾਟੋਲੇ ਸੇ ਪਰ ਮੁਲਈ ਸਭ ਕੁਝ ਬਾਟੋਲਿਆ ਜਿਹਨਰੇ ਉਹਨਾਂ ਨੇ ਕੰਡਤ ਬਾੜੀ ਬਾਟ ਬਾੜ ਜਦ ਪਾੜੀ ਗਈ ਤੇ ਸਭ ਕੁਝ ਹੀ ਬਾਹਰ ਰਖ ਲਿਆ ਚੱਕ ਸਿ ਬ੍ਰਹਮ ਦੀ ਜਾਣਕਾਰੀ ਸਿ ਆਤਮਾ ਦੀ ਜਾਣਕਾਰੀ ਆਤਮਾ ਗਿਆਨ ਇੰਦਰੀਆਂ ਦੇ ਪਰੇ ਹੈ ਇਹ ਜਿਹੜੀ ਗਿਆਨ ਇੰਦਰੀਆਂ ਦੇ ਪਰੇ ਉਹਦੀ ਜਾਣਕਾਰੀ ਮਨ ਬੁੱਧੀ ਗਿਆਨ ਇੰਦਰੀਆਂ ਤੋਂ ਗਾਂ ਨਹੀਂ ਜਾ ਸਕਦੀ ਉਹਨੂੰ ਹੈ ਗਿਆਨ ਇੰਦਰੇ ਇਹਨੂੰ ਗਹਾਂ ਦੀ ਦ੍ਰਿਸ਼ੀ ਦੇਣ ਵਾਸਤੇ ਉਹ ਦ੍ਰਿਸ਼ਟੀ ਨਤਾ ਖਾਲੇ ਵਿੱਚ ਆਖਾਂ ਬਾਜੋ ਵੇਖ ਲੋ ਦੋ ਪਾਵਰ ਕੰਨਾ ਥਰੂ ਹੈ ਬਿਲਕੁਲ ਨਹੀਂ ਛੋਡੋ ਨਾ ਪੈਰਾਂ ਦੇ ਵਿੱਚ ਹੈ ਜਿੱਥੇ ਜਾਣਾ ਹੈ ਦਰਸ਼ਨ ਕਰ ਪੈਰਾਂ ਬਾਜੋ ਚੱਲ ਨਾ ਹੱਥਾਂ ਨਾਲ ਕੋਈ ਸੇਵਾ ਕੀਤੀ ਜਾਏ ਮੇਰੇ ਹੱਥੀਂ ਕਰ ਫਿਰ ਹੈ ਕਿ ਉਹ ਨਾਨਕ ਖਸਮ ਪਿਛਾੜ ਕੇ ਨਰਨ ਕਾ ਹੁਕਮ ਕਾ ਹੁਕਮ ਕੇ ਤੂੰ ਖਸੂਦ ਮਿਲ। ਹੁਕਮ ਪਛਾਨ ਕੇ ਹੁਕਮ ਪਛਾਨ ਕੇ ਹਾਕਮ ਨੂੰ ਮਿਲ ਲੋ। ਖਸੂਦ ਉਹਨਾਂ ਹਾਕਮ ਦੇ। ਜੇ ਹੁਕਮ ਨੂੰ ਪਛਾਨ ਲਈਏ ਤਾਂ ਹਾਕਮ ਨੂੰ ਮਿਲ ਲਈ ਹਾਕਮ ਨੂੰ ਧੀ ਸਮਝ ਆ ਜਾਂਦੀ ਹੈ। ਨਰਨ ਨੂੰ ਹਾਕਮ ਦੀ ਸਮਝ ਆ ਜਾਂਦੀ ਹੈ ਦਾ ਸੁਭਾਅ ਹੈਗੇ। ਜੇ ਜੱਜ ਰਬਾ ਦੇ ਕੇ ਕਿਹੜਾ ਜੱਜ ਰੇਸ਼ਵਤ ਲੈ ਕੇ ਛੱਡ ਦਿੰਦਾ ਹੈ। ਕਿਹੜਾ ਨਹੀਂ ਲੈਂਦਾ ਕਿਹੜਾ ਸਖਤ ਹੈ ਕਿਹੜਾ ਨਰਮ ਪਤਾ ਲੱਗਦਾ ਉਹਦੇ ਹੁਕਮ ਤੋਂ ਪਤਾ ਲੱਗਦਾ ਉਹਦਾ ਸੁਭਾਅ ਪਰਮੇਸ਼ਰ ਦੇ ਹੁਕਮ ਤੋਂ ਪਰਮੇਸ਼ਰ ਦਾ ਉਹਦਾ ਰੱਖਿਆ ਤੇ ਸੁਭਾਅ ਦਾ ਅਸੀਂ ਉਹਦਾ ਸੁਭਾਅ ਦਾ ਪਤਾ ਕਰਕੇ ਕਰਦ ਲਗੀ ਹੈ ਆਪਣਾ ਸੁਭਾਅ ਉਹ ਹੀ ਜਾ ਉਹਦੇ ਅਨੁਸਾਰ ਬਣਉਂਦਾ ਤਾਂ ਹੈ ਕੋਕੋ ਵਿੱਚ ਰਹਿ ਕੇ ਜੋਰੇ ਹੁਕਮ ਪਾੜੇ ਚੱਲਾਂਗੇ ਜੇ ਹੁਕਮ ਪਛਾਣਿਆ ਨਹੀਂ ਤਾਂ ਉਹ ਚੱਲਾਂਗੇ ਕਿਉਂ ਦੇ ਹਕਮ ਨੂੰ ਸਮਝੇ ਬਿਨਾਂ ਉਹ ਚੱਲਿਆ ਨਹੀਂ ਆ ਸਕਦਾ ਜੇ ਗੁਰਬਾਣੀ ਹੁਕਮ ਦਾ ਹੀ ਵਿਸਥਾਰ ਹੈ ਜੇ ਗੁਰਬਾਣੀ 'ਚ ਜੋ ਕਿਹਾ ਗਿਆ ਉਹ ਹੀ ਹੁਕਮ ਬਕਾਇਆ ਸਭ ਹੁਕਮ ਹੋ ਜਿਓ ਤਾਂ ਇਹਨੂੰ ਐਗਜ਼ੈਕਟਲੀ ਸਮਝਣਾ ਜ਼ਰੂਰੀ ਹੈ ਹੁਕਮ ਵਿੱਚ ਚੱਲਣ ਵਾਸਤੇ ਜਿੱਤੋ ਇਹ ਲਾਰਟੀਕਲ ਤੇ ਸਮਝਿਆ ਗਿਆ ਉੱਥੇ ਡ੍ਰੈਸ ਪਾਸ ਹੋ ਜੂ ਹੁਕਮ ਹੁਕਮ ਦੀ ਅਵਗਿਆ ਹੋ ਜੂ ਉੱਥੇ ਅਵਗਿਆ ਖੜਿਓ ਤਿੱਖੀ ਬਾੜੋਂ ਨਿੱਕੀ ਐਡੀ ਸੌਖੀ ਨਹੀਂ ਸਮਝਣੀ ਇਹ ਤਬਾਰਕ ਜਾਣਾ ਜਿਹੜੇ ਬਾੜਕ ਜਾਣਾ ਉਹ ਬਰੀਕ ਗੱਲ ਬਹੁਤ ਐ ਬਾੜੋਂ ਨਿੱਕੀ ਐ ਬਰੀਕ ਆ ਕੋ ਬਾੜੋਂ ਬਰੀਕ ਹੁੰਦਾ ਨਾ ਬਾੜ ਤੋਂ ਠੀਕ ਐ ਗੱਲ और खड्डा तो तिखी भी है तारो दी जे अबगया होगी अब हो हो रस्ता ही पटखजूगा एक अबगया होई होई रस्ता पटखजूगा बिल्कुल ही रास्ता दिशाहीन हो जांदे एकथों ते बगया होई जे पुण्य पाप मान लिया अबगया होगी रस्ता खत्म हो गए रास्ते री आसता जे जन्म मरण मान लिया रास्ते री होगी ਰਸਤੇ ਤੇ ਚੱਲ ਨਹੀਂ ਸਕਦਾ ਤੇ ਹੋਰੇ ਪਾਸੇ ਚਲਾ ਜਾਊਗਾ ਮਾਇਆ ਵਾਲੇ ਪਾਸੇ ਤੁਰ ਕੇ ਦੋਹਾਂ ਦੀ ਵਗਿਆ ਹੋਈ ਹੋਈ ਐ ਸਖੋਂ ਕੋਲ ਪਾਪ ਵੀ ਬਣਿਆ ਹੈ ਜਾਂ ਉਭਰਣ ਵੀ ਬਣੇ ਵੱਡੀਆਂ ਗੱਲਾਂ ਦੋ ਇਹ ਤੇ ਛੋਟੀਆਂ ਆ ਜਾਂਦੀਆਂ ਨੇ ਛੋਟੀਆਂ ਤਾਂ ਵੱਡੀਆਂ ਦੇ ਆ ਜਾਂਦੀਆਂ ਛੋਟੀ ਵਗਿਆ ਤਾਂ ਵੱਡੀ ਵਗਿਆ ਵੱਲ ਚਲਾ ਜਾਏਗਾ ਹਾਂਜੀ ਸਹੀ ਸਾਹ ਭਗਵੰਤ ਸੇ ਸਹੀ ਸਾਹ ਸੇ ਪਹਿਲੀ ਗੱਲ ਇਹ ਆਈ ਅਸੀਂ ਸਾਰੇ ਆ ਮਤਾਂ ਸਾਰੇ ਦੁਨੀਆ ਭਗਵੰਤ ਪਰਮੇਸ਼ਰ ਵਾਸਤੇ ਲੁਭਾਇਆ ਹੋਇਆ ਨਾ ਭਗਵਾਨ ਨਾ ਭਗਵੰਤ ਪਰਮੇਸ਼ਰ ਵਾਸਤੇ ਸ਼ਬਦ ਨਹੀਂ ਹੈ ਇਹ ਉਹ ਆਦਮੀ ਵਾਸਤੇ ਸ਼ਬਦ ਹੈ ਜਿਹੜਾ ਸੰਸਾਰ ਦੇ ਵਿੱਚ ਸਤਉਚ ਸਤਉਚ ਆਖਵੇਂ ਸੰਸਾਰ ਦੇ ਵਿੱਚ ਚਤਰਪਤੀ ਰਾਜੇ ਨੇ ਪੰਡਤ ਨੇ ਸੂਰਵੇਰੇ ਚਤਰਪਤੀ ਰਾਜਾ ਤਖਤ ਬਰਾਬਰ ਤਖਤ ਦੇ ਬਰਾਬਰ ਕੋਈ ਨਹੀਂ ਭਗਤ ਵਾਸਤੇ ਬਗੋਲਤਾ ਹੈ ਲਗਦਾ ਔਰ ਇਹਨਾਂ ਚੇ ਬੜੇ ਮਹਾਨ ਨੇ ਜਿਹਨੇ ਆਣੇ ਜਿਹੜੇ ਛਤਰਪਤੀ ਰਾਜੇ ਦੇ ਬ੍ਰਿਆਮ ਨੇ ਸੂਰਮੇ ਨੇ ਪੰਡਤ ਦੇ ਗੁੜੀ ਗਿਆਨੀ ਨੇ ਕਿੱਡੇ ਉੱਚੇ ਕਿਹਨੇ ਜਦ ਅਸਲ ਸਾਥ ਸਭ ਤੋਂ ਉੱਪਰ ਕੌਣ ਹੈ ਭਗਤ ਉੱਚੇ ਤੋਂ ਉੱਚਾ ਭਗਵਾਨ ਦਾ ਉੱਚਾ ਨਹੀਂ ਕੋਈ ਹੈ ਹੀ ਨਹੀਂ ਸੱਚਖੰਡ ਦਾ ਕੋਈ ਉੱਚਾ ਨਹੀਂ ਹੈ ਨਹੀਂ ਉਹਦਾ ਤਾਂ ਗੱਲ ਨਾ ਕੋਈ ਉੱਥੇ ਤਾਂ ਕਿਸੇ ਦਾ ਕੋਈ ਸ੍ਰੀਕਾ ਹੈ ਹੀ ਨਹੀਂ ਇੱਥੇ ਉੱਚਾ ਦੀ ਵੀ ਗੱਲ ਤਾਂ ਉੱਥੇ ਜਾ ਅੱਛਾ ਜਦ ਉੱਥੇ ਦੀ ਗੱਲ ਆਈ ਹੈ ਜਿਹੜਾ ਭਗਵੰਤ ਹੈ ਜਿਹੜਾ ਇੱਥੇ ਭਗਵੰਤ ਉੱਥੇ ਦਾਸ ਹੈ ਇੱਥੇ ਦਾ ਭਗਵੰਤ ਬਨ ਆਪਣੇ ਹੈ ਸਭ ਤੋਂ ਨੀਚਾ ਜਿਹੜਾ ਆਪਣੇ ਮੰਨ ਤੇ ਆਪਣੇ ਆਪ ਨੂੰ ਸਭ ਤੋਂ ਨੀਚਾ ਮੰਨਦਾ ਹੈ ਉਹ ਸਭ ਤੋਂ ਨੀਚਾ ਤੋਂ ਆਪਨ ਕੋ ਜੋ ਜਾਣ ਉੱਚਾ ਸੋਏ ਗਣੀਏ ਸਭ ਤੋਂ ਨੀਚਾ ਤੇ ਨੀਚਾ ਜਿਹੜਾ ਇੱਥੇ ਭਗਵਾਨ ਬਣ ਗਿਆ ਆਪ ਗੁਰੂ ਬਣ ਗਿਆ ਆਪ ਸਭ ਤੋਂ ਨੀਚਾ ਹੋ ਉਹ ਤੋਂ ਨੀਚਾ ਉਹਦਾ ਹੰਕਾਰੀ ਹੈ ਜਿਹੜਾ ਇੱਥੇ ਸੰਤ ਕਹੋਦਾ ਉੱਚਾ ਫੜਦਾ ਸਭ ਤੋਂ ਨੀਚਾ ਹੈ ਗੁਰੂ ਨੂੰ ਦੁਨੀਆ ਸੰਤ ਕਹੇ ਕਬੀਰ ਨੀ ਸੰਤ ਕਹਦਾ ਆਪਣੇ ਆਪ ਨੂੰ ਗੁਰੂ ਦੀ ਕੋਈ ਆਪਣੇ ਆਪ ਨੂੰ ਸੰਤ ਕਹਿਣਾ ਜਾਣ ਕੇ ਮੈਂ ਜਨ ਤੇਰਾ ਮੋਹਿਣਾ ਬਸਾਰੋ ਮੈਂ ਜਨ ਤੇ ਬਹਿ ਜਨ ਤੇ ਜਨ ਨਾਨਕ ਮੰਗੇ ਤੂੜ ਤਨ ਪ੍ਰਭ ਸਰੂਪੀ ਦਰ ਪਰਿ ਕਿਹਦਾ ਦੀ ਜਿਹੜੇ ਪ੍ਰਭ ਦੀ ਛੱਡ ਚੱਲੇ ਗਏ ਉਹਦੇ ਦੁਆਰੇ ਤੇ ਜਾ ਕੇ ਉਹਦੀ ਛੱਡ ਉਹਨਾਂ ਦੀ ਤੂੜ ਬੋਗਦਾ ਜੋ ਮੈਂ ਤੋਂ ਪਹਿਲਾਂ ਗਏ ਫਿਰ ਜੋ ਪਹਿਲਾਂ ਗਏ ਨੇ ਤੂੜ ਕੀਦੀ ਐ ਦਾਸ ਕੀ ਦਾ ਹੋਵੇ ਤੇਰੇ ਦਸਲ ਦਸਾਂ ਦੇਖੋ ਪਰਮੇਸ਼ਰ ਦਾ ਦਸ ਨਹੀਂ ਐ ਕੋਈ ਚੀਜ਼ ਨਹੀਂ ਸੁਮندر ਕੀ ਐ ਸੁਮندر ਬਾਹਰ ਜਕ ਲੋਰ ਸੁਮندر ਇੱਕ ਨੋ ਦਿੱਤਾ ਹੈ ਆਪਣੇ ਆਪ ਵਿੱਚ ਸੁਪੁੱਤਰ ਸਭ ਕੁਝ ਆਰ ਕੁਛ ਵੀ ਨਹੀਂ ਸਭ ਕੁਝ ਹੁੰਦਾ ਹੋਇਆ ਵੀ ਕੁਛ ਨਹੀਂ ਤੂੜ ਜੇ ਸਮੁੰਦਰ ਦੀ ਇੱਕ ਬੂੰਦ ਕਰਦੀਏ ਸਮੁੰਦਰ ਕਿੱਥੇ ਗਿਆ ਉਹਦਾ ਕਠੀਰ ਕਰਕੇ ਸਮੁੰਦਰ ਹੈ ਜੇ ਖਜ਼ਾਨੇ ਦਾ 1 ਕਰੋੜ ਰੁਪਇਆ ਸਭ ਨੂੰ ਵੰਡ ਦਈਏ ਖਜ਼ਾਨਾ ਕਿੱਥੇ ਗਿਆ ਖਜ਼ਾਨਾ ਕਿਸੇ ਬੇੜੇ ਦਾ ਲੋਨੀ ਹੈ ਖਜ਼ਾਨਾ ਜਿਹੜਾ ਤੇ ਪੈਰ ਤਲ ਪੈ ਉਹਦਾ ਰੋਹ ਹੈ ਜਦ ਗੱਡੀ ਚਲਾ ਤੇ ਕਿ ਜਾਂਦਾ ਰਹੇ ਬਾਇਆ ਪੈਸੇ ਤੱਕਦੇ ਖਜ਼ਾਨਾ ਜਾ ਰਹੇ ਬੇੜੇ ਦੋਂ ਤੇ ਬਿੜੇਲਾ ਉੱਥੇ ਹੀ ਹੈ ਬਿੜੇਲਾ ਲੋਕ ਜਨ ਨਹੀਂ ਸਾਰੇ ਭਗਤ ਜਿੱਥੇ ਇਕੱਠੇ ਬੈਠੇ ਨੇ ਉਹਨਾਂ ਦੀ ਇਕੱਠੇ ਬੈਠਣ ਦਾ ਉਹਨਾਂ ਦੀ ਸਤ ਸੰਗਤ ਦਾ ਲੋ ਇਸ ਬੁੱਧਰ ਯੂਨਿਟੀ ਦਾ ਲੋ ਪਿਉਰਿਟੀ ਦਾ ਲੋ ਉਸ ਬੁੱਧਰਕੀ ਧਰਤੀ ਦਾ ਜੇ ਇੱਕ ਐਟਮ ਜੇ ਕਰਤੀ ਹੈ ਅਲੱਗ ਧਰਤੀ ਕਿੱਥੇ ਜਾਊ ਤਾ ਠੀਕੜਾ ਬਣੀਏ ਤਾਂ ਧੀ ਬਾਚੇ ਬਣੀ ਜੇ ਤਿੱਕੇ ਦਾ ਐਟਮ ਕਰਦੀ ਕਿੱਥੇ ਜਾਊ ਧਰਤੀ ਐਟਮ ਜੇ ਡਿਵਾਈਡ ਹੋ ਗਈ ਬਸ ਇਸ ਕਰਕੇ ਉਹ ਜਿਹੜੀ ਇਕੱਠੇ ਸਾਰੇ ਹੁਣ ਉਹ ਕਿੱਥੇ ਗਿਆ ਸਮੁੰਦਰ ਸਾਗਰ ਚ ਕੀ ਨ ਬੂੰਦਾ ਲੈ ਇਹ ਪਰਮੇਸ਼ਰ ਦੀ ਰੈਵੀਲੇਸ਼ਨ ਹੈ ਤੇ ਪਰਮੇਸ਼ਰ ਬਾਰੇ ਇਹ ਗੱਲ ਸਾਗਰ ਚ ਕੀ ਹੁੰਦਾ ਬੂੰਦਾ ਹੀ ਹੁੰਦੀ ਹੈ ਮੈਨੂੰ ਦੱਸੋ ਪੰਕਤੀ ਦਾ ਕੀ ਬਸ ਹੋਸੀ ਲਿਖੋ ਗੁਰੂ ਗ੍ਰੰਥ ਸਾਹਿਬ ਜੀ ਕੀ ਅਰਥ ਸੀ ਇਹ ਲਿਖੋ ਕੀ ਲੋੜ ਸੀ ਇਹਦੀ ਲਿਖੋ ਕਾਰੇ ਪ੍ਰਥਾਏ ਲਿਖੀ ਗਏ ਕੀ ਸਭ ਕਹਿ ਦਿੱਤੇ ਸਾਗਰ ਕੁਝ ਨਹੀਂ ਹੁੰਦਾ ਬੂੰਦਾ ਰਸੂਰ ਕਹਿੰਦੇ ਬੂੰਦਾ ਦਾ ਘੱਟਾ ਸਾਗਰ ਹੈ ਤਹਾਦਰ ਮਹਿਬੂਦ ਬੂਦ ਮੇ ਸਾਗਰ ਓਟ-ਓਟ ਪਰਮੇਸ਼ਰ ਇਸ ਕਰਕੇ ਉਹ ਪਰਮੇਸ਼ਰ ਜਿਹੜਾ ਸ਼ਬਦ ਹੈ ਉਹ ਸਾਰਿਆਂ ਦੇ ਵਿੱਚ ਹੀ ਹੈ ਸਾਰੇ ਇਕੱਠੇ ਨੇ ਤਾਂ ਪਰਮੇਸ਼ਰ ਹੈ ਕੱਲਾ-ਕੱਲਾ ਨਹੀਂ ਕੱਲਾ-ਕੱਲਾ ਦਾਸ ਦਾਸਾਂ ਜਿਹੜਾ ਲੱਭੇ ਸਮੁੰਦਰ ਦੀ ਸੰਚ ਲੈ ਲੈ ਉਹ ਦੇਸਾਂ ਵਿੱਚ 10 10 ਹਾਂ ਜਿਹੜੇ 10 ਬਹੁਤ ਬਚਨ ਹਸੂਦਰ ਉਹਦੇ ਦੇਸਾਂ ਚ ਲੱਗੇ ਉਹਦੇ ਦੇਸਾਂ ਵਿੱਚ ਸਾਰੇ 10 ਆਪਣੇ ਕੱਲਾ ਕੱਲਾ ਕੱਢੀਏ ਸਾਰੇ 10 ਹਾਂ ਇਕੱਠੇ ਨੇ ਜਿਹੜਾ ਜੁੜੀ ਹੈ ਉਹਦਾ ਪਰਮੇਸ਼ਰ ਉਹ ਵੀ ਪਰਮੇਸ਼ਰ ਕੱਲਾ ਜੋਤ ਕਰਕੇ ਨਹੀਂ ਹੈ ਉਹ ਵੀ ਜੋ ਸਰੀਰ ਕਰਕੇ ਨਹੀਂ ਮਿਲੇ ਜਾ ਜੋਤ ਕਰਕੇ ਨਹੀਂ ਮਿਲੇ ਹੋਏ ਆਪ ਸੱਚੀ ਜੋਧ ਕਰਕੇ ਵੱਖਰੇ ਵੱਖਰੇ ਨੇ ਸਾਰੇ ਉਹ ਸ਼ਬਦ ਕਰਕੇ ਹਾਂ ਇਛਾ ਕਰਕੇ ਸੋਚ ਕਰਕੇ ਇਕੱਠੇ ਨੇ ਜੋਧ ਕਰਕੇ ਵੱਖਰੇ ਵੱਖਰੇ ਨਹੀਂ ਤਾਂ ਵੱਖਰਾ ਵਜੂਦ ਇਹਨਾਂ ਲੋਨ ਦਾ ਜੋਧ ਕਰਕੇ ਵੱਖਰੇ ਵੱਖਰੇ ਨੇ ਸੋਚ ਕਰਕੇ ਇਤਨੇ ਜੋ ਇਤਨਾ ਸੋਚ ਗੜਣਾ ਹੁਣ ਤਾਂ ਜੋਤਾਂ ਵਾਂਗਰੇ ਕਰਕੇ ਵੱਖਰੇ ਵੱਖਰੇ ਕਦੇ ਇਕੱਠੀ ਨਹੀਂ ਹੋ ਸਕਦੀ ਸੋਚ ਇਕੱਠੀ ਹੋ ਜੋਤ ਕੱਢੀ ਕਿਹੜੀ ਹੁੰਦੀ ਹੈ ਹੁਣ ਸਵਾਲ ਇਹ ਆ ਜੋ ਜਲ ਮੈਂ ਜਾਂਦਾ ਸੰਪੂਰਨ ਜਦ ਇੱਕ ਹੋ ਉਹ ਜੋਤੀ ਜੋਤ ਰਣ ਜਦ ਇੱਕ ਹੋ ਜਾਂਦਾ ਫੇਰ ਨਹੀਂ ਕਿਸੇ ਜਰਣ ਦਾ ਕਿਰਕ ਰਹਿਦਾ ਨਹੀਂ anek ek anek mil gaya mil gaya kive anek anek milne ek jyot hoke jad mili sach khand parameshwar ch अनेक ਦੇ सामने ਇੱਕ ਛੋਟਾ एक ਜਿ ਨਹੀਂ ਮਿਲਿਆ ਨਾ ਨਾ ਨਾ ਨਾ ਇਤੋਂ ਵੀ ਸਾਹਮਣੇ ਇੱਕ ਹੀ ਹੈ ਇਹ ਨਹੀਂ ਹੋਣਾ ਇਹੀ ਹੈ ਇੱਕ ਅਨੇਕ ਮਿਲ ਗਿਆ ਮਿਲ ਗਿਆ ਜਾਂ ਰਹਿਿਆ ਜਾਂ ਮਿਲ ਰਿਹਾ ਮਿਲ ਰਿਹਾ ਇੱਕ ਸਮਾਨ ਜਿਹੜਾ ਪਹਿਲਾ ਮਾਨਸੀ ਨਾ ਉਹਦਾ ਜਿੱਥੇ ਜੇ ਸਮਾਇਆ ਉਹਦਾ ਸਮਾਸ ਇੱਕੇ ਹੋਇਆ। ਉਹ ਜਿਹੜਾ ਏਕ ਹੋਇਆ ਗਾਂ ਅਨੇਕ ਥੁਰਿਆ। ਇਹ ਸਭ ਲੱਗੇ ਗੱਲ ਦੀ ਉੱਥੇ ਬਹਿਣਾ। ਜਦ ਮਨ ਸਮਾਇਆ ਉਹਦਾ ਇੱਕ ਚ ਸਮਾਇਆ। ਜਦ ਏਕ ਹੋ ਗਿਆ ਫਿਰ ਨਹੀਂ ਕੁਝ ਸਮਾਇਆ ਫਿਰ ਅਨੇਕ ਚ ਬਣੇ। ਇੱਕ ਅਨਿੱਕੇ ਨੂੰ ਰਿਹਾ ਇੱਕ ਸਮਾਨਾ ਇੱਕ ਹਾਂ ਇੱਕ ਸਮਾਨਾ ਇੱਕ ਗਿਆ ਉਹ ਮਾਨ ਜਿਹੜਾ ਅਸੀਂ ਪਹਿਲਾਂ ਜਿਹੜਾ ਪਹਿਲਾਂ ਸੁਭਾਇਆ ਨਾ ਪਹਿਲਾਂ ਮੰਨੋ ਉਹ ਮਿਲ ਕੇ ਤਾਂ ਇੱਕ ਬਣ ਜਾਏ ਇਹ ਜੇ ਇੱਕ ਚ ਸੁਭਾਇਆ ਤਾਂ ਹੀ ਕੋਹੇ ਅਸਲ ਜੇ ਮੰਨ ਤਾਂ ਆਪਣੇ ਮੂਰਜੇ ਸੁਭਾਇਆ ਹੈ ਮੂਰਜੇ ਸੁਭਾ ਕੇ ਕੋਹੇ ਇਹਨਾਂ ਨੇ ਇੱਕ ਚ ਸੁਭਾਇਆ ਹੋਇਆ ਮਾਨ ਵਰਕ ਤੇਵਾ ਜਿਹਨ ਜੀਰੋ ਸੀ ਕਹਿੰਦੇ ਉਹਦੇ ਵਿੱਚ ਹੀ ਨਾ ਬਸ ਹੋਇਆ ਅੱਕੇ ਹੰਸ ਇਕੱਲਾ ਦੇ ਵਿੱਚੇ ਬਗਲਾ ਕਹਿੰਦੇ ਆ ਇੱਕ ਕਹਿੰਦੇ ਸੀ ਜਿੱਤਰੂ ਕੇ ਅੰਡੇ ਦੇ ਵਿੱਚ ਅੰਡਾ ਜਿਹੜਾ ਉਹ ਵੀ ਇੱਕ ਸਿਰਫ ਮਹਿਦੂਦ ਹੈ ਉਹ ਅਪਹਾਗਾ ਹੈ ਭਗਵੰਤ ਨਹੀਂ ਹੈ ਜਿੰਨਾ ਜਰ ਭਰਮ ਕਾ ਅੰਡਾ ਭਗਵੰਤ ਨਹੀਂ ਹੈ ਜਨਮ ਹੈ ਭਗਵੰਤ ਹੈ ਆ ਉਹੀ ਭਗਵੰਤ ਸੇ ਕੌਣ ਨੇ ਭਗਵੰਤ ਸਹੀ ਸਭ ਭਗਵੰਤ ਸਹੀ ਸ਼ਾ ਸਾਰਿਆਂ ਦਾ ਸ਼ਾ ਸ਼ਾ ਸ਼ਾ ਸਾਲ ਦੇ ਰਸ ਹਲੂ ਸਾਹ ਕਹਿੰਦੇ ਨੇ ਦਾ ਸਾਸ ਵੈਸੇ ਦਾ ਸਾਸ ਕਹਿੰਦੇ ਨੇ ਸੇਈ ਸ਼ਾ ਭਗਵੰਤ ਸੇ ਸ਼ਾ ਹੁੰਦੇ ਨੇ ਜਿਹਨ ਕੋ ਨਾਮ ਤਾਂ ਹੋਵੇ ਸ਼ਾ ਹੁੰਦੇ ਨੇ ਨਾਮ ਤਾਂ ਭਗਵੰਤ ਸੇ ਭਾਗਵਾਲੇ ਨੇ ਹੋ ਬੜਾ ਭਾਗੀ ਭਗਵੰਤ ਭਗਵਾਨ ਇੱਕ ਵਾਸਤੇ ਆਏ ਨੇ ਸਾਰੇ ਇੱਕ ਵਾਸਤੇ ਜੇ ਸਭ ਤੋਂ ਵੱਡੇ ਭਾਗਨ ਸੰਸਾਰ ਨੂੰ ਸੇ ਸੋ ਭਗਵੰਤ ਸੇ ਭਗਵੰਤ ਸੇ ਸੇ ਸੱਚ ਸੰਪੇ ਹਰ ਰਾਸ ਸੱਚ ਸੰਪੇ ਹਰ ਰਾਸ ਜਿਨ੍ਹਾਂ ਨੇ ਸੱਚ ਦੀ ਸੰਪਤੀ ਜਿਨ੍ਹਾਂ ਦੀ ਸੰਪਤੀ ਸੱਚ ਹੈ ਸੱਚੀ ਹਰ ਰਾਸ ਹਰ ਰਾਸ ਰਾਸ ਜੋਤ ਦਾ ਗਿਆਨ ਉਹਨਾਂ ਕੋਲ ਜਾਤਦਾ ਦਾ ਗਿਆਨ ਨਹੀਂ ਹਰ ਰਾਸ ਹਰ ਰਾਸ ਮੇਰੀ ਮਨ ਉੱੜ ਜਾ ਹਰ ਰਾਸ ਮੇਰੀ ਮਨਵੜ ਜਾ ਰਾ ਸਤ ਗੁਰ ਤੇ ਰਾਸ ਜਾਨ ਜਾਨ ਨਾਨਕ ਸੱਚ ਸੁੱਚ ਪਾਈ ਹੈ ਨਾਨਕ ਸੱਚ ਤੇ ਸੰਤਰਪੁਤ ਕੀ ਹੈ ਸੱਚ ਕੀ ਹੈ ਸੁੱਚ ਵੀ ਚਾਹੀਦੀ ਹੈ ਸੁੱਚੇ ਸਹੀ ਨਾਨਕਾ ਜਿਸ ਮਨ ਵਸਿਆ ਸੋਈ ਸੋਈ ਮਨ ਨੇ ਸੁਚਾ ਹੋਣਾ नहीं होना ਹੋਣਾ ਮਨ ਸੁਚਾ ਹੋ ਸਕਦਾ ਸੱਚਾ ਨਹੀਂ ਹੋ ਸਕਦਾ ਸੁਚਾ ਤਾਂ ਹੋ ਸਕਦਾ ਸੱਚਾ ਨਹੀਂ ਹੋ ਸਕਦਾ ਸੱਚਾ ਚੱਤੇ ਰਹੂ ਸੁਤੋ ਲੱਗੇ ਸੁਤੋ ਇਹ ਜਦ ਮਲੀਨ ਹੈ ਮਨ ਸੁਚਾ ਨਹੀਂ ਹੈ <coughs> माया दी अंदर वो है माया राजे तक जदों वकार वकार नु जगह दे रदा अपने अंदर मेरा सोचा नहीं है झूठे आवे झूठे जावे झूठे हो रहे हो बाप माया पकड़ ली है <coughs> तो झूठा हो <गे। coughs> ये माया छोड़ दे त्याग दे वो छोड़ दे सच्चा हो गए इन्हें सच्चा होने सच्चे ने आगे ਸੱਚੇ ਦੇ ਦੇ ਮੰਦਰ ਵਿੱਚ ਬੈਠਣਾ ਹੈ ਮੰਦਰ ਭਾਂਡਾ ਸੁੱਚਾ ਹੁੰਦਾ ਹੈ ਭਾਂਡਾ ਸੁੱਚਾ ਹੀ ਹੁੰਦਾ ਸੁੱਚਾ ਇਹਦਾ ਭਾਂਡਾ ਬੰਦਾ ਭਾਂਡਾ ਹੀ ਹੈ ਬਸ ਤਾਂ ਭਾਂਡਾ ਹੀ ਹੈ ਕੀ ਪਾਉਣਾ ਵਿੱਚ ਇਹਦੇ ਵਿੱਚ ਸੱਚ ਪਾਉਣਾ ਤਾਂ ਸੁੱਚਾ ਹੁੰਦਾ ਤਾਂ ਹੀ ਸੱਚ ਪਹੁੰਚੇ ਸੁੱਚ ਹੋਵੇ ਤਾਂ ਸੱਚ ਪਾਈ ਹੈ ਜੇ ਸੁੱਚ ਹੋਵੇ ਤਾਂ ਸੱਚ ਪਹੁੰਚੇ ਨਹੀਂ ਸੱਚ ਪੜਾ ਹੀ ਹੋਨ ਸੱਚਾ ਉਹ ਸੱਚਾ ਸੋਏ। ਹਮਮ। ਉਹ ਵਰਮਾ ਪੇਖੇ ਕਿਸਮਨ ਹੋਏ। ਹਮ। ਸਭ ਨੂੰ ਜਦੋਂ ਆ ਆ ਫਿਰ ਕੀ? ਸਭਾ ਸੱਚਾ ਹੋਣਾ ਹੀ ਫਿਰ। ਦੇ ਦੇ। ਉਹ ਤਾਂ ਵਸਤਾ ਹੈ ਜਦ ਮਨ ਸੱਚਾ ਹੁੰਦਾ ਤਾਂ ਮੁਖ ਸੱਚਾ ਸੱਚਾ ਸੋਏ। ਮੁਖ ਵਿੱਚੋਂ ਸੱਚ ਜਦ ਨਿਕਲ ਜੋ ਭਾਂਡੇ ਚ ਵਸ ਠੀਕ ਹੈ। ਪਾਈ ਹੈ ਉਹੀ ਬਾਤ ਕਰੂਗੀ। ਜੀ ਉਹਦੇ ਰੋਬਾ ਨਾਨਕ ਕਹੇ ਜੇ ਤਾਂ ਮੁਕਤੀ ਸੱਚ ਹੈ ਮੁਕਤੀ ਕਿਤੇ ਮੁਈ ਸੱਚ ਆਉਗਾ ਪਰ ਉਹਦੀ ਸ਼ਰਤ ਨਾਲਾ ਵੱਲੋਂ ਪੇਖਿਆ ਇਸ ਤਰ੍ਹਾਂ ਹੋਏ ਸੱਚੇ ਤਾਂ ਮੰਨਦੇ ਸਵਾ ਕਿਸੇ ਚੀਜ਼ ਨੂੰ ਦੇਦਾ ਜੋਤ ਨੂੰ ਦੇਖਦਾ ਜਾਤ ਨੂੰ ਨਹੀਂ ਦੇਖਦਾ ਬਸ ਨੂੰ ਨਹੀਂ ਦੇਖਦਾ ਸਹੀ ਬਬੇ ਉਹਦੀ ਜੋ ਦੇਖਦਾ ਜੋ ਦਿਖੋਗੀ ਹੈ ਦੇਖੋ ਜੋਤ ਨੂੰ ਪੁੱਛੋ ਜਾਂਦੀ ਉਸ ਦਾ ਬਦਲੀ ਹੋਈ ਦੀ ਗੱਲ ਹੈ ਨਾਨਕ ਸੱਚ ਸੁੱਚ ਪਾਈ ਹੈ ਨਾਨਕ ਸੱਚ ਸੁੱਚ ਪਾਈ ਹੈ ਤੇ ਸੰਤਨ ਕੇ ਫਿਰ ਪਹਿਲਾਂ ਸੱਚ ਮਿਲਦਾ ਸੁੱਚ ਬਾਅਦ ਚ ਮਿਲਦੀ ਹੈ ਸੱਚ ਤੋਂ ਬਿਨਾਂ ਸੁੱਚ ਹੋ ਜਾਂਦੀ ਕੀ ਸੁੱਚ ਹੋ ਜਾਂਦਾ ਸੱਚ ਤੋਂ ਬਿਨਾਂ ਸੱਚ ਦੀ ਜਾਣਕਾਰੀ ਹੈ ਇੱਕ ਸੱਚ ਇਹ ਸੱਚ ਦਾ ਗਿਆਨ ਹੈ ਤੇ ਸੱਚ ਹੈ ਦੋ ਚੀਜ਼ਾਂ ਸੱਚ ਦੇ ਗਿਆਨ ਵਾਲੇ ਉਹਨੂੰ ਸੋਚਾ ਹੋ ਜਾਂਦਾ ਇਹਨੂੰ ਮੰਨਦੇ ਨੇ ਸੱਚ ਦਾ ਗਿਆਨ ਸੱਚ ਨਹੀਂ ਹੁੰਦਾ ਜਿਹਨੇ ਦਾ ਗਿਆਨ ਦਿੱਤਾ ਵੀ ਇਹੋ ਜੀ ਹੁੰਦੀ ਹੈ ਉਹ ਬਿਠਾ ਜਾਂਦਾ ਤਾਂ ਇਹ ਹੋ ਗਿਆਨ ਹੈਗਾ ਜਦ ਪਾਏਗਾ ਉਹ ਜਿਠਾ ਹੋ ਜੂਗਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਸੁਣਦਾ ਪਹਿਲਾਂ ਡੀਟਲ ਵਾਚ ਸੱਚ ਪਉ ਤਾਂ ਜੇ ਸੁੱਚਾ ਹੋਊਗ ਜਰੂਰੀ ਸ਼ਕਤ ਹੈ ਸੱਚ ਪਹਿਲਾਂ ਦੋ ਪਹਿਲਾਂ ਬਾਂਹ ਦਾ ਝੂਠੇ ਜੇ ਬਾਂਹ ਦਾ ਹੂੰ ਝੂਠੇ ਨਾਲ ਬਾਤ ਨਹੀਂ ਚੱਲਦੇ ਸੁੱਚਾ ਦੱਸ ਕੇ ਹੋਊਗਾ ਉਹ ਦੇ ਗਿਆਨ ਨਾਲ ਹੀ ਦੱਸਿਆ ਗਿਆਨ ਨਾਲ ਸੱਚਾ ਕੀ ਉਹਦਾ ਝੂਠਾ ਕੀ ਮਾਇਆ ਦੇ ਮੋਹ ਕਰਕੇ ਝੂਠਾ ਮਾਇਆ ਦੇ ਮੋਹ ਤਿਆਗਣ ਕਹਿੰਦਾ ਵੀ ਆ ਚੀਜ਼ ਫੋੜਨੀ ਹੈ ਨਾਮ ਚਾਹੀਦਾ ਜਦ ਤੂੰ ਕੋਣ ਤਦ ਤੈਨੂੰ ਉਹ ਕਰ ਦਿੰਦਾ ਵਿੱਚ ਜਾਂਦਾ ਸੱਚੀ ਪਰ ਸੱਚ ਦਾ ਗਿਆਨ ਦਾ ਗਿਆਨ ਸੱਚ ਹੈ ਸੱਚ ਦਾ ਨਾਮ ਸੱਚ ਦਾ ਗਿਆਨ ਦਾ ਗਿਆਨ ਸਾਰੇ ਜੀ ਸਾਹਿਬ ਸਭਾਈ ਗਿਆਨੇ ਕਰ ਰਿਹਾ ਉਰ ਕੀ ਗੱਲ ਹੈ ਘਰ ਤਾਂ ਗਿਆਨੇ ਲਾ ਰਿਹਾ ਹੈ ਨਾਨਕ ਸੱਚ ਸੱਚ ਨਾਲ ਗਿਆਨ ਨੂੰ ਮੰਨ ਕੇ ਅਸੀਂ ਜੇ ਮੰਨਾਂਗੇ ਤਾਂ ਤਬਦੀਲੀ ਹੈ ਨਾਮ ਦੇ ਨਾਲ ਮੰਨਣ ਦੀ ਸ਼ਰਤ ਨਹੀਂ ਹੈ ਨਾਮ ਤਾਂ ਡੰਡਾ ਹੈ ਜੇ ਪੈਦਾ ਪੀੜਾ ਆਪੇ ਲਦੀ ਹੋਈ ਹੈ ਕਪੜਾ ਮੰਨਣ ਦੀ ਗੱਲ ਨਹੀਂ ਹੈ ਉਹ ਲੋਕਾਂ ਨੂੰ ਦੱਸੇਗਾ ਤੂੰ ਤਾਂ ਲੋਕਾਂ ਨੂੰ ਦੱਸੇਗਾ ਤੈਨੂੰ ਕੀ ਦੱਸ ਲੈ ਮੈਨੂੰ ਜਗਾ ਦੇ ਜਾਂ ਦਾੰਗ ਮਜੀ ਤੂੰ ਤਾਂ ਲੋਕਾਂ ਨੂੰ ਜਗਾਵੇਂਗਾ ਨਾਲ ਤੇਨੂੰ ਬਜਣੀ ਬਜਰੇ ਤੇਰੇ ਐ ਲਾਲ ਤੂੰ ਤਾਂ ਲੋਕਾਂ ਨੂੰ ਜਗਾਏਗਾ ਇੱਥੇ ਗਲਤੀ ਕਰਦੇ ਫੋਮੈਨ ਆਵੇਂ ਅਰ ਬਰੋਦਰ ਦੋ ਨੋ ਨੋ ਸਿੱਖਾਂ ਜਿੰਨਾ ਚਿਰ ਹੋਵੇ ਹੈ ਨਾਮ ਪੈ ਨਹੀਂ ਸਕਦਾ ਉੱਥੇ ਚੂੜ ਹੋ ਗਿਆ ਜੀ ਨਾ ਦੋ ਪੌਤੀਆਂ ਜੀ ਬਰਬਰ ਖੜੀ ਹੋ ਗਿਆ ਤੁਸੀਂ ਬੜਾ ਢਿਮਾਲਾ ਵੀ ਨਾਮ ਹੋਮੇ ਵਿੱਚੇ ਨਾਮ ਤਾਂ ਤੇ ਆਇ ਨਹੀਂ ਸਕਦਾ ਉਹ ਕੰਮ ਗੁਰਬਾਣੀ ਕਰ ਰਹੀ ਹੈ ਪਹਿਲਾਂ ਭਾਂਡੇ ਨੂੰ ਸੁੱਚਾ ਕਰ ਰਹੀ ਹੈ ਕੀ ਕਰਦਾ ਹਰ ਸੋਤੇ ਅਲਜਪਰਨ ਉਹ ਮੇਰਾ ਨਾਮ ਬਰੋਦਰ ਦਾ 2019 ਦੇ ਇਕੱਠੇ ਕਿ ਸਹੀ ਆ ਨਾਮ ਕਿਤੇ ਪਾਊਗਾ ਕਿਤੇ ਪਾਊਗਾ ਕਿਤੇ ਇਸ ਕਰਕੇ ਸਾਰਾ ਡੁਪਲੀਕੇਟ ਹੈ ਨਾ ਉਹ ਪਹਿਲਾ ਪਾਂਡਾ ਤਾਂ ਤਿਆਰ ਹੋਵੇ ਉਹ ਨੂੰ ਜਾਓ ਪਾਂਡਾ ਤੋਏ ਗਏ ਦੇਵੋ ਉਹ ਦੁੱਧ ਦੇ ਨੂੰ ਜਾਓ ਹੀ ਬਾਅਦ ਦੇ ਵਿੱਚ ਪਹਿਨਾ ਕੰਮ ਤਾਂ ਕਰ ਲੋ ਤੁਰਪੇ ਪਹਿਲੇ ਮੋਰੇ ਨੂੰ ਜਾ ਕੇ ਬਾਲਾ ਫੜਾਤੀ ਢੰਗ ਨਾਲ ਨਾਗੜ ਬਲੇ ਵੀ ਹੈ ਉਨਾ ਬੁਲਗੜਾ ਹੈਗਾ ਨਾਮ ਜਿਹਨੇ ਨੇ ਦੇਣਾ ਉਹ ਕਿਥੇ ਕਿਥੇ ਬਈਆਂ ਦਾ ਇਹ ਨਾਮ ਵੀ ਉਸਰ ਇਹ ਮੁਰਖੰਦ ਕੋਰ ਨੇ ਵਿਚਾਰ ਆ ਕੋਰ ਆਰਾਮ ਕੋਰ ਹਾਂਜੀ ਇਹ ਮੁਰਖੰਦ ਗੱਡੀ ਭਜੂਗੀ ਤੱਕੀ ਤੇਰੇ ਲੈ ਤੇਰੀ ਬਾਜੀ ਹੈ ਨਾਨਕ ਸੱਚ ਸੁੱਚਾ ਕੰਮ ਸੁੱਚ ਪਾਈ ਹੈ ਸੱਚ ਸੁੱਚ ਪਾਈ ਹੈ ਦਇ ਸੰਤਨ ਕੇ ਪਾਸ ਨੇ ਅਸਲ ਚ ਹੈ ਪਹਿਲਾਂ ਸੁੱਚਾ ਕਰਦੇ ਨੇ ਸੱਚ ਫਿਰ ਪਾਉਂਦੇ ਨੇ ਜਿਹੜੇ ਭਗਵਾਨ ਤੇ ਜਿਹਨਾਂ ਉਹ ਰਾਸ ਹੁੰਦੀ ਹੈ ਐਦਾਂ ਨਹੀਂ ਫਰਦਤ ਦੇ ਫੜ ਲੈ ਕਾਬਲਾ ਤੂੰ ਆਪੇ ਤੂੰ ਕੀ ਕਹ ਲੋ ਬਿਜਾਰ ਤੁਹਾ ਮਾਣ ਆਪ ਵੀ ਬਣਾ ਲਈ ਦੀ ਰੱਸੀ ਲੈ ਲੋ ਗੱਠਾ ਦੇ ਲੋ ਬੜਾ ਬਣ ਗਈ ਗੱਠਾਈ ਦੇਣੀਆਂ ਨੇ ਤੂੰ ਦੀ ਕਹ ਨਹੀਂ ਮੁੜਕੇ ਬਥੇਰੇ ਮਿਲ ਜਾਂਦੇ ਜਾਂਦੀ ਮਰਦੀ ਬਣਾ ਲੋ ਮੋਤੀਆਂ ਦੀ ਬਣਾ ਲੈਂਦੇ ਨੇ ਭਾਈ ਜੀ ਦਾ ਪੈਸੇ ਕਿਤੇ ਮਾਲਾ ਨਾੜੇ ਦੇ ਨਾਮ ਰਦਾ ਹੁੰਦਾ ਤਕਬੀਰ ਕਾਤੇ ਕਹਿੰਦਾ ਮਾੜਾ ਆਪਣੀ ਲੀਜਾ ਭਗਤ ਨ ਕੀਜਾ ਤਰੂ ਨੂੰ ਤਾਂ ਤੁਸੀਂ ਸੰਸਾਰ ਦੇ ਪਦਾਰਥਾਂ ਦੀ ਭੁੱਖ ਦਾ ਸਾਧਨ ਬਣਿਆ ਹੈ ਭੁੱਖ ਦੀ ਪੂਰਤੀ ਸੰਸਾਰ ਦੇ ਪਦਾਰਥਾਂ ਦੇ ਭੁੱਖ ਦੀ ਪੂਰਤੀ ਦਾ ਸਾਧਨ ਬਣਿਆ ਹੋਇਆ ਧਰਮ ਜਿੰਨਾ ਜਨ ਸੰਸਾਰੀ ਪਦਾਰਥਾਂ ਦੀ ਪ੍ਰਾਪਤੀ ਦਾ ਸਾਧਨ ਬੰਨਿਆ ਹੋਇਆ ਹੈ ਧਰਮ ਉਹ ਨਜਰੂ ਧਰਮੇ ਨਹੀਂ ਹੈ ਨਾਮ ਨਹੀਂ ਲੜਿਆ ਧਰਮ ਹੈ ਹੋਈ ਨਹੀਂ ਤੁਸੀਂ ਧਰਮ ਕੋ ਲੈਣ ਵਾਲੇ ਕਿਉਂਕਿ ਧਰਮ ਤੋਂ ਤਾਂ ਕੁਝ ਹੋਰ ਮਿਲਦਾ ਇਹ ਤਾਂ ਮਿਹਨਤ ਤੋਂ ਮਿਲਦਾ ਹੈ ਜਿਉਂ ਮਿਲਦਾ ਇਹ ਤਾਂ ਪਰਮੇਸ਼ਰ ਦੀ ਦੇਣ ਹੈ ਇਹ ਤਾਂ ਬਿਨੈਦਾਰ ਉਹ ਤੋਂ ਮਿਲਦਾ ਜਿਹੜੇ ਰਾਖਿਸ਼ ਨੇ ਕਹਿੰਦੇ ਨੇ ਰਾਗੜ ਰਾਖਿਸ਼ ਹੈ ਉਹਦੇ ਕੋ ਸੋਨੇ ਦੀ ਲੰਕਰ ਹੈ ਉਹ ਤਾਂ ਗੈਰ ਜਿਹਾ ਵਾਲਾ ਫਿਰਦਾ ਨਹੀਂ ਉਹਦੇ ਕੋਲ ਸੋਨੇ ਦੇ ਲੰਕਾ ਕਾਤੇ ਹਮ ਤੋਂ ਵੀ ਜ਼ਾਤੇ ਹੋ ਰਾਮਚੰਦਰ ਕੋ ਹੈ ਨਹੀਂ ਸੋਨੇ ਦਾ ਕੇਲਾ ਉਹ ਕਹੇ ਰੋ ਦੇਖੋ ਕੇਲਾ ਸੋਨੇ ਦਾ ਰਾਮ ਕੋ ਹੈ ਨਹੀਂ ਫਿਰ ਉਹ ਇਹ ਤਾਂ ਹੋਇਆ ਫਿਰ ਰਾਜੀ ਤਦਾਰ ਮਗਾਨੀ ਉਤਰ ਆਖੀ ਦੇ ਜੀ ਰਾਜਨੰਦ ਹੋਲੇ ਦੇ ਰਹੇ ਨੇ ਭਜਾਈ ਫਿਰਦੇ ਰਹੇ ਨੇ ਦੇਵਤਨ ਮੂਰੇ ਮੂਰੇ ਤਰ ਹੁ ਤੋ ਮਾਇਆ ਮਿਲਦੀ ਐ ਇਹ ਧਾਰਨਾ ਹੀ ਗਲਤ ਐ ਪਰ ਇਸ ਦਾ ਪ੍ਰਚਾਰ ਕਰਦੇ ਸੋ ਇਹਦਾ ਪ੍ਰਚਾਰ ਨਾ ਕਰ ਲੋ ਰੱਖਣ ਤਾਂ ਮੱਖੀਆਂ ਨਹੀਂ ਆਉਂਦੀਆਂ ਮੱਖੀ ਕਿਵੇਂ ਬਖੀਰ ਬਖਾਉਣੇ ਨੀਂ ਨੀਰਾ ਰੱਖਣਾ ਕੋ ਉਤਾਰੂ ਜਿਹੜੀ ਇੱਕ ਵਾਰ ਜੀਬ ਲਾਜੂ ਬਣੇ ਜਾਊ ਲਾਜੂ ਵੀ ਚਟਕੀਊਗੀ ਪਚੀ ਜਾਓ ਕਿੱਤ ਲੰਗਰ ਵੱਧ ਉਸ ਕਰਕੇ ਮੋਰਖਾਂ ਨੂੰ ਹੋਰ ਔਰ ਧੋਰ ਹੋਰਾ ਨੂੰ ਖੋੜ ਦਿੱਤਾ ਬਤਾਉਣਾ ਨੂੰ ਇਹ ਨੂੰ ਪਤਾ ਨਹੀਂ ਹੈ ਬੇ ਭਾੜਾ ਜਿਹੜੀ ਇਹ ਸਭ ਫਰੋਡ ਹੈ ਪਤਾ ਸਭ ਕੁਝ ਸਾਰੀ ਮਰਦੇ ਦਮ ਤੱਕ ਹਰ ਆਦਮੀ ਬੜਾ ਫੇਰ ਸ ਜਿਹੜਾ ਫੜ ਲਿਸ ਬੈਰ ਤੇ ਬਚਪਨ ਤੋਂ ਫੜੀ ਕਿਉਂਕਿ ਜਦੋਂ ਉਹ ਮਿਲੇ ਹੀ ਨਹੀਂ ਕੁਛ ਉਹਨੂੰ ਜਦੋਂ ਤੇ ਲੋਕੀਂ بڑے ਕੁਛ ਨਹੀਂ ਮਿਲਿਆ ਤਾਂ ਕੇ ਸ਼ੁਰੂ ਕਬੀਰ ਇਮਾਨਦਾਰ ਪਹਿਲਾ ਬੰਦਾ ਹੋਇਆ ਜਿਹਨੇ ਮੰਨਿਆ ਮਨਵਾਲਾ ਨੂੰ ਕੁਛ ਨਹੀਂ ਮਿਲਿਆ ਜਿਹੜਾ ਕੋ ਮਿਲਦਾ ਸੀ ਸੋ ਸਾਰੇ ਵਿੜਿਆਈ ਮਿਲਦੀ ਸੀ ਕਿਸੇ ਡੇਰੇ ਦੀ ਮੁਖਤਿਆਰੀ ਮਿਲਦੀ ਸੀ ਬਹੁਤ ਤੇ ਵਿਦੇਸੀ ਪੈਸਾ ਮਿਲਦਾ ਸੀ ਮਾਨਤਾ ਮਿਲਦੀ ਸੀ ਉਹਨਾਂ ਨੇ ਸੀ ਬਰਬਾਹ ਮੈਂ ਜਿਹੜੇ ਇੱਛਾ ਰੱਖ ਕੇ ਧਰਮ ਤਰਣ ਕੀਤਾ ਸੀ ਮੇਰੀ ਉਹ ਇੱਛਾ پوری ਹੋਣੀ ਉਹ ਜੋਰਲਾ ਹਟੇ ਉਹ ਰਿੱਦਸਦੇ ਹਜੂ ਜੋ ਮੈਨੂੰ ਚਾਹੀਦੀ ਮੈਂ ਜੋ ਨਿਸ਼ਾਨਾ ਮੇਰਾ ਟਾਰਗੇਟ ਪਹਿਲਾਂ ਸੀ ਕੋਈ ਬੁਰਾ ਫੇਰ ਅਸਲ ਦੇ ਵਿੱਚ ਜਾ ਕੇ ਪਤਾ ਲੱਗਿਆ ਜਦ ਕਬੀਰ ਨੂੰ ਵੀ ਇਹ ਧਰਮਿਕ ਹਜੂਰ ਇਹ ਤਾਂ ਫਰਾਡ ਹੈ ਉਹਨੇ ਕਹ ਉਹਦਾ ਪਰਣਾ ਬਣ ਲਵੋ ਘਰ ਦਾ ਭੇਤੀ ਲੰਗਾ ਢਾਵੇ ਲੰਗਾ ਢਾਤੀ ਜੇ ਤਵੀਰ ਨਾਂ ਵਾਲਾ ਫੱਫੜਦਾ ਤੈਨੂੰ ਪਤਾ ਕਿਵੇਂ ਲੱਗਦਾ ਇਸੇ ਕਰਕੇ ਕਿਸੇ ਨੂੰ ਪੜ੍ਹ ਨਹੀਂ ਸੀ ਦਿੰਦਾ ਪੜ੍ਹਤ ਕਿਸੇ ਨੂੰ ਧਰਮ ਨਹੀਂ ਸੀ ਧਾੜ ਕਰ ਦਿੰਦਾ ਕਿਉਂਕਿ ਧਰਮ ਨਹੀਂ ਸੀ ਇਹ ਫਰੋਡ ਸੀ ਧਰਮ ਦੇ ਰੋ ਪੇ ਤਾਂ ਫੇਰ ਗੁੰਡੂਗਾ ਸਾਰੇ ਜਿਹੜੇ ਪੜ ਗਏ ਆਪਾਂ ਵਿਰੋਧੀ ਗੱਲਾਂ ਨੇ ਸਾਰੀਆਂ ਲਿਖੀਆਂ ਤੁਸੀਂ ਜਿਹੜੀਆਂ ਮੰਨਣ ਜੋਗ ਇਹ ਨਹੀਂ ਇਹ ਤਾਂ ਸਾਰੇ ਪਛਾਣ ਲਏ ਸਾਡੀਆਂ ਸਾਡੇ ਗੁਰਸਤਾਂ ਦੇ ਹਰ ਬਣਾ ਲਏ। ਉਹੀ ਕਬੀਰ ਦਾ ਬਾਤ ਤਾਂ। ਗੁਰੂ ਘਰ ਨੇ ਵੀ ਪੜਿਆ। ਪੜਿਆ ਇਹ ਸਿਮਰਤ ਸਾਸਤਰ ਸਗਲ। ਅਸੀਂ ਪੜ ਕੇ ਘੋਖ ਕੇ ਸੋਧਦੇ ਹੋ। ਪੜ ਕੇ ਘੋਖ ਕੇ ਸੋਧ ਵੀ ਦਿੱਤੇ। ਉਹਨਾਂ ਨੂੰ ਕਿਤੇ برداشت ਨਹੀਂ। ਉਹਨਾਂ ਦੇ بڑے بڑے ਰਿਆਂ ਦਾ ਸਭ ਕੁਝੇ ਰੱਦ ਕਰਕੇ ਨਵਾਲੇ ਖਦਬੇ ਸੋਧ ਕੇ ਬਿਯੋਸ਼ੁੱਧ ਹੈ। ਵਿਦਵਾਨਾਂ ਨੂੰ ਇਹ ਗੱਲ برداشت ਨਹੀਂ ਹੁੰਦੀ। ਹਜ਼ਮ ਨਹੀਂ ਹੋ ਸਕਦੀ। ਕਿਉਂਕਿ ਵਿਦਵਾਨਾਂ ਨੇ ਸਿਰਫ ਸੰਸਾਰੀ ਪਦਾਰਥਾਂ ਦਾ ਕੋਰੋ ਦੀ ਦ੍ਰਿਸ਼ਟੀ ਹੁੰਦੀ ਹੈ, ਉਦੋਂ ਗਾਹ ਨਹੀਂ ਹੁੰਦੀ। ਜਿਨ੍ਹਾਂ ਦੇ ਉਦੋਂ ਗਾਹ ਦ੍ਰਿਸ਼ਟੀਓ ਵਿਦਵਾਨ ਨਹੀਂ ਹੁੰਦੇ, ਗੁਰਮੁਖ ਮੇਰੇ ਬਣ ਸਿੱਖੋ। ਜਿਹਨਾਂ संसार से ਗੱਲਾਂ ਵੱਡੀਆਂ ਉਹਨਾਂ ਦੀ ਦ੍ਰਿਸ਼ਟੀ ਹੋਰ ਹੁੰਦੀ ਹੈ ਜਿਨ੍ਹਾਂ ਨੇ ਸੰਸਾਰ ਦੇ संसार ਤੇ ਸੰਸਾਰ ਦੀ ਇੱਜ਼ਤ ਤੇ ਸੰਸਾਰ ਦੀਆਂ ਵਡਿਆਈਆਂ ਤੇ ਕਬਜ਼ਾ ਕਰਨਾ ਹੁੰਦਾ ਸੰਸਾਰੀ ਪੋਸਟਾਂ ਤੇ ਕਬਜ਼ਾ है ਹੁੰਦਾ ਉਹਨਾਂ ਦਾ ਦ੍ਰਿਸ਼ਟੀਕੋਣ ਹੋਰ ਹੁੰਦਾ ਦ੍ਰਿਸ਼ਟੀਕੋਣ ਹੀ ਅੱਡਾ ਹੁੰਦਾ ਇਹ ਦੁਨੀਆਂ ਗੁਰਵਤ ਤੋਂ ਬਿਰੋ ਜਿਹੜੀਆਂ ਜਿੰਨੀਆਂ ਵੀ ਮਤਾਂ ਨੇ ਸੰਸਾਰ ਕੀ ਇਹ ਸਾਰੀਆਂ ਰਾਜ ਸੱਤਾ ਵੱਲ ਨੂੰ ਲੈ ਕੇ ਚਲਦੇ ਧੰਤੇ ਕਬਜਾ ਲੋਕਾਂ ਦੇ ਮੰਤੇ ਕਬਜਾ ਮੰਤੇ ਕਬਜਾ ਖਤਿਰਸ ਪਾਵਲਤ ਦੇ ਮੰਤੇ ਕਬਜਾ ਉਹਨਾਂ ਦੇ ਧੰਤੇ ਕਬਜਾ ਧੰਤੇ ਵੀ ਕਬਜਾ ਹੀ ਹੈ ਤਰਤੇ ਵੀ ਲੋਕੀ ਇਹ ਲੋਕੀ ਜਿਹੜੇ ਮਰਜ਼ੀ ਬਰਵਾਉਂਦੇ ਜਿੱਥੇ ਜਿਹੜੇ ਮਰਜ਼ੀ ਉਹ ਪ੍ਰਾੜੜ ਵਾਲੇ ਕੰਮ ਕਰਦੇ ਨੇ ਜਿਹੜੇ ਦੇ ਜਿਹਨੂੰ ਅਸੀਂ ਗੁਰੂ ਕਹਿੰਦੇ ਆ ਗੁਰੂ ਤਾਂ ਹੈ ਨਹੀਂ ਜਿਹਨੂੰ ਅਸੀਂ ਕਹਿਣ ਲੱਗੇ ਉਹਨਾਂ ਦੀ ਜੀਸ ਇਹ ਉਹਨਾਂ ਨੇ ਕਹਾਤਾ ਜਿਹੜੇ ਇੱਧਰ ਦੇ ਦਾਸ ਨੇ ਕਹੋ ਉਹ ਗੁਰੂ ਨਹੀਂ ਬੜੇ ਦਾਸ ਬੜੇ ਕਿਉਂਕਿ ਸਾਖਤ ਸੋ ਕਰ ਜੇ ਵੀ ਗੁਰੂ ਬਣਦੇ ਜੇ ਨਾਨਕ ਵੀ ਗੁਰੂ ਬਣਦਾ ਹੈ ਸਾਖਤ ਵੀ ਗੁਰੂ ਹੈ ਫਿਰ ਤਾਂ ਸਾਖਤ ਉਲਟੀ ਕੀਤੀ ਦੇਣਾ ਕਰੇ ਉਲਟੀ ਕਿੱਥੇ ਕੀਤੀ ਸਾਖਤ ਵੀ ਗੁਰੂ ਹੈ ਜਦੋਂ ਕੋਈ ਗੁਰੂ ਹੋਵੇ ਤਾਂ ਸਾਖਤ ਕਿਤੇ ਵੀ ਨਾਨਕ ਸਾਖਤ ਦੀ ਰੀਸ ਨਹੀਂ ਕਰਦਾ ਗੁਰਮਤਿ ਕਿਤੇ ਵੀ ਬੰਵਾਦੀ ਰੀਸ ਨਹੀਂ ਕਰਦੀ ਭਗਤਾ ਤੇ ਸੈਸਾਰੀਆਂ ਉਹ ਸੰਸਾਰੀ ਮਤ ਹੈ ਭਗਤਾਂ ਦੀ ਮਤ ਹੈ ਤੇ ਪਰਮੇਸ਼ਰ ਦੀ ਮਤ ਹੈ ਉਹ ਆਦਮੀ ਦੀ ਮਤ ਹੈ ਦੋਨੇ ਜੋੜ ਕੇ ਆ ਜੂਗਾ ਉਹਨੇ ਗੁਰੂ ਬਣ ਕੇ ਅਫਰਾਦੀ ਬਣਦਾ ਨਾਨਕ ਲੋਕਾਂ ਦੇ ਮਨ ਤੇ ਕਬਜ਼ਾ ਨਹੀਂ ਕਰਦਾ ਕਬਜ਼ਾ ਪਰਮੇਸ਼ਰ ਦਾ ਕਰਾਉਂਦਾ ਉਹਨਾਂ ਦੇ ਅੰਦਰ ਬੈਠਾ ਜਿਹੜਾ ਉਹਨਾਂ ਦਾ ਪਰ ਉਹਦਾ ਕਬਜ਼ਾ ਉਹਦਾ ਵੀ ਅੰਦਰ ਲੈ ਕਬਜ਼ਾ ਅੰਦਰ ਲੈ ਦੇ ਬਾਸ ਤੂੰ ਮਨ ਬਸ ਆਵੇ ਨਾਨਕ ਬਸ ਦਾ ਕੀ ਮਤਲਬ ਬਸ ਬਣੀ ਹੈਗਾ ਮਨ ਕਿਸੇ ਦੇ ਹੋਰ ਇਹ ਵੀ ਅਸੀਂ ਇਹਦੇ ਅਰਥ ਗਲਤ ਲੱਦੇ ਆਂ मानदे टिकणो बसोणो कहदे मानदा की है बस जाना बंदा टिक जाना hmm. शांत हो जाना सुखी हो जाना वासाया त hmm. दुखी हुंदा hmm. hmm. तोरन बिजरज बालबाज काले की वो सुखी है की सुखी है ਮਨੂ ਤਾਂ ਯਾਦ ਕੀਤਾ ਸਭ ਇਹ ਕਹਿੰਦੇ ਬਸ ਕੀਤਾ ਆਜਾਦ ਕੀਤਾ ਕੀਤਾ ਕਾਲ ਤੋਂ ਬਹੁਤ ਤੋਂ ਪਰਬ ਤੋਂ ਉਹ ਕੀਤਾ ਯਾਦ ਤੁਸੀਂ ਕਹਿੰਦੇ ਕੀਤਾ ਬਸ ਵਿੱਚ ਬਸ ਵਿੱਚ ਕਿੱਦਾਂ ਕੀਤਾ ਉਹ ਤਾਂ ਯਾਦ ਕੀਤਾ ਜਿੱਥੇ ਮਰਜੀ ਸ਼ਾਇਰ ਕਰ ਗੁਰੂ ਘਰ ਜਾਏ ਦਸੰਗ ਦੁਸ਼ਮਨਾ ਦੇ ਧਿਆਰੇ ਤੋਂ ਬਾਹਰ ਕੱਢਦਾ ਬਾਹਰ ਕੱਢਿਆ ਯਾਦ ਕੀਤਾ ਹੈ ਬੇਫਿਕਰ ਕੀਤਾ ਹੈ ਨਿਰਭਾਉ ਕੀਤਾ ਹੈ ਨਿਰਵਹਿਰ ਕੀਤਾ ਹੈ ਕਿ ਕਰ ਮੇਰੇ ਕਿਨੇ ਜ਼ਬਰਦਸਤ ਤੁਸੀਂ ਕਹਿ ਰਹੇ ਹੋ ਬਸ ਕੀਤਾ ਬਸ ਤਾਂ ਕੈਦ ਕਰਨਾ ਹੁੰਦਾ ਉਹ ਬਸ ਦਾ ਹੋਏ ਨੂੰ ਬਸੇ ਤਾਂ ਉੱਡਰ ਜਾਏ ਪਸੰਦ ਦੀ ਬੋਸਾ ਜਾਏ ਹਾਂ ਕਹਿੰਦਾ ਉੱਡ ਜਾ ਜਿੱਥੇ ਕਾਲ ਦਾ ਨਿਸ਼ਾਨਾ ਸਾਧਿਆ ਹੋਇਆ ਲੋ ਫਿਰ ਤੋਂ ਮਝਾਰ ਪਸਾਰ ਮੁਖ ਨਿਰਖਤ ਪੁੰਛਤ ਪੁਰਖ ਪੋਖਨ ਪੋਖਨ ਕਹਿੰਦਾ ਬੜਾ ਭੁੱਖਾ ਹੈ ਬਿੱਲਾ ਹੈ ਤੇ ਐਂ ਮੂੜੀ ਖੜਾ ਵੀ ਜਦ ਵੀ ਮੈਨੂੰ ਹੋਣ ਜਦ ਵੀ ਫੜਨ ਉੱਡ ਜਾ ਇੱਥੋਂ ਜਿੱਥੇ ਬੈਠਾ ਇਹ ਵਸਦਾ ਮਤਲਬ ਇਹ ਹੈ ਵਸਦਾ ਉਹ ਨਾ ਬਸ ਜਾਣਾ ਨਹੀਂ ਮਨ ਬਸ ਆਰਾਏ ਨਾਨਕਾ ਨਾਨਕਾ ਆ ਕੇ ਮਨ ਤਾਂ ਵਸਦਾ ਤਾਂ ਟਿਕਦਾ ਜੇ ਪੂਰਨ ਕਿਰਪਾ ਹੋਵੇ ਇਹ ਨੂੰ ਸਾਰਾ ਗਿਆਨ ਮਿਲ ਜੂਵੇ ਇਹ ਆਪਣੀ ਗੁਰੂ ਕਿਰਪਾ ਕੀ ਹੁੰਦੀ ਹੈ ਮਨ ਆਪਣੇ ਤੇ ਆਪਨੀ ਕਿਰਪਾ ਵੀ ਕਰੇ ਜੇ ਮੁੰਡਾ ਆਪਣੇ ਤੇ ਆਪਣੀ ਕਿਰਪਾ ਕਰੇ ਤਾਂ ਪੜਦਾ ਜਿੱਧਰ ਜਿੱਧਰ ਮਨ ਦੌੜਦਾ ਹੈ ਜਿੱਧਰ ਦੇਖਦਾ ਹੈ ਕਲਪਨਾ ਕਰਦਾ ਹੈ ਮਨ ਕਲਪਨਾ ਜ ਵੱਡੇ ਰਸ ਲੈ ਜਿੱਦਣ ਕਲਪਨਾ ਦੇ ਵਿੱਚ ਉਹਨੂੰ ਕਾਲ ਦਿਖਣ ਲੱਗਿਆ ਨਾ ਜਦ ਲਈ ਕਲਪਨਾ ਕਾਲ ਦਾ ਰੂਪ ਦਿਖਣ ਲੱਗਿਆ ਜਦੋਂ ਉਦੋਂ ਕਲਪਨਾ ਛੱਡੂ ਪਰ ਮੈਂ ਛੱਡਣੀ ਨਹੀਂ ਕਲਪਣਾ ਨਹੀਂ ਹੈ ਕਲਪਨਾ ਨੂੰ ਪਿਆਰੀ ਕੋਈ ਚੀਜ਼ ਨਹੀਂ ਹੈ ਮਨ ਨੂੰ ਮਨ ਨੂੰ ਕੋਈ ਚੀਜ਼ ਪਿਆਰੀ ਨਹੀਂ ਕਲਪਣਾ ਰੋਕ ਸੰਸਾਰ ਸ ਪਰ ਜਦ ਇਹਦੀ ਕਲਪਨਾ ਇਹਦਾ ਕਾਲ ਦੇਖਣ ਲੱਗ ਗਿਆ ਨਾ ਉਹਦੇ ਵਿੱਚ ਕਲਪਣਾ ਦਾ ਕਾਲ ਹੈ ਬਸ ਫੇਰੇ ਤੋ ਵਿੱਚ ਜੇ ਜਾਣਤਾ ਜੇ ਜਾਣਤ ਵਿਖਿਆ ਮੇਰੇ ਵਿਖਿਆ ਜਦ ਜਾਉਂਦੀ ਹੈ ਕਲਪਣੋ ਜੇ ਜਾਣਤ ਆਪਣਾ ਬੁਝਾ ਜੇ ਦੜ ਨੇ ਜਾਣ ਲਿਆ ਵੀ ਇਹ ਡਗੜੀ ਹੈ ਇਸੇ ਡੱਬ ਬਾਰ ਲੋਕ ਤੇ ਆ ਕੇ ਪਰੇ ਤੋਂ ਦੂਰ ਜਿੰਨਾ ਜਰ ਕਲਪਣ ਕਾਲ ਨਹੀਂ ਮਨਦਾ ਉਹ ਨજર ਕਲਪਣ ਨਹੀਂ ਤੇ ਆਸਤਿਨ ਦਾ ਸੱਪ ਪਾਈ ਫਿਰਦਾ ਆਸਤਿਨ ਦਾ ਸੱਪ ਕਹਿੰਦੇ ਬਾਹਰ ਦੇ ਵਿੱਚ ਪਾਇਆ ਹੈ ਸੱਪ ਇਹ ਲੋਕਾਂ ਤੋਂ ਲੁਕੋ ਕੇ ਜਬਰ ਜੀ ਰਖਵਾਲ ਦੇ ਹੋ ਇਹਦਾ ਆਸਤਿਨ ਦਾ ਸੱਪ ਹੈ ਇਹਦਾ ਨਹੀਂ ਫਿਰਦਾ ਕਲਪਨ ਆਸਤਿਨ ਬਾਜੀ ਨਾਲ ਬਾਹਰ ਆਸਤਿਨ ਦਾ ਸੱਪ ਚੱਕੀ ਫਿਰਦਾ ਇਹ ਸਰੀਰ ਆਸਤਿਨ ਦਾ ਸੱਪ ਹੈ ਕਲਪਣਾ ਨਹੀਂ ਛੱਡ ਸਕਦਾ ਕੋਈ ਯਾਰ ਨਹੀਂ ਜਦ ਤੇ ਅਗੂ ਬਨ ਬੁੱਧੀ ਨੂੰ ਜਾਦੇ ਨੂੰ ਇਹੀ ਕਾਲ ਨਜ਼ਰ ਆਉਗੀ ਕਾਲ ਹੈ ਮੇਰਾ ਇਹੀ ਮੇਰਾ ਕਾਲ ਹੈ ਇਹ ਕਿੰਨ ਕਾਲ ਪ੍ਰਗਟ ਹੋ ਰਹੇ ਫਿਰ ਜਲਦੀ ਫੇਟੋ ਗੱਜੂ ਉਹ ਨਾ ਜਲਦੀ ਹੈ ਸੱਸਾ 7 7 700 ਸੱਸਾ 7 7 700 ਸਤਿਪੁਰਖ ਦੇ ਭਿੰਨ ਨਾ ਕੋ ਜਿਹੜਾ ਸਤਿਪੁਰਖ ਤੋਂ ਭਿੰਦ ਅਸਲ ਵਿੱਚ ਸਤਿਪੁਰਖ ਤੋਂ ਭਿੰਦ ਕੁਛ ਹੀ ਨਹੀਂ ਕੁਛ ਨਹੀਂ ਲ ਕੁਛ ਵੀ ਗਲਤ ਬੋਲਦਾ ਕੋ ਕੋ ਤਾਂ ਹੁੰਦਾ ਜੇਤਨ ਕੋਈ ਵੀ ਕੋ ਉਹ ਜੇਤਨ ਵਾਸਤੇ ਮਹਿਲਾ ਹੈ ਜੜ ਵਾਸਤੇ ਨਹੀਂ ਹੈ ਕੁਛ ਹੈ ਫਿਰ ਵਿੱਚ ਜੜ ਜੇ ਤਾਂ ਕੋਉ ਲੋ ਕੋਈ ਵੀ ਕੁਝ ਵੀ ਯਾਰ ਕੋਈ ਵੀ ਫਰਕ ਨਹੀਂ ਪੈਂਦਾ ਨਾ ਸਸਾ ਸਸਾ ਕੋਈ ਵੀ ਸਾਥ ਵਰਖਤ ਨਹੀਂ ਗੱਲ ਤੇ ਨਿਕਲੇ ਅਸਿੱਧਾ ਨਾ ਰੂ ਚੋਬੇ ਫਰ ਜ਼ਿਆਦਾ ਰੱਖਿਆ ਵੀ ਤਾਂ ਇਹ ਤਾਂ ਲਫ਼ਜ਼ੇ ਗੱਲ ਬੋਲਿਆ ਗਿਆ ਕੋਉ ਕੋਉ ਸਸਾ ਸਸਾ ਹੋਊਗਾ ਦੀ ਜਗ੍ਹਾ ਕੁਝ ਕਹਿਦਾ ਅਲੋਕ ਅਰਥੇ ਲੋਰ ਨੇ ਹੂੰ ਕੋਹਲਾ ਉਸ ਵਰਤੇ ਹਰ ਸਤਪੁਰਖ ਤੇ ਪਿੰਡ ਨਾ ਹੂੰ ਕੋ ਕੋਈ ਵੀ ਸਤਪੁਰਖ ਤੋਂ ਪਿੰਡ ਨਹੀਂ ਹੈ ਸਾਰੇ ਸਤਪੁਰਖ ਤੋਂ ਹੀ ਪਦਾਇਸ਼ ਹੈ ਸਭ ਦੀ ਸਸਾ 7 7 700 ਉਹ ਆਪ ਸਤਪੁਰਖ 7 7 ਹੈ ਹਵੇਸ਼ਾ ਰਹਿੜ ਵਾਲਾ ਸਤ ਸਤ ਸੂ ਸਤਪੁਰਖ ਸਤ ਸਰੂਪ ਹੈ ਜਿਹੜਾ ਜੀ ਪੈਦਾ ਹੋਇਆ ਉਹ ਸਤਪੁਰਖ ਤੋਂ ਹੀ ਪੈਦਾ ਹੋਇਆ ਸਤਪੁਰਖ ਤੇ ਪੈਦਾ ਹੋ ਤੋ ਕੁਛ ਹੋਰ ਤੇ ਨਹੀਂ ਪੈਦਾ ਹੁੰਦਾ ਸੋ ਸਰਨ ਪਰੇ ਜੇ ਪਾਏਂ ਛਲ ਉਹ ਪੈਂਦੇ ਨੇ ਸਤਪੁਰਖ ਦੀ ਜੇ ਪਾਏਂ ਜੇ ਪਾਏਂ ਜਿਹੜਾ ਤੇ ਕਿਰਪਾ ਹੋ ਜਾਂਦੀ ਹੈ ਫਸਤ ਉਹੀ ਸ਼ਰੂਪ ਹੁੰਦਾ ਸਿਮਰ ਸਿਮਰ ਉਹਨੂੰ ਗਾਇਆ ਕਿ ਸੁਣਾਇੰਦਾ ਸੁਭ ਜਾ ਕੇ ਬਾਰੇ ਤੇ ਬੋਲਿਆ ਬਦਲੇ ਸਤ ਸਰੂਪ ਬੰਦੇ ਹੀ ਬਾਲ ਲੈ ਚੂੜ ਸੂਪ ਬੰਦੂੜੋ ਸੁਝੋ ਹੈ ਬਾਇਲ ਜੁੜਿਆ ਆਇਆ ਕਰਕੇ ਬਦਲੇ ਸਤ ਸਰੂਪ ਹੈ ਪਾਈ ਚੂੜ ਰ ਤਾਂ ਜੋੜਿਆ ਸੀ ਇਹਦਾ ਮਤਲਬ ਸੀ ਤੂੰ ਵੀ ਝੂਠਾ ਨਾ ਜੁੜਦਾ ਤਾਂ ਗੱਲ ਵੱਢੀ ਦੀ ਸੀ ਆਪਣੀ ਤੈਨੂੰ ਕੋ ੱਤਕਾ ਦੇ ਕਿ ਨਹੀਂ ਛੜਿਆ ਹੋਇਆ ਤੈਨੂੰ ਬਾਹਰ ਭੇਜਿਆ ਸੀ ਤੂੰ ਬਾਹਰੋਂ ਕੋਈ ਆਇਆ ਹੋਵੇ ਆਪਣੇ ਤੇ ਉਹ ਤਾਂ ਬਾਹਰ ਇੱਥੇ ਬਸ ਕੇ ਕੋਈ ਗੱਲ ਗਿਆਨ ਅੰਦਰ ਹੈ ਗਿਆਨ ਅੰਦਰ ਨਾਲ ਆਪਣਾ ਬਲਬੜ ਕੇ ਕਰੀਂ ਤੁਰ ਤੂੰ ਸਕਦੀ ਉਹ ਜੇ ਬਰਬਲੀ ਨੇ ਸਾਰੇ ਕਹਾੜੀ ਦਾ ਰਾਜਾ ਰਾਮ ਕੀ ਸਮਝਾਈ ਤਾਂ ਵਰ ਬੰਦ। ਕਤਵੀਰ ਕਹਿੰਦਾ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾੜੀ। ਉਹ ਰਾਜਾ ਸਮਝਾਇਆ। ਉੱਧੀ ਨੇ ਸਮਝਾਇਆ ਉਹ ਦੋਸਤਾ ਪਰਾਵ ਉਹ ਤਰੀ। ਫਿਰ ਉਹਦੀ ਜੇ ਸਮਝ ਆਉਣ ਲੱਗੀ ਅਕਲ ਦੇ ਸਮਝ ਆਉਣ ਲੱਗੀ ਗੱਲ। ਫਿਰ ਉਹਨੇ ਕਹੇ ਗੱਲ ਤਾਂ ਠੀਕ ਹੈ ਸਭ ਹਰ ਸਰਨ ਜੇ ਪਾਏਂਗ ਸਿਮਰ ਸਿਮਰ ਗੁਰ ਗਾਏ ਸੁਣਾਏਂ ਸਿਮਰ ਸਿਮਰ ਗੁਰ ਗਾਏ ਸੁਣਾਏ ਕੁਝ ਐਸਾ ਵੀ ਇਹਦਾ ਚਿੰਕੇਤ ਹੈ ਦੇ ਵਿੱਚ ਕਿ ਸਰਕਮ ਸਟਾਲਸ ਅਲਟਰ ਕੇਸਸ ਕੁਝ ਐਸਾ ਵੀ ਜਿਹੜਾ ਆਦਮੀ ਦੇ ਹੱਥ ਵਿੱਚ ਵੀ ਨਹੀਂ ਉਹਨੇ ਕਰਨਾ ਹੀ ਹੈ ਸਾਡੇ ਦੇ ਸਾਬ ਉਏ ਲੋਕੋ ਪਾਬਰਲੇ ਜੋ ਕੁਛ ਕਰ ਦਵੇ ਤਾਂ ਉਹ ਨੂੰ ਕਿੰது ਪ੍ਰੰਤੂ ਉਹ ਤੇ ਹੁੰਦਾ ਨਹੀਂ। ਕੋਈ ਜਿਹੜੇ ਬੰਦੇ ਆ ਜਾਨਾ ਇੰਤਜ਼ਾਰ ਖੜੇ ਵੀ ਨਾਮ ਦੇ ਸੱਚ ਖੰਡੋਲ ਨੇ। ਇੱਥੇ ਬੰਦੇ ਤੇ ਆ ਰਹੇ। ਸ਼ਾਮ ਦਾ ਟਾਈਮ ਹੈ। ਰਾਤ ਬਸ ਚੱਲੀ ਗਈ। 50-60 ਸਵਾਰ ਕੇ ਹੋਰ ਖੜੀਏ। ਉਹਨਾਂ ਨੇ ਵਾਇਰ ਕਰਤਾ ਵੀ ਇੱਕ ਹੋਰ ਭੇਜ ਦਿਓ। ਕੋਦੇ ਦੇ ਫਟਾਫਟ ਸਵਾਰੀਆ ਬੂਰੀਏ ਨੇ ਬਸਦੀ ਹੈ ਉਹ ਹੋਰ ਕਿੱਦਾਂ ਬਸ ਕੇ ਉਧਰੋਂ ਖਲੀ ਹੋਵੇ ਉਹਨੂੰ ਤਾਂ ਪੈਸੇ ਚਾਹੀਦੇ ਨੇ ਚਲ ਇੱਥੇ ਤਾਂ ਪੈਸੇ ਚਾਹੀਦੇ ਨੇ ਸੱਚ ਕੰਡ ਦੀ ਤਾਂ ਹੋਰ ਗੱਲ ਲੱਗਣਾ ਜੇ ਇੱਥੇ ਹੈਗੇ ਨੇ ਇੰਤਜ਼ਾਰ ਤੇ ਆਰਾਧਨਾ ਵਾਲੇ ਰਹੋ ਸਾਰੇ ਉੱਥੇ ਆਰਾਧਨਾ ਹੁੰਦੀ ਜਪਿਆ ਹੋਇਆ ਹੈ ਸਭ ਤਾਂ ਜੋ ਪਿਆ ਹੈ ਸਬਦਾ ਸਮਝਾਈ ਹੋਈ ਹੈ ਸਭ ਦੀ ਸੰਤੋਖੀ ਨੇ ਮਾਇਆ ਤੋਂ ਬਚੇ ਹੋਏ ਨੇ ਬਚਣਾ ਚਾਹ ਉਹ ਸਾਰੀ ਗੱਲ ਪੂਰੀ ਹੈ ਸਿਰੋ ਨਾਮ ਨਹੀਂ ਮਿਲਿਆ ਸਵਾਰੇ ਦੀ ਬੜੀ ਸੰਸਾਰ ਛੱਡ ਕੇ ਆ ਗਏ ਕੰਡੇ ਦੇ ਖੜੇ ਨੇ ਵੀ ਸਾਨੂੰ ਆਪਣੇ ਪਾਸੇ ਨੂੰ ਆ ਦੇ ਪੱਲੇ ਪਾਸੇ ਨਾ ਉਹ ਤਾਂ ਜਹਾਜਵਾ ਹੋਊਗਾ ਵਿਚਾਰੇ ਨਾ ਹੋਊਗਾ ਤੈਨੂੰ ਕਾਉਗਾ ਦ੍ਰਿਆਭਾਰ ਗੈਰਾਂ ਉਦੋਂ ਫਿਰ ਉਹ ਕਿਵੇਂ ਕਰਨੇ ਉਹਨੇ ਕਿਹ ਨੂੰ ਕਿਨੇ ਧਰੂ ਕਰਨ ਇਹ ਉਹਦਾ ਪ੍ਰੋਗਰਾਮ ਇਹ ਉਹਦਾ ਇਹ ਹੋ ਜਾਣੇ ਇਹਦੇ ਬਾਰੇ ਗੁਰਬਾਣੀ ਵੀ ਚੁੱਪ ਹੈ ਤੇਰੀ ਗਤਮਤ ਤੋਹ ਜਣ ਐਸਾ ਵੀ ਕੁਛ ਹੈ ਗੁਰਬਾਣੀ 'ਚ ਜਿਹਦੇ ਬਾਰੇ ਗੁਰਬਾਣੀ ਕੁਛ ਨਹੀਂ ਕਹਿੰਦੀ ਆਪਣੀ ਗੱਤ ਸੁਣ ਤਾਪੇ ਜੋ ਕੀ ਉਹ ਪਹਿਲਾਂ ਇਹ じゃ ਹੁੰਦਾ ਆ ਕਰ ਦਿੰਦਾ ਕੀ ਉਹ ਪ੍ਰੋਗਰਾਮ ਨਾਲ ਲਿਆਉਂਦਾ ਕੀ ਕਰਦਾ ਇਹ ਉਹ ਹੀ ਜਾਣੇ ਕਰ ਦਿੰਦਾ ਨੰਬਰ ਘਟ ਹੋਣ ਪੰਸਤ ਹੋਰ ਦੇ ਦਿੰਦਾ ਪਾਵਰ ਉਹਨੂੰ ਕਹਿੰਦਾ ਕੋ ਪੁੱਛ ਰਦੇ ਪੁੱਛਣ ਵਾਲੇ ਉਹਨੇ ਕਿਹਾ ਭਾਈ ਜੇ ਸਾਡੇ ਪੁੱਛਣਾ ਇਹ ਉਹਨੂੰ ਕਿਹਾ ਕਿਸ ਨੇ ਜਵਾਬਤal ਵੀ ਹੈ ਕੋਈ ਕਰ ਸਕਦਾ ਬਾਲੀਵੁੱਡ ਦਾ ਫੈਸਲਾ ਹੈ ਕੋਈ ਜਵਾਬਤal ਵੀ ਤਾਂ ਇਹਦੇ ਬਾਰੇ ਚੁੱਪ ਬਣ ਸਾਰੇ ਚੁੱਪ ਨੇ ਇਹਦੇ ਬਾਰੇ ਇਹ ਗੱਲ ਜ਼ਰੂਰ ਹੈ ਵੀ ਫਿਰ ਉਸ ਵੇਲੇ ਉਹਨੂੰ ਫੇਰੇ ਪ੍ਰਗਟ ਕਰਨੀ ਪੈਂਦੀ ਹੈ ਗੁਰਮਤ ਗੁਰਮਤ ਵਿੱਚ ਪ੍ਰਗਟ ਹੁੰਦੀ ਰਹਿੰਦੀ ਇਸ ਬੁੱਧਕ ਲੈਵਲ ਦਾ ਆਦਮੀ ਜਦ ਨਹੀਂ ਹੁੰਦਾ ਇਹਦੇ ਯਾਰ ਤੋਂ ਉਲਟੋੜ ਲੱਗੇ ਹੁੰਦੇ ਵਾਲੇ ਪਰੇ ਨੂੰ ਨੇ ਇੱਥੇ ਫੇਰ ਹੋ ਹੀ ਰਹੀ ਦੰਦੇ ਇਹਦਾ ਸਮਝ ਨਹੀਂ ਆਈ ਹੁੰਦੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਲੈਵਲ ਐਤ ਤਾਂ ਇਹ ਬਹੁਤ ਪਲਾਨਡ ਪ੍ਰੋਗਰਾਮ ਨਾਲ ਤਰੀਕੇ ਨਾਲ ਪਲਾਨਡ ਤਰੀਕੇ ਨਾਲ ਕਦਮ ਕੀਤਾ ਨੋਟ ਕਲੇਬ ਬਹੁਤ ਆਦਮੀ ਸੀ ਜਿਹੜੇ 80 ਨੁਮਈਏ ਲੈ ਕੇ ਜਿਹਨੂੰ ਨਿਸ਼ੇਧ ਕੀਤਾ ਗੁਰ ਗੁਰ ਕਹਿਣ ਤੇ ਪਵਨਦੀ ਲਾਈ ਬਹੁਤ ਡੂੰਗੀ ਜੜ ਤਖੜੀ ਡੂੰਗੀ ਸੀ ਐਤ ਕਿ ਪੁੱਟਣ ਕੋ ਚੱਲ ਲੱਗੇ ਇਹਨਾਂ ਨੂੰ ਜਿੱਦ ਤੇ ਯਾਰ ਕੋਟੋ ਨੂੰ ਚੱਲ ਕੇ ਟਕੜਾ ਹੋ ਗਿਆ ਉਹਨੇ ਨਾ ਬੋਲਿਆ ਜੀ ਬਣਾਉਣ ਲਈ ਕੋਪਾਸ ਦਾ ਜੋਰ ਲੱਗਿਆ ਇਹਨਾਂ ਨਾਲ ਸਰਗਰਦ ਕਰਨ ਵਾਸਤੇ ਇਹਦੇ ਉਹ ਨਵੇਂ ਪ੍ਰੋਗਰਾਮ ਨੇ ਜਿਹੜੇ ਬਣ ਰਹੇ ਨੇ ਇਹਦੇ ਤਰ੍ਹਾਂ ਦੇ ਨਿਕਲਣ ਵਾਲੇ ਨੇ ਨਿਕਲ ਜਾਂਦੇ ਨੇ ਜਿਹੜੇ ਬੰਦਿਆਂ ਦੇ ਉੱਤੇ ਜ਼ੁਲਮ ਹੋਏ ਨੇ ਉਹਨਾਂ ਦੇ ਵੀ ਇਮਤਾਨੇ ਸੀ ਜਿੰਨਾ ਇਹਨੂੰ ਸਖਤੀ ਨਾਲ ਦਵਾਇਆ ਜਾਂਦਾ ਨਾ ਸੱਚ ਨੂੰ ਉਹਨੇ ਛੇਤੀ ਬਰਕਰਾਰ ਹੁੰਦਾ ਉਹਨੇ ਛੇਤੀ ਬਰਕਰਾਰ ਹੁੰਦਾ ਕਿ ਆਪਣੇ ਇਹ ਹੜ ਯਾਰ ਯਾਰ ਯਾਰ ਯਾਰ ਹੋਵੇ ਫਿਰ دیر ਬਰਕਰਾਰ ਹੁੰਦਾ ਕੁਦਵਾਰਾ ਜੰਮ ਲੰਦ ਲੰਦ ਜਿਹੜਾ ਕਰਦੇ ਉਸ ਤੋੜਦੀ ਆ ਉਹ ਬੜੇ ਦੰਦ ਨੇ ਡੇਟੇ ਡੇਟੇ ਉਹ ਬੜੇ ਨੇ ਛੇਤੀ ਫਿਰ ਦੁਆਰਾ ਛੇਤੀ ਆ ਜਾਂਦੇ ਨੇ ਫਕਤਾਂ ਦੇ ਬਾਅਦ ਗੁਰੂ ਘਰ ਦੇ ਵਿੱਚ ਜਾਂ ਛੇਤੀ ਦੁਬਾਰਾ ਪ੍ਰਗਟ ਹੋਗੀ ਨਾ ਗੁਰਮਤਿ ਲੋਹਰ ਦੇ ਪਰਗਟ ਕਰਨ ਲਈ ਫਕਤਾਂ ਦੇ ਬਾਅਦ ਇੱਕਦਮ ਬਰਾਬਰ ਕਰਤੀ ਸੀ ਕਿਸੇ ਕੁਤਤ ਡੈਰੀ ਦੀ ਬਰਾਹਰ ਗੁਡ ਨਾਨਕ ਲਈ ਤੇ ਆਇਆ ਹੈ ਕਿਸੇ ਦੀ ਮਦਦ ਨਹੀਂ ਅੰਗਦ ਤੇ ਲਈ ਤੇ ਆਇਆ ਜੀ ਅਮਰਦਾਸ ਲਈ ਤੇ ਆਇਆ ਜੀ ਲਈ ਤੇ ਆਇਆ ਕਦੇ ਨਾਨਕ ਵਿੱਚ ਨਾਨਕ ਦੇ ਆਇਆ ਨਾ ਰੂਸ ਸਮਝਾਈਏ ਯਾਦਾਂ ਉਹਦਰ ਕਬੀਰ ਦੇ ਸਮਝਾਈ ਦੀ ਗੁਰਦੀਦ ਦੀ ਵਸਤ ਕਬੀਰ ਕੋ ਲੈ ਲੋ ਵਸਤ ਬਾ ਕਬੀਰ ਜੀ ਦੀ ਸੰਸਾਰ ਕੋ ਲੈ ਕੇ ਵਸਤ ਬਾ ਨੂੰ ਆਨਕ ਤੇ ਆਂ ਚਾਹੀਏ ਪੜ ਕੇ ਸਾਰੇ ਟੌਪਿਕ ਜਿਹੜੇ ਕਬੀਰ ਆਲੇ ਡਿਸਕਸ ਕੀਤੇ ਨੇ ਚ ਸੋਚੀ ਜੋੜਦਾ ਸੋ ਤੁਹਾਨੂੰ ਪਤਾ ਕਲਾ ਸਾਰੇ ਉਹ ਹੀ ਤੋਂ ਸਾਰੇ ਕੀਤੇ ਇਸ ਦਾ ਸਾਬਤ ਹੁੰਦਾ ਵੀ ਬਾਣੀ ਸਾਰੀ ਗੁਰੂਆਂ ਕੋਲ ਸੀ ਪਰ ਇਹਨੂੰ ਸਮਝਣਾ ਵੀ ਤਾਂ ਬਹੁਤ ਵੱਡੀ ਗੱਲ ਹੈ ਹੁਣ ਵੀ ਹੈ ਸਾਡੇ ਕੋਲ ਸਮਝ ਲੋ ਆਦਮੀ ਦੇ ਵਸਦੀ ਗੱਲ ਨਹੀਂ ਸਮਝ ਮਨੁੱਖੀ ਬੁੱਧੀ ਦੇ ਵਸਦੀ ਗੱਲ ਹੀ ਨਹੀਂ ਉਹ ਇਹ ਵੀ ਕੋਈ ਕਹਿ ਸਕਦਾ ਜੇ ਮਨੁੱਖੀ ਬੁੱਧੀ ਦਾ ਵਸਦੀ ਗੱਲ ਨਹੀਂ ਫਿਰ ਇਹਨੂੰ ਸਮਝੂ ਕੌਣ ਮੈਂ ਬਣਾਵਾਂ ਤੇ ਪਤਾ ਉਹ ਕੋ ਫਰਿਸ਼ਤਾ ਹੋਊਗਾ ਕੀ ਹੋਊਗਾ ਫਿਰ ਇਹਨੂੰ ਸਮਝਣਾ ਮਨੁੱਖੀ ਬੁੱਧੀ ਦੇ ਵਾਸਤੇ ਗੱਲ ਨਹੀਂ ਇਹ ਤੋਂ ਸਮਝਣਾ ਮਨੁੱਖੀ ਬੁੱਧੀ ਦੇ ਵਾਸਤੇ ਗੱਲ ਹੈ ਇਹ ਤੋਂ ਸਮਝਣਾ ਜੇ ਜੇ ਗੁਰਬਾਣੀ ਨੂੰ ਗੁਰੂ ਮੰਨ ਕੇ ਗੁਰਬਾਣੀ ਤੋਂ ਕੋਈ ਸਮਝਣਾ ਤੁਸੀਂ ਫਿਰ ਤਾਂ ਮਨੁੱਖੀ ਬੁੱਧੀ ਦੇ ਵਾਸਤੇ ਗੱਲ ਜੇ ਤੈ ਤੇ ਗੁਰਬਾਣੀ ਨੂੰ ਸਮਝਣ ਲੱਗੇ ਫੇਰ ਨਹੀਂ ਸਮਝ ਚੜੀ। ਫੇਰ ਸਮਝ ਚੜੀ। ਨੂੰ ਸਮਝਣ ਵਾਲਾ ਉੱਤੋਂ ਦੇਖਦਾ ਹੁੰਦਾ। ਤੋਂ ਅੱਗੇ ਵਾਲਾ ਪੈਰੋਂ ਖੜ ਕੇ ਦੇਖਦਾ ਹੁੰਦਾ। ਮੁਖਵਟਾ ਕਰ। ਜਿਵੇਂ ਰਸੋਈ ਦਾ ਕਰ। ਉਹ ਆਪਣੇ ਆਪ ਨੂੰ ਗੁਰਬਾਣੀ ਤੋਂ ਉੱਚਾ ਸਮਝਦਾ ਹੁੰਦਾ। ਵਿਦਵਾਨ ਆਪਣੇ ਆਪ ਨੂੰ ਗੁਰਬਾਣੀ ਤੋਂ ਉੱਚਾ ਸਮਝਦੇ। ਗੁਰੂ ਨੀ ਰਵੇਦਾ ਜਿੰਨਾ ਜਰ ਅਸੀਂ ਆਪਣੀ ਬੁੱਧੀ ਅਨਸਾਰ ਗੁਰਬਾਣੀ ਨੂੰ ਸਮਝਾਉਣ ਗਿਆ ਪੜ੍ਹਾਂਗੇ ਉਹ ਨਾ ਜੇ ਅਸੀਂ ਉੱਚਿਆਂ ਗੁਰਬਾਣੀ ਜੇ ਗੁਰਬਾਣੀ ਤੋਂ ਬੜਾਗੇ ਫਿਰ ਇਹ ਗੁਰਬਾਣੀ ਤੇ ਉਹ ਸਾਰੀਆਂ ਹੀ ਗੱਲਾਂ ਜੋ ਗੁਰਬਾਣੀ ਨੇ ਰੱਦ ਕੀਤੀਆਂ ਸੀ ਅਰਥ ਨਵੇਂ ਦਿੱਤੇ ਤੇ ਉਹ ਤਾਂ ਨਹੀਂ ਅਸਲੀ ਹੈ ਅਸੀਂ ਗੁਰਬਾਣੀ ਨੂੰ ਬੜਿਆ ਗੁਰਬਾਣੀ ਤੋਂ ਨਹੀਂ ਬੜਿਆ ਜਿਹੜੇ ਜਿਹੜੇ ਅਰਥ ਬਦਲੇ ਡੇ ਸਾਰੇ ਗੁਰਬਾਣੀ ਆ ਕਹਿ ਦਿਆ ਭਾਈ ਅਸੀਂ ਅਰਥ ਨਹੀਂ ਲੈ ਗੁਰਬਾਣੀ ਨੂੰ ਬੜਿਆ ਲੈ ਕੇ ਜੰਕ ਪੜ੍ਹਨ ਲੱਗੇ ਜਨਕ ਦੇ ਅਰਥ ਜਿਹੜੇ ਪਹਿਲੇ ਸੀ ਉਹ ਲੈ ਕੇ ਇੱਥੇ ਰੋਕਦੇ ਗੁਰਬਾਣੀ ਤੋਂ ਬੜਦੇ ਜਦ ਜਨਕ ਦੇ ਅਰਥ ਬਦਲਦੇ ਜਨਕ ਸੋਈ ਜਦ ਜਾਲੇ ਤਾਂ ਨਵੇਂ ਅਰਥ ਹੁੰਦੇ ਨਾਮ ਦੇ ਨਵੇਂ ਅਰਥ ਅਸੀਂ ਲੈਂਦੇ ਜਪ ਦੇ ਨਵੇਂ ਅਰਥ ਲੈਂਦੇ ਤਪ ਦੇ ਨਵੇਂ ਅਰਥ ਲੈਂਦੇ ਗੁਰਬਾਣੀ ਤੋ ਨਹੀਂ ਪੜਿਆ ਬਾਣੀ ਨੂੰ ਗੁਰੂ ਗ੍ਰੰਥ ਘਰੀ ਪੜਿਆ ਗੁਰੂ ਤਾਂ ਅਸੀਂ ਆਪੋ ਦੁਜੇਰ ਪੜਾਵੇ ਕਥਾ ਬਣਾ ਲਿਖਦੇ ਨੇ ਤੇ ਗੁਰਬਾਣੀ ਨੂੰ ਦੇਖਿਆ ਵੀ ਇਹਦਾ ਸਟੈਂਡਰਡ ਕਿੱਥੋਂ ਆਈ ਹੈ ਇਹਦਾ ਸਟੈਂਡਰਡ ਕੀ ਹੈ ਜਿਹੜੇ ਆਮ ਜਨਤਾ ਉਹਦੇ ਸਟੈਂਡਰਡ ਨਾਲ ਗੁਰਬਾਣੀ ਦਾ ਸਟੈਂਡਰਡ ਦਾ ਕੀ ਮਤਲਬ ਇਹ ਸੰਸਾਰ ਨੂੰ ਸੇਧ ਦੇਣ ਵਾਸਤੇ ਆਈ ਹੈ ਤੁਰਕੀਵੜ ਜੇ ਸੰਸਾਰ ਦੇ ਕੋਨੇ ਸੇ ਦੌਦੀ ਫੇਰੇ ਨੂੰ ਤੁਰਕੋਂ ਦੀ ਕੀ ਲੋੜ ਸੀ ਇਹ ਦੋ ਨਹੀਂ ਅਧੀ ਕੁਛ ਲੈ ਇਹਨੂੰ ਅਰਥ ਦਿੱਤੇ ने अपनी ਮਰਜ਼ੀ ਦੇ ਆਪਣਾ ਪੈਰੀ ਬਦਲਿਆ ਇਹਦੇ ਨਾਲ ਇਹਨੂੰ ਬਦਲਿਆ ਆਪਣੇ ਅਨਸਾਰ ਜਿਹਾ ਜਾਂ ਤਰ ਨੂੰ ਸਾਰੂ ਫਿੱਟ ਹੈ ਉਹ ਜਿਹੜੇ अपने आप ਲੈ ਅਸੀਂ ਆਪਣੇ ਆਪ ਨੂੰ ਆਪਣੀ ਲੈਅ ਨਹੀਂ ਬਦਲੀ ਲੈ ਤਾਂ ਆਪਣੀ ਬਦਲਨੀ ਸੀ ਇਹ ਤੇ ਨਾਲ ਦਰਿਆ ਨੂੰ ਬਦਲ ਕੇ ਨਹਿਰ ਬਣਾਤੀਓ ਦਰਿਆ ਦਾ ਲੈਣਾ ਆਮੀ ਬੇਰਾਂ ਦਾ ਬੜੀ ਸੁੰਦਰ ਜਿਗਾ ਫਿਰ ਤਰੇ ਜਿਹੜਾ ਬਾਣੀ ਨਹਿਰਾਂ ਚ ਵਹਿ ਗਿਆ ਸੁੰਦਰ ਚ ਨਹੀਂ ਜਾਂਦਾ ਰੋਗ ਦਿੱਤਾ ਸੁੰਦਰ ਚ ਰਿਆਲੇ ਵਿੱਚ ਜਿਹੜਾ ਪਾਣੀ ਹੋਈ ਜਾ ਸਕਦਾ ਸਮੁੰਦਰ ਚ ਇਹ ਤਾਂ ਬੰਨ ਲਾ ਕੇ ਗਹਿਰਾ ਬਦਲਦੀ ਹੈ ਦਰਿਆਵਾਂ ਦਾ ਪਰ ਆRazee ਨੂੰ ਚੰਗਾ ਸਮਝਦੇ ਪੌੜਾ ਬੜਾ ਤਰੱਕੀ ਦਾ ਕੰਮ ਸੰਸਾਰੀ ਦ੍ਰਿਸ਼ਟੀ ਕੋਲ ਦਾ ਕੰਮ ਕੰਮ ਪਾੜੇ ਤੋਂ ਕੰਮ ਲੈ ਲੈ ਜਿਹੜਾ ਜਾਂ ਜਾਂਦਾ ਜਿਹੜਾ ਲੋਕਤ ਹੋ ਗਿਆ ਸੰਸਾਰ ਦੇ ਹਿਸਾਬ ਨਾਲ ਜਾ ਗਿਆ ਉਦੀ ਜ਼ਿੰਦਗੀ ਤਾਂ ਇਹੀ ਲੱਗਦਾ ਇਹਨੇ ਲਾਲਗਲਾ ਬਣਾਤਾ ਉਹ ਨਹੀਂ ਜਾਏਂਗੇ। ਉਹ ਨਹੀਂ ਉਹਦੇ ਹਿਸਤੇ ਸਾਡੇ ਮਨ। ਉਹ ਕਿੱਥੇ ਜਾਏਂਗੇ? ਜਿੱਤੇ ਕਰਕੇ ਤਾਜ ਮਹਿਲ ਬਣਿਆ ਉਹ ਜਾ ਹੀ ਨਹੀਂ ਗਿਆ। ਉਹਦੀ ਬੜੀ ਇੱਜ਼ਤ ਹੈ ਸਾਡੇ ਮਨ ਚ। ਬਲ ਮਾਰ ਕਾ ਮਾਰ ਗਿਆ। ਉਹੋ ਜਿਹੀ ਅਸੀਂ ਜਿਹੜੀ ਚੀਜ਼ ਨੂੰ ਅਸੀਂ ਮਹੱਤਵ ਦਿੰਦੇ ਆ ਉਹ ਜਾ ਵੜਦੀ जे ਕਰਦੇ ਆ ਜੇ ਭਗਤਾਂ ਨੂੰ ਮਹੱਤਵ ਦਿੰਦੇ ਹੋਈ ਭਗਤ ਵੜਦੀ ਕੋਸ਼ਿਸ਼ ਕਰੀਏ ਮਹੱਤਵ ਨਹੀਂ ਦਿੰਦੇ ਤਾਂ ਤਾਨੂੰ ਬਿਲਕੁਲ ਵੀ ਅਸੀਂ ਐਵੇਂ ਤੋਤੋ ਕਰਦੇ ਜੇ ਜਨਮ ਹੋਰ ਮੁਖ ਹੋਰ ਸਗਾੜੇ ਜਿਹੜੀ ਚੀਜ਼ ਨੂੰ ਜੇ ਭਗਤਾਂ ਨੂੰ ਮਹੱਤਵ ਦਈਏ ਦਿੰਦੇ ਹੋਈਏ ਤਾਂ ਉਹੇ ਜਿਹਾ ਬਣਨ ਦੀ ਕੋਸ਼ਿਸ਼ ਕਰੀਏ ਕੋਈ ਜਦ ਤੋ ਕੋਈ ਵੀ ਕਰ ਰਿਹਾ ਕੋਸ਼ਿਸ਼ ਨਹੀਂ ਕੋਈ ਕਰ ਰਿਹਾ ਸਾਫ ਯਾਰ ਹੁੰਦਾ ਕਿ ਧਰਮ ਨਾਲ ਵੀ ਅਸੀਂ ਫਰੋਡ ਕਰਦੇ ਹਾਂ ਧਰਮ ਨਾਲ ਫਰੋਡ ਨਹੀਂ ਕਰਦੇ ਅਸੀਂ ਆਪਣੇ ਆਪ ਨਾਲ ਫਰੋਡ ਕਰਦੇ ਧਰਮ ਨਾਲ ਕੀ ਫਰੋਡ ਹੁ ਜੇ ਕੋਈ ਰੇਲ ਚੋ ਛાડਬਾਰ ਦਵੇ ਰੇਲ ਦਾ ਬਰਾਉੜ ਚਲਦੀ ਜੋ ਰੇਲ ਦਾ ਬਰਾਉੜਾ ਆਪਣੇ ਆਪ ਨੂੰ ਬਰਾਉੜਾ ਅਵਾਜ ਯਾਹ ਲੈ ਜਾਂਦਾ ਹੈ ਸਮੁੰਦਰੀ ਯਾਹ ਲੈ ਜਾਂਦਾ ਤੁਹਾਨੂੰ ਪਾਰ ਕਰਨ ਨੂੰ ਤੂੰ ਹੀ ਮਾਰ ਤੋ ਛੜ ਉੱਤਰ ਜੋ ਲੈ ਰਾਂ ਜੇ ਸਿਆਣੇ ਹੋ ਇਹ ਮੂਰਖ ਪਰ ਇੱਥੇ ਨਹੀਂ ਕਰਦੇ ਸੀ ਇਹ ਕੰਮ ਸਾਹਮਣੇ ਲੈਣਾ ਨੇ ਸਾਹਮਣੇ ਰੁਭਜੂਗਾ ਉਹ ਤਾਂ ਅਸੀਂ ਸੁਣੀ ਹੋਈਆਂ ਗੱਲਾਂ ਨੇ ਬਾਣੀ ਦੇ ਅਸੀਂ ਵਿਸ਼ਵਾਸ ਹੀ ਨਹੀਂ ਕਰਦੇ ਵਿਸ਼ਵਾਸ ਉਹ ਚੀਤੇ ਕਰਦੇ ਜੋ ਅੱਖਾਂ ਨੂੰ ਦਿਖਦਾ ਵਿਸ਼ਵਾਸ ਉਹ ਚੀਤੇ ਕਰਦੇ ਜੋ ਕਦੋਂ ਨੂੰ ਸੁਰਦਾ ਹੈ ਵਿਸ਼ਵਾਸ ਉਹ ਚੀਤੇ ਕਰਦੇ ਜਿਹੜਾ ਜੀਵਨ ਦੇਖ ਲਿਆ ਖੱਟਾ ਮਿੱਠਾ ਜੋ ਸਾਡੇ ਗਿਆਨ ਦੇੰਦਿਆਂ ਦੀ پکڑ ਚ ਉਹ ਤੇ ਜੋ ਇਹ ਤੇ ਪਰੇ ਦੀਆਂ ਗੱਲਾਂ ਨੇ ਤਾਂ ਫਰਜੀ ਬੰਦੇ ਵਾਲੀ ਇਹ ਤਾਂ ਫਰਜੀ ਹੀ ਗੱਲਾਂ ਬੰਦੇ ਹੋ ਵੀ ਸਕਦਾ ਕਿ ਨਹੀਂ ਹੋ ਸਕਦਾ ਇਸੇ ਦੂਧਾ ਚ ਪਹਿਲਾਂ ਤਾਂ ਗੱਲ ਜੀਵਨ ਮੁਕਤੀ ਕੀ ਕੀ ਹੁੰਦੀ ਹੈ ਕਿ ਪੋਸੀਬਲ ਵੀ ਹੈ ਜੀਵਨ ਮੁਕਤੀ ਹੁੰਦੀ ਹੋਈ ਵਿਦਵਾਨ ਇਹ ਬੰਦੇ ਨੇ ਪਰ ਲੱਗਦੇ ਹੋ ਉਮੰਦਰੇ ਵੀ ਜਿੰਨਾ ਚਿਰ ਮਨ ਸੰਸਾਰ ਦੇ ਵਿੱਚ ਹੈ ਇਹ ਟਿਕ ਨਹੀਂ ਸਕਦਾ ਸਭਿਤ ਵਰ ਬੰਦੇ ਨੇ ਬੇਦਾਂਤੀ ਬੰਦੇ ਮਨ ਦਾ ਟਿਕਣਾ ਇੰਪੋਸੀਬਲ ਇੰਪੋਸੀਬਲ ਬੰਦਾ ਸ਼ਾਂਤ ਹੋ ਕੇ ਬੈਠ ਜਾਣਾ ਇੰਪੋਸੀਬਲ ਕਲਪਨਾ ਕੱਟੀ ਜਾਊਗੀ ਇੰਪੋਸੀਬਲ ਉਸ ਵੀ ਵਾਲੇ ਨਹੀਂ ਇਸ ਕਰਕੇ ਨਕਟੀ ਡਕਟੀ ਦੁਰਖਤਾ ਨਾ ਟੱਟੀ ਜਾਣਵਾੜੀ ਪੂਰਾ ਸ਼ਬਦ ਹੈ ਕੋਈ ਉਹਦਾ ਡਕਟੀ ਤੇ ਇਹ ਵਿਸ਼ੇ ਕੀ ਨੇ ਸ਼ਬਦ ਵਿਸ਼ੇ ਨੇ ਇਹ ਸ਼ਬਦ ਸਾਰੇ ਵਿਸ਼ੇ ਨੇ ਪਿਛਲੇ ਧਰਮ ਦੇ ਜਿਹੜੇ ਵਿਸ਼ੇ ਨੇ ਉਹਨਾਂ ਦੇ ਉਹ ਡਿਸਕਸ ਕੀਤਾ ਹੋਇਆ ਤੁਸੀਂ ਨਕਟੀ ਕਹਿੰਦੇ ਇਹਦਾ ਮਤਲਬ ਤੁਹਾਡੇ ਧਰਮ ਦੀ ਕਪੈਸਿਟੀ ਤੋਂ ਬਾਹਰ ਹੈ ਰੁਪਟਣਾ ਤਨੋਖੀ ਗੱਲ ਹੈ ਡਕਟੀ ਕਾ ਠਣਗੜ ਬਾਡਾ ਢੂ ਕਿ ਨਹੀਂ ਬਵੇਕੀ ਕਾਟੀ ਤੂੰ ਕੋਈ ਬਵੇਕੀ ਜਿਹੜੇ ਨੇ ਤੈਨੂੰ ਕੱਟ ਦੁੰਦੇ ਨੇ ਉਹ ਕਹਿੰਦੇ ਤੇ ਨਹੀਂ ਕੱਟੀ ਜਾ ਸਕਦੀ ਕਬੀਰ ਨੇ ਦਾਅਵਾ ਕੀਤਾ ਬਵੇਕੀ ਕਲਪਣਾ ਨੂੰ ਕੱਟ ਦਿੰਦੇ ਨੇ ਆਪਾਂ ਬਰੋਦੀ ਗੱਲਾਂ ਖੜੀਆਂ ਨੇ ਦੋ ਦੋ ਧੜੇ ਖੜੇ ਨੇ ਆਪਾਂ ਬਰੋਦੀ ਸਰਖ ਤੋਂ ਸੱਚ ਤਾਂ ਉਲਟਾ ਸਾਰਾ ਤਾਂ ਸਾਰੇ ਤਾਲੂ ਸਾਥੀ ਤੋਂ ਉਲਟ ਖੜੇ ਢੀਂਦੇ ਨੇ ਐਨ ਰਾਤੇ ਗਜਰਾਂ ਦੇ ਗੁੱਠਲੀਆਂ ਰੜਾਤੀ ਅੱਖਾਂਆਂ ਨੇ ਤਾਂ ਲੈਣੀਆਂ ਨੇ ਗਜਰਾਂ ਵੀ ਪਿਛਾੜ ਲੈਣੀਆਂ ਨੇ ਅੰਨਿਆਂ ਨੂੰ ਅੱਖਾਂ ਜਿਹਨਾਂ ਦੇ ਅੰਨੈ ਰੇ ਗਜਰਾਂ ਨੂੰ ਕੋਈ ਫਰਕ ਨਹੀਂ ਉਹਨਾਂ ਨੂੰ ਗੁੱਲੀਆਂ ਗਜਰਾਂ ਦਾ ਸੰਦੇਸ਼ ਜਿੰਨੇ ਵੀ ਸ਼ਬਦ ਨੇ ਉਹ ਅਲੱਗ-ਅਲੱਗ ਟੌਪਿਕ ਨੂੰ ਡਿਸਕਸ ਕੀਤਾ ਹੈ ਕਿ ਕਿਦੋਂ ਕੋਈ ਮਿੱਥ ਥੋੜੀ ਹੋਈ ਹੈ ਕਿਤੇ ਕਿਤੇ ਜੂੜ ਸੱਚ ਦੀ ਗੱਲ ਹੈ ਕਿਤੇ ਪੁੰਨ ਪਾਪ ਦੀ ਗੱਲ ਹੈ ਕਿਤੇ ਜੰਮਲ ਬਰਨ ਦੀ ਗੱਲ ਹੈ ਕਿਤੇ ਹੁਕਮ ਦੀ ਗੱਲ ਹੈ ਕਿਤੇ ਉਹ ਚੀਜ਼ ਮੰਨਦੇ ਨੇ ਮੰਨਣ ਯੋਗ ਨਹੀਂ ਹੈ ਗੁਰਬਾਣੀ ਨਹੀਂ ਮੰਨਦੀ ਉਹ ਬੰਦੇ ਨੇ ਜਿਵੇਂ ਜੰਮੜਵਾਲ ਨੂੰ ਮੰਨਦੇ ਨੇ ਗੁਰਬਾਣੀ ਨਹੀਂ ਮੰਨਦੀ ਪੁਰਬਾਬ ਨੂੰ ਮੰਨਦੇ ਨੇ ਗੁਰਬਾਣੀ ਨਹੀਂ ਮੰਨਦੀ ਗੁਰਬਾਣੀ ਕਿਉਂ ਨਹੀਂ ਮੰਨਦੀ ਦਲੀਲਾਂ ਨੇ ਉਹ ਕਿਉਂ ਮੰਨਦੇ ਨੇ ਕੋਈ ਦਲੀਲ ਨਹੀਂ ਚਲੂ ਕੀ ਰੋੜਾ ਕਿਉਂ ਨਹੀਂ ਮੰਨਦੀ ਗੁਰਬਾਣੀ ਦਲੀਲ ਦੇਤੀ ਬਾਪ ਪੁੱਤ ਉਹ ਬਰੇ ਵਸਦੇ ਨੇ ਸਾਡੇ ਬਸ ਵਿੱਚ ਹੈ ਜੇ ਸਾਡੇ ਬਸ ਵਿੱਚ ਹੋਵੇ ਬਾਪੁੱਤ ਤਾਂ ਅਸੀਂ ਸ਼ਕਤੀਸ਼ਾਲੀ ਹੋ ਗਏ ਕਮਲ ਕਮਲ ਪਰਮੇਸ਼ਰ ਦਾ ਤੇ ਹੁਕਮ ਹੀ ਜੇ ਸਾਡਾ ਹੁੰਜਦਗੇ ਤਾਂ ਆਣਾ ਸਭ ਕੁਝ ਉਹਦੇ ਹੁਕਮ ਤੋਂ ਹੁੰਦਾ ਚਲੋ ਤਾਂ ਦੀ ਕੀ ਬੁੱਧ ਨਹੀਂ ਰਹ ਜਾਂਦੀ ਕਿ ਉਹਦੇ ਹੁਕਮ ਨਾਲ ਹੁੰਦਾ ਇਹ ਤੇ ਲਈ ਦੇਤੀ ਉਸ ਜਾਂਦੇ ਨੇ ਉਹਦੇ ਹੁਕਮ ਰੋ ਵੀ ਸਭ ਕੁਝ ਹੁੰਦਾ ਵੀਰੇ ਹੁਕਮ ਰੋ ਵੀ ਹੁੰਦਾ ਉਦੋਂ ਹੀ ਵਰਤੈ ਤਾਂ ਕਾਇਸ ਉਦਾਰਾ ਉਹ ਜਦੋਂ ਜਦੋਂ ਦਾ ਇਸ ਤਰੀਕੇ ਨਾਲ ਗੁਰਬਾਣੀ ਜੋ ਕੁਝ ਸਾਰੀਆਂ ਮਨਮਤਾਂ 'ਚ ਹੈ ਸਾਰਾ ਹੀ ਉਲਟਾ ਗੁਰਬਾਣੀ ਨੇ ਕਰਤਾ ਉਲਟਾਈ ਦਿੱਤਾ ਬਿਲਕੁਲ ਉਲਟੀਰੇ ਵਰ ਉਲਟੀ ਨੇ ਕਰ ਪੁਲਤੀ ਹੈ ਸਭ ਕੁਝ ਉਲਟਾਤਾ ਪਰ ਗਵਾਨ ਉਲਟਾਤਾ ਤਖਤ ਉਲਟਾਤਾ ਵਖਤ ਕੀ ਹੁੰਦਾ ਉਹਨੇ ਬਰਦਾ ਕਰੰਗ ਬਾਹਰ कि ਕੇ ਬਣਾ ਲੈਂਦਾ ਕਿਦੋਂ ਉਹਦਾ ਵਿਛੁਰ ਜਿਹੜਾ ਦੇਵਤਾ ਜਿਹੜਾ ਰਾਖਾ ਉਹਰੇ ਭੱਜ ਲੈਂਦਾ ਭੱਜਾ ਫਿਰਦਾ ਡਰਦਾ ਲੁਕਦਾ ਫਿਰਦਾ ਉਹਦੀ ਭਗਤੀ ਕਰਦੇ ਨੇ ਜਿਹੜਾ ਸਦੀਰ ਨੂੰ ਸੋਇਆ ਦਾ ਸਤ ਤੋੜਨ ਜਾਂਦਾ ਹੈ ਅਪਰਾਧੀ ਉਹਦੀ ਭਗਤੀ ਕਰਦੇ। ਵਿਸ਼ਣ ਹਾਂ ਵਿਸ਼ਣ ਬ੍ਰਹਮਾ ਸ਼ਿਵ ਜੀ ਤਿੰਨੇ ਸਦੀਰ ਨੂੰ ਦਾ ਸਤ ਤੋੜਨ ਜਾਂਦਾ ਜੇ ਆਪਣੀਆਂ ਜਨਨੀਆਂ ਦੇ ਕਹੇ ਤੇ ਉਹਦਾ ਲੋਕ ਉਹ ਸਾਡੇ ਤੋਂ ਉੱਚਾ ਚਾਹੁੰਦਾ ਉਹਦਾ ਸੱਤ ਕਰਕੇ ਉਸ ਭਗਤੀ ਕਰਨ ਦੀ ਗੱਲ ਕਰਦੇ ਜਿਹੜਾ ਭਾਈ ਦੀ ਜਨਾਨੀ ਜੂਆ ਚਾਰ ਜਾਂਦਾ ਉਹਨੂੰ ਧਰੋ ਪੁੱਤਰ ਕਹਿੰਦੇ ਜਿਹੜਾ ਨਾਉਂਦੀਆਂ ਜਨਾਨੀਆਂ ਦੇ ਕੱਪੜੇ ਚੱਕ ਲੈਂਦਾ ਉਹਨੂੰ ਕ੍ਰਿਸ਼ਨ ਭਗਵਾਨ ਕਹਿੰਦੇ ਆ ਇਹ ਧਰੋ ਕੌਣ ਮੰਨੂ ਇਹਨੂੰ ਧਰੋ ਇਸ ਕਰਕੇ ਮੁਸਲਮਾਨ ਖਰਾਬ ਸੀ ਇਹਨਾਂ ਦਾ ਇਤਿਹਾਸ ਪੜ ਕੇ ਹੀ ਮੁਸਲਮਾਨ ਆ ਪੜ੍ਹ ਕੇ ਵੀ ਆ ਕੋਈ ਤੁਸੀਂ ਧਰਮ ਬਣ ਲਿਆ ਜੇ ਇਹ ਕੋਈ ਧਰਮ ਬਣ ਗਿਆ ਸੰਸਾਰ ਦਾ ਹਾਲ ਕੀ ਹੋਊਗਾ ਜੇ ਇਹ ਧਰਮ ਲਿਆ ਸੰਸਾਰ ਦਾ ਹਾਲ ਕੀ ਕਰਕੇ ਲੱਖਾਂ ਹੀ ਹਿੰਦੂ ਮੁਸਲਮਾਨ ਬਣ ਗਏ ਇੱਕ ਵੀ ਮੁਸਲਮਾਨ ਹਿੰਦੂ ਨਹੀਂ ਬਣਿਆ ਅਜੇ ਤੱਕ ਕੋਈ ਮੁਗਲਾ ਨਾ ਹੋਆ ਕਾਲਾ ਸੀ ਨਾ ਹਿੰਦੂ ਹਿੰਦੂ ਦੋ ਰਿਵੜੇ ਦੋ ਰਿਵੜੇ ਇੱਕ ਵੀ ਮਿਸਾਲ ਨਹੀਂ ਕਿ ਮੁਸਲਮਾਨ ਹਿੰਦੂ ਬਣੇ ਹੋ ਗਏ ਸਿੱਖ ਬਣ ਗਏ ਇਥੇ ਆ ਕਿ ਮੁਸਲਮਾਨ ਸਿੱਖ ਬਣ ਗਏ ਉਹਦੇ ਅੱਖਾਂ ਨੇ ਜਿਹਨੂੰ ਕਹਿੰਦਾ ਵੀ ਤੇਰੇ ਇੱਕ ਅੱਖਾਂ ਲੈ ਭਾਈ ਤੈਨੂੰ ਦੂਜੀ ਦਾ ਬੋਪਨ ਦੇ ਦੇ ਹੋ ਕੀ ਚਾਹੀਦਾ ਵੀ ਇੱਕ ਅੱਖ ਖਰਾ ਲੂ ਜੇ ਪ੍ਰੈਸ਼ਰ ਕਰਤੀ ਕਿਸੇ ਨੇ ਇੱਕ ਅੱਖ ਠੀਕ ਕਹਿੰਦਾ ਲੈ ਆ ਵੀ ਦੋਈ ਵੀ ਤੇਰੀ ਠੀਕ ਕਰਦੀ ਆ ਫਿਰ ਹੋਰ ਕੀ ਚਾਹੀਦਾ ਉਹ ਇਧਰੇ ਦੇ ਇਕ ਤਾਂ ਵੀ ਮੁਸਲਮਾਨ ਹੈ ਡਾਕਟਰ ਜਾਂ ਡਾਕਟਰ ਸਿੰਧੂ ਹੈ ਜਾਂ ਡਾਕਟਰ ਅੰਗਰੇਜ਼ ਹੈ ਇਹ ਡਾਕਟਰ ਹਰੀ ਜਾਂਦਾ ਹੈ ਜਾਂ ਡਾਕਟਰ ਥੋੜੀ ਹੈ ਉਹ ਨੂੰ ਵੀ ਲੈਣ ਡਾਕਟਰ ਤੋਂ ਉੱਧੱਕ ਜਾਈਦੀ ਹੈ ਜੇ ਲੋਕ ਖਣੀ ਉਹਦਾ ਰੋੜਾ ਹੀ ਨਹੀਂ ਉਹਨੂੰ ਪਰ ਹਰੀ ਜਾਂਦਾ ਪਾਣੀ ਨਹੀਂ ਪੀਣਾ ਅੱਜ ਕੱਲ ਦੇ ਮੰਡਲ ਕਨਕਰਜ ਨਗਰ ਇਹ ਜੋ ਲੀਲਾ ਹਮ ਕਰਨੇ ਤੋਂ ਬਰਾਤ ਹਮ ਗੁਰੂ ਜੀ ਦੰਦਿਆ ਬਾਲ ਮਰੇ ਬਾਲ ਮਰੇ ਬਾਲਕ ਕੀ ਲੀਲਾ ਕੀ ਲੀਲਾ ਹਾਂ ਬਾਲ ਮਰੇ ਇਹ ਮਰਦਾ ਹੀ ਤਾਂ ਹੈ ਜੰਮਣ ਮਰਨੇ ਤਾਂ ਹੈ ਜਿਨ ਨਜਰ ਪ੍ਰਕਾਸ਼ਨ ਲੀਲਾ ਚ ਹੈ ਬਾਲਕ ਕੀ ਲੀਲਾ ਬਾਲਕ ਕੀ ਲੀਲਾ ਪਰਸੋਂ ਵੀ ਕਿਹਾ ਸੀ ਜਿੰਨਾ ਜਰ ਬਾਲਕ ਦੀ ਲੀਲਾ ਬੁੱਧੀ ਦੇਖਦੀ ਐ ਦੋ ਬਾਲ ਲੀਲਾ ਬਾਲ ਲੀਲਾ ਹੁੰਨਾ ਚਾਹਣਾ ਡੈਡਾ ਖੇਲਦਾ ਪਹੁੰਚ ਜਾਂਦੇ ਹਾਂ ਜੀ ਲੋਕੀ ਕਰਦਾ ਅਜੀ ਖੁਸ਼ ਹੋ ਦੇ ਦੇ ਬਾਲਕ ਦੀ ਲੀਲਾ ਜਿੰਨਾ ਜਰ ਬੁੱਧੀ ਲੈ ਲੈ ਕੋ ਮਰਦਾ ਇਹਨੂੰ ਬਚਾ ਨਹੀਂ ਸਕਦੇ ਇਹਨੂੰ ਵੀ ਕਰ ਮਰ ਜਾਂਦਾ ਫਿਰ ਹੁੰਦੀ ਐ ਮਹਾਰਾ ਦਾ ਆਪੇ ਬਲਕੀ ਲਾਲ ਨੀ ਸਿਆਣਾ ਨੇ ਬਣਾਇਆ ਬਾਲਕ ਸਿਆਣਾ ਨੇ ਉਹ ਵੀ ਪੁੱਛਿਆ ਇਹ ਬਾਲਕ ਕੈਸੇ ਜੀਵੇ ਰੁਰਾਈ ਇਹ ਨੀ ਪੁੱਛਿਆ ਇਹ ਤਾਂ ਮਰ ਜਾਂਣਾ ਇਹ ਬੜਾ ਹੋ ਗਿਆ ਛੋਟਾ ਹੁੰਦਾ ਜਾਂਦਾ ਜਨਰੀ ਕਹੇ ਤਾਂ ਬੜਾ ਹੋਤਾ ਹੈ ਇਤਨਾ ਕਰਨਾ ਜਾਣਦੇ ਜਦੋਂ ਨਾ ਉਮਰ ਘਟਦਾ ਹੈ ਉਹ ਤਾਂ ਕਹਿੰਦੀ ਜਵਾਨ ਹੋਇਆ ਬਸ है। ਬਰੂ ਆਉਗੀ ਨਾ ਤਲੀ ਆਉਗੀ ਮੁੰਡੇ ਹੋਣਗੇ ਸੁਪਨਾ ਦੇ ਹੀ ਹੈ ਮੌਤ ਵੱਲ ਨੂੰ ਜਾ ਰਿਹਾ ਹੈ ਲੜੂਫੇ ਨਾ ਉਹ ਨਹੀਂ ਦੇਖ ਰਹੀ ਛੋਟਾ ਉਰੂਲ ਇਹਦੇ ਵੱਡੀ ਹੋ ਰਹੀ ਹੈ ਜੇ ਰਸੀ ਨੂੰ ਅਗ ਲੱਗੀ ਹੋਵੇ ਰਸੀ ਨੂੰ ਖਸਰ ਤੇ ਅਗ ਲਾ ਦੀਏ ਨਾ ਧੁਖੀ ਜਾਂਦੀ ਹੈ ਹੋ ਰਹੀ ਹੈ ਉਹ ਛੋਟੀ ਹੋ ਰਹੀ ਹੈ ਇਹ ਦੀਦੀ ਹੈ ਸਰੀਰ ਬੜਾ ਹੋ ਰਿਹਾ ਹੈ ਬਸਰੀ ਟਾਈਮ ਜਿਹੜਾ ਜਾ ਰਿਹਾ ਉਹ ਦੀਦੀ ਆ ਆ ਜਿਹੜਾ ਜੂਆ ਲੱਜ ਨੁਕਦਾ ਉਹਦਾ ਨਹੀਂ ਪਤਾ ਜੋ ਅੱਖਾਂ ਨੂੰ ਦੇਦਾ ਤੇ ਵਿਸ਼ਵਾਸ ਹੈ ਸਰੀਰ ਬੜਾ ਜੋ ਹੋ ਰਿਹਾ ਬੜਾ ਹੋ ਰਿਹਾ ਇਹ ਦ੍ਰਿਸ਼ਟੀ ਕੋਲ ਇੱਥੇ ਬਦਲ ਗਿਆ ਪਹਿਲੇ ਸ਼ਬਦ ਤੋਂ ਹੀ ਭਗਤਾਂ ਦਾ ਸੰਸਾਰੀਆ ਦਾ ਦ੍ਰਿਸ਼ਟੀ ਉਹ ਸੰਸਾਰੀ ਦ੍ਰਿਸ਼ਟੀ ਉਹ ਭਗਤਾਂ ਦਾ ਦ੍ਰਿਸ਼ਟੀ जो ਸੰਸਾਰ ਨੂੰ ਨਹੀਂ ਨੀਣਾ ਕੋਲ ਤੋ ਦੇਦੇ ਸੰਸਾਰ ਨੂੰ ਦੀਦਾ ਝੂਠ ਪਖਤਾ ਨੂੰ ਚਾਹੀਦਾ ਸੱਚ ਸੱਚਾ ਜ਼ਕਰਾ ਦਾ ਦੇ ਕਰ ਨਹੀਂ ਸੰਸਾਰੀ ਬੁੱਧੀ ਦੀ ਪਕੜ ਤੋਂ ਕਰੇ ਕਿ ਸੰਸਾਰੀ ਬੁੱਧੀ ਐਸਾ ਕਦੇ ਵਿਸ਼ਵਾਸ ਕਰਦੀ ਹੈ ਜਿੱਦਣ ਐਸ ਦੰਦਲੀ ਆ ਖੋਲ ਕੇ ਫੇਰ ਦੇਖਣ ਲਈ ਕੋਸ਼ਿਸ਼ ਕਰਨਾ ਦੰਦਲੀ ਆ ਖੋਲ ਕੇ ਨਰਾਹ ਤਾਰੀ ਦੁਨੀਆ ਦੀਦੀ ਵੀ ਇੱਥੇ ਲਾ ਲਿਆ ਬਥੇਲ ਕੋ ਤੁਹਾਰੇ ਦੇ ਖੜਾ ਸੀ ਇਹਨਾਂ ਦੇ ਤਾਂ ਜੇ ਤਾਂ ਕੀ ਹੋ ਜਾਂਦਾ ਜੇ ਤੇ ਜੇ ਹੋਣਾ ਲੋ ਫਿਰ ਕੀ ਹੁੰਦਾ ਹੈ ਸੋ ਸਰਨ ਪਰੇ ਜੇ ਪਾਏ ਸੋ ਸਰਨ ਪਰੇ ਜੇ ਪਾਏ ਜਿਨ੍ਹਾਂ ਨੂੰ ਛੱਡ ਪਾਇਆ ਹੈ ਜਿਨ੍ਹਾਂ ਨੂੰ ਇਸ ਰਸਤੇ ਪਾਇਆ ਹੈ ਬੜੀ ਪੈ ਜਾਣਾ ਹੀ ਹੈ ਸਰੀਆ ਗੱਲ ਬੁੱਧੀ ਲੱਕ ਬੰਨ ਲਵੇ ਵੀ ਇਹਨੂੰ ਪੜਾਉਣਾ ਹੀ ਹੈ ਘਰ ਦੇ ਲੱਕ ਬਾਲ ਨੇ ਵੀ ਮੁੰਡੇ ਨੂੰ ਫਿਰ ਟਿਊਸ਼ਨ ਲਾ ਦੇ ਵੀ 15 ਮਿੰਟਾ ਉਹ ਫਿਰ ਉਹਨੂੰ ਬౌండ్ ਕਰ ਦਿੰਦੇ ਬੌਂਡ ਬੌਂਡ ਲੋ ਹਾਲਾਤ ਐਸੇ ਬਣਾ ਦਿੰਦੇ ਨੇ ਫਿਰ ਫਿਰ ਕੋਈ ਹੋਰ ਉਲਪਰਾਪਤੀ ਵੀ ਹੋਣ ਲੱਗ ਜਾਂਦੀ ਕਲਾਕੀ ਜਿੱਤ ਵੀ ਹੋਣ ਲੱਗ ਜਾਂਦੀ ਜਿਹੜਾ ਨਲਾਇਕ ਦੀ ਥੱਪੜ ਪੈਂਦੇ ਤੇ ਫਿਰ ਉਹ ਆਪ ਕਰਨ ਲੱਗ ਜਾਂਦੇ ਜਈ ਜਦ ਜਿੱਤ ਹੋਣ ਲੱਗਦੀ ਹੈ ਜਿਹੜੇ ਇੱਕ ਗੱਲ ਜਰੂਰ ਹੈ ਜਿਹੜੇ ਕੰਮ ਜਿਹਨੂੰ ਜਿੱਤਵੰਦ ਤੇ ਉੱਤੇ ਭੱਜ-ਭੱਜ ਕਰਦਾ ਉਹਨੂੰ ਧਿਆਨ ਕੋਈ ਕੰਮ ਕਰਾ ਲੋ ਤਾਂ ਉਹ ਸ਼ਵਾਜ ਦੇਈ ਜਾਓ ਹਾਂਜੀ ਇਹ ਹੈ ਨਾ ਗੋਲੀ ਟੌਫੀ ਸਵਾ ਮਿੱਠੇ ਗੋਲੀ ਮਿਲ ਲੱਗ ਜਾਂਦਾ ਹਾਂ ਸਿਰ ਖੋ ਜ ਰਹੇ ਨੇ ਫੇਰ ਯਾ ਰੋਟੀ ਵੀ ਵੜੇ ਵੜੇ ਵੜੇ ਕੋਈ ਗੱਲ ਸਿਮਰ ਸਿਮਰ ਗਾਏ ਸੁਨਾਇ ਸਿਮਰ ਸਿਮਰ ਕੋਲ ਕੀ ਕਰਦਾ ਸਿਵਲ ਕਰਦਾ ਸਮਝਦਾ ਗੱਲ ਨੂੰ ਖੋਜਦਾ ਗੱਲ ਨੂੰ ਅਸਾਂ ਦੇ ਵਿੱਚ ਜਗਰ ਨੂੰ ਤਾਂ ਗੱਲ ਆਪਾਂ ਨੇ ਸਮਝੀ ਐ ਔਰ ਸਮਝ ਕੇ ਟੈਲੀ ਕੀਤੀ ਐ ਜਿਹੜੀ ਗੱਲ ਅੰਦਰ ਨੇ ਮਨ ਲਈ ਨਾ ਅੰਦਰ ਨੇ ਉਸ ਬਰੀ ਗਈ ਜੇ ਆਪਣਾ ਨਾ ਸਮਝੇ ਆਪਾਂ ਨੂੰ ਕੋਈ ਸਮਝ ਲਈ ਜੇ ਆਪਣੀ ਤਸੱਲੀ ਹੋ ਗਈ ਵੀ ਇਹ ਇਹੀ ਠੀਕ ਹੈ ਸਿਮਰ ਨਾਲ ਕੋਈ ਯਾਦ ਆ ਗਈ ਚੇਤੇ ਕੀਤੀ ਹੋਈ ਯਾਦ ਆ ਗਈ ਜਪਣਾ ਤਾਂ ਕੁਝ ਸਮਝਣਾ ਹੈ ਕਿ ਮੈਂ ਕਰਨ ਕੀ ਆਇਆ ਹਾਂ ਮੈਂ ਕੀ ਭੁੱਲ ਗਿਆ ਲਿਆ ਫਿਵਰ ਬਜਾਤ ਪਤਾ ਨਹੀਂ ਕੀ ਉਹ ਜਦ ਅੰਦਰ ਕਹਿੰਦਾ ਚੇਤਾ ਕਰਨਾ ਤੁਹਾਨੂੰ ਸਵਰਨਕ ਆਲੋ ਚਾਹੀਦਾ ਜੇ ਤਾਂ ਕੋਈ ਉਹਦਾ ਜੇਸਾ ਤਰ ਹੁੰਦਾ ਤਾਂ ਜਪਣਾ ਉਹਦੇ ਨਾਲ ਫਿਰ ਜੇ ਉਹ ਜਨੋਦੇ ਸਿਰੋਂ ਜ਼ਿਆਦਾ ਜਆ ਹਵਾਲਾ ਆਹੀ ਸੀ ਗਲ ਭੁੱਲ ਗਿਆ ਉਸੇ ਬੋਲੋ ਸੇ ਬੋਲੋ ਦਸਤੀ ਹੋਈ ਗੱਲ ਦਾ ਚਿੰਤਾ ਹੋਵੇ ਵਿਹਾਂ ਇਹੀ ਭੁੱਲਿਆ ਸੀ ਟੈਲੀ ਹੋ ਗਈ ਵੀ ਇਹੀ ਭੁੱਲਿਆ ਸੀ ਉਸੇ ਬੋਲੋ ਇਹੀ ਗੱਲ ਭੁੱਲਿਆ ਸੀ ਕੋ ਯਾਦ ਮਿਲ ਗਈ ਉਹ ਬਿਲਕੁਲ ਕੋਲੋਂ ਸੇ ਸਸ ਸਭ ਭਰਮ ਨਹੀਂ ਕੁਛ ਵਿਆਪਤ ਜਪਣ ਦੇ ਵਿੱਚ ਮਾਇਆ ਵੀ ਆ ਜਾਂਦੀ ਹੈ ਜਪਣ ਦੇ ਵਿੱਚ ਬਹੁਤ ਕੁਝ ਹੋਰ ਵੀ ਹੈ ਮਾਇਆ ਤੋਂ ਜੇ ਜਾਣ ਤ ਆਪਣਾ ਬਚਾ ਉਹ ਜਪਣਾ ਹੀ ਹੈ ਸਰ ਉਹ ਹੈ ਉਹ ਨਹੀਂ ਤੇ ਜਪਣਾ ਫਸ ਗਿਆ ਬਾਇਆ ਜੋ ਨਿਕਣ ਦਾ ਗਿਆਨ ਸਬਰ ਨਹੀਂ ਹੈ ਜਪਣਾ ਸਮਝ ਗਏ ਜੇ ਜਾਣ ਤ ਉਤੇ ਜਾਣਦੇ ਲੰ ਜ਼ਰਤੇ ਤੇ ਸਬਰ ਨਹੀਂ ਵਰਤੇ ਵਾਲੇ ਕਰਤੋਂ ਬਚਣ ਦਾ ਗਿਆਨ ਜਪਣ ਦੇ ਤੱਕੇ ਜਾਗਣਾ ਜੋ ਜੀਵਨਾ ਜਾਗਦੀ ਹੈ ਗਿਆਨ ਮਤ ਜਾਗੀ ਉਸੇ ਨੂੰ ਗਿਆਨ ਵੱਧ ਜਗਾਉਂਦਾ ਜਿਹੜਾ ਅੰਦਰੋਂ ਸੁੱਤੇ ਨੂੰ ਜਗਾਉਂਦਾ ਹੈ ਜਾਗਲੇ ਹੋਰੇ ਬਣਾ ਜਾਗ ਸਿਮਰਣਾ ਵਨ ਜਾਗਦਾ ਹੈ ਜਪੜ ਨਾਲ ਤਿਆਗਦਾ ਸੁਧਾਰ ਥੋੜੀ ਜਿਹੀ ਕ੍ਰੈਕਸ਼ਨ ਨਹੀਂ ਕਰਦੀ ਜਪੜ ਨਾਲ ਤਿਆਗਦਾ ਜਹਿਰ ਬਜੇ ਛੱਡੇ ਜਪੜ ਤਿਆਗ ਹੈ ਸਿਮਰੜ ਜਾਗੜ ਸਰਵੋਤਮ ਜਾਗੜ ਉਹ ਲਿਆ ਹੈ ਕੀ ਯਾਦ ਆਉਂਦੀ ਹੈ ਸਵੰਰ ਜਾਗੜ ਸਵੰਰ ਨਿਰਾਕਾਰ ਆਕਾਰ ਚੀਜ਼ ਦਾ ਜਪਣਾ ਮਾਇਆ ਦਾ ਸਾਵਧਾਨ ਹੋੜ ਵਾਇਆ ਤੋਂ ਵਾਇਆ ਰਗੜੀ ਜੰਤਰ ਹੀ ਲਪਟਾਇ ਜਪਣਾ ਮਾਇਆ ਦਾ ਗਿਆਨ ਜਿਹੜਾ ਹੈਗਾ ਇਹ ਜਪਣ ਦੇ ਤੱਕ ਸੀਮਤ ਹੈ ਦਰਗਾਹੀ ਜਿਹੜੀ ਸੋਝੀ ਹੈ ਦਰਗਾਹੀ ਗਿਆਨ ਨਹੀਂ ਹੁੰਦਾ ਸੋ ਨਿਰਾਕਾਰੀ ਨੂੰ ਸੋਚੀ ਕਰਨਾ ਚਾਹੀਦਾ ਸੋ ਥੋੜੀ ਜਿਹੀ ਰਿਐਕਸ਼ਨ ਕਰ ਲਈ ਜੇ ਨਿਰਾਕਾਰੀ ਗਿਆਨ ਨਹੀਂ ਹੁੰਦਾ ਨਿਰਾਕਾਰੀ ਸੋਚੀ ਹੁੰਦੀ ਸੋਚੀ ਹੋਇਆ ਜੋ ਸਾਨੂੰ ਪਤਾ ਸੀ ਹੁਣ ਭੁੱਲੇ ਹੋਇਆ ਕਹਿੰਦਾ ਆਜੂ ਵੀ ਸੋਚੀ ਹਾਲੇ ਨੂੰ ਪਤਾ ਨਹੀਂ ਤੂੰ ਹੁਣ ਸੋਚੀ ਹੈਗੀ ਸੋਚੀ ਹੈ ਹੋ ਅੰਦਰੋਂ ਆਉਦੀ ਜੋ ਅੰਦਰੋਂ ਆਈ ਹੈ ਨਾ ਚੀਜ਼ ਉਹ ਸੋਚੀ ਉਹ ਸਿਰ ਮੜ ਰੋਣੀ ਜੋ ਜਾਗਦਾ ਅੰਦਰ ਪਹਿਲਾਂ ਪਤਾ ਸੀ जो त्याळदा बाया तो पीछे हटदा जिते वो पाले आ, और वद गया और कनेक्शन पाले वकार पाड़ले बढ़ाले जो ब्याद हो गया आज तो ब्याद हो गया, पर पिछे गया वो जबरदस्ती पीछे हट नहीं हार गए ना दुगता व्यापे रोग रोग व्याप गए ਉਹ ਜਪੜ ਰੋਲ ਘਟ ਜਾਊ ਜੀ ਜਿਹੜੀ ਆਤਮਾ ਨਹੀਂ ਸੋਜੀ ਹੈ ਬਾਕੀ ਕਰਨਾ ਆ ਕਿ ਆਪ ਕੋ ਇਹ ਜਿਹੜਾ ਅੰਦਰੋਂ ਸੋਜੀ ਹੈ ਅੰਦਰਲੀ ਸੋਜੀ ਅੰਦਰਲੀ ਕੋ ਜਿਹੜੀ ਤੂੰ ਸ਼ਰੀਰ ਨਹੀਂ ਹੈ ਸ਼ਰੀਰ ਤਾਂ ਵਾਸੋ ਵਾਸੂ ਬਜਾਏ ਫਾਪ ਨਹੀਂ ਹੁੰਦਾ ਬਰ ਨਹੀਂ ਹੁੰਦੀ ਅਚਾ ਤੂੰ ਵੀ ਕਿਦੋਂ ਦੀ ਪੈਦਾ ਹੋਇਆ ਆਪਣੇ ਆਪ ਤੋਂ ਪੈਦਾ ਹੋਇਆ ਹੋਇਆ ਆਪੇ ਬਾਪਾ ਭਿਮਾਇੋ ਇਹ ਜਿਹੜੀ ਚੀਜ਼ ਹੈ ਇਹ ਜਗ ਜਗਾਉਦੀ ਹੈ ਇਸੇ ਨੂੰ ਡਰਾ ਗਈ ਸਬੜੋ ਦਾ ਡਰਾ ਘਰ ਨੂੰ ਬੰਦ ਮਾਇਆ ਦਾ ਜਾਪੋ ਮਾਇਆ ਨੂੰ ਸਮਝ ਵੀ ਮੇਰੇ ਭਾਤਰ ਨੂੰ ਦੇ ਇਹ ਤਾਂ ਤਸੂਗੀ ਨਾਲ ਨਹੀਂ ਜਾਣਾ ਇਹ ਸਾਰੇ ਕੇ ਬੰਦੇ ਨਹੀਂ ਉੱਥੇ ਗਿਆਨ ਦੇ ਨਾਮ ਦਾ ਉਹ ਗਿਆਨ ਹੈ ਉਹ ਨਾਮ ਦਾ ਗਿਆਨ ਕਿ ਜਿ ਮਾਇਆ ਨੂੰ ਸਮੇਂਦਾ ਉਹ ਹੋ ਜਾਪਣਾ ਹੈ ਕੋ ਨਾ ਬਈ ਇਹ ਤੇ ਕਿਹ ਕੋ ਗਿਆਨ ਹੈ ਜਿਹੜਾ ਛਡਾਉਂਦਾ ਹੈ ਮਾਇਆ ਨੂੰ ਛਡਾਉਂਦਾ ਹੈ ਉਹ ਵੀ ਨਰਾਗਰੀ ਹੋ ਗਿਆ ਅਸਲ ਚ ਮਾਇਆ ਤੋਂ ਦੂਰ ਕਰਦਾ ਮਾਇਆ ਦੇ ਗਿਆਨ ਕਿਥੇ ਜਿਹੜਾ ਮਾਇਆ ਨੂੰ ਤੋੜਦਾ ਮਾਇਆ ਦਾ ਗਿਆਨ ਨਹੀਂ ਮਾਇਆ ਦੇ ਉਹਨਾਂ ਦਾ ਗਿਆਨ ਉਹ ਵਾਰਾ का ਨਹੀਂ नहीं है माया ਇੱਕ ਤਾਂ ਦਵਾਈ ਦਾ ਗਿਆਨ ਹੈ ਤੁਹਾਨੂੰ ਦਵਾਈ ਆ कर ਕਰਦੀ ਹੈ ਤੁਹਾਨੂੰ ਫਾਇਦਾ ਕਰਦੀ ਹੈ ਇੱਕ ਦਵਾਈ ਦੇ ਬੈਡ ਇਫੈਕਟ ਦਾ ਗਿਆਨ ਹੈ है ਉਹ ਦਵਾਈ ਹੈ ਉਹ ਦੇ ਜੋ ਰਿਐਕਸ਼ਨ ਕਰਦੀ ਹੈ ਬੈਡ ਇਫੈਕਟ ਨੇ ਉਹਦਾ ਗਿਆਨ ਹੋਰ ਚੀਜ਼ ਹੈ ਦਵਾਈ ਦਾ ਗਿਆਨ ਹੋਰ ਚੀਜ਼ ਹੈ ਦਵਾਈ ਉਹ ਦਵਾਈ ਦੀ ਵਿੜਿਆ ਹੀ ਆ ਗਈ ਉੱਥੇ ਦਵਾਈ ਰਿਐਕਸ਼ਨ ਕੀ ਕਰਦੀ ਹੈ ਬੈਡ ਫੈਕ ਕੀ ਪਸੰਦੀ ਹੈ ਉਹ ਗਿਆਨ ਹੋ ਰਿਹਾ ਉਹ ਦਵਾਈ ਤੋਂ ਖਲਾਫ ਗਿਆਨ ਮਾਇਆ ਦਾ ਗਿਆਨ ਨਹੀਂ ਮਾਇਆ ਤੋਂ ਖਲਾਫ ਗਿਆਨ ਹੈ ਫਰਕ ਹੈ ਦੇ ਵਿੱਚ ਅਸੀਂ ਮਾਇਆ ਦਾ ਹੀ ਗਿਆਨ ਜੇ ਕਹਿ ਦਿੰਦੇ ਹਾਂ ਮਾਇਆ ਦਾ ਗਿਆਨ ਤਾਂ ਸਹੀ ਸਿਰਫ ਸਹੀ ਤਾਂ ਇਹ ਹੀ ਹੈ ਪਰਹੇਜ਼ ਦਵਾਈ ਦਾ ਜੋ ਇਹ ਫਸਾਉਂਦੀ ਸਾਨੂੰ ਕਿਵੇਂ ਮਾਇਆ ਸੀ ਕਿਵੇਂ ਚ ਫਸਦੇ ਆ ਕਿਵੇਂ ਇਹਦੇ ਫਸੇ ਤੋਂ ਬਚਾਂਗੇ ਇਹ ਗਿਆਨ ਹੋ ਚੀਕ ਹੈ ਤਾਂ ਬਚਰਦਾ ਗਿਆਨ ਹੈ ਪਰਹੇਜ਼ ਹੈ ਪਰਹੇਜ਼ ਆਦਾ ਮਾਇਆ ਦਾ ਗਿਆਨ ਨਹੀਂ ਹੈ ਮਾਇਆ ਦਾ ਗਿਆਨ ਹੋਵੇ ਪਾਣੀ ਹੋਵੇ ਪਾਣੀ ਦੀ ਸਟਡੀ ਹੋਵੇ ਉੱਥੇ ਤਾਂ ਇਹਦੇ 'ਚ ਆਕਸੀਜਨ ਹੈ ਕਿ ਹਾਈਡਰੋਜਨ ਤੇ ਚਾਹ ਉਹ ਇਹਦੇ ਚਾਹ ਉਹ ਤਾਂ ਹੈ ਨਹੀਂ ਮਾਇਆ ਤੋਂ ਬਚਣਾ ਜਪਣਾ ਮਾਇਆ ਦਾ ਗਿਆਨ ਮਾਇਆ ਜਪਣਾ ਮਾਇਆ ਤੋਂ ਚਪਣਾ ਕਿਸ ਤਰ੍ਹਾਂ ਬਚਣਾ ਜਪਣਾ ਜਪੋ ਤਾਂ ਇੱਕੋ ਨਾਮ ਆਵਰਦੇ ਭਾਈ ਬਚਣ ਵਾਸਤੇ ਜੋ ਜੋ ਸਾਡਾ ਪਜਾ ਹੈ ਜਿਹੜੀ ਪਰਹੇਜ਼ ਹੈ ਮਾਇਆ ਦੇ ਵਿੱਚ ਰਹਿੰਦੇ ਹੋ ਜੋ ਪਰਹੇਜ਼ ਹੈ ਉਹ ਵੀ ਨਾਮਾਂ ਇੱਕੋ ਹੀ ਹੈ ਉਸੇ ਨਾਲ ਸੰਬੰਧ ਹੈ ਜੇ ਮਜਾਂ ਨਹੀਂ ਤੋ ਤੁਰ ਵੀ ਨਹੀਂ ਸਕਦੇ ਦਵਾਈ ਖਾਣੀ ਹੈ ਤੁਸੀਂ ਇੱਕ ਇਹ ਦਵਾਈ ਆ ਉਹਦਾ ਨਾਮ ਹੈ ਪਰ ਜੇ ਪਰਹੇਜ਼ ਨਹੀਂ ਰੱਖਦੇ ਨਾਲ ਫਿਰ ਪਰਹੇਜ਼ ਆਪਣੇ ਆਪ ਚ ਕੋਈ ਚੀਜ਼ ਨਹੀਂ ਪਰ ਇਹ ਜੀਵਤ ਕੀ ਹੈ ਸਰੀਰ ਦੀ ਖੁਰਾਕ ਨੂੰ ਜੇ ਤੁਸੀਂ ਆਤਮਾ ਦੀ ਖੁਰਾਕ ਮੰਨ ਲਿਆ ਫਿਰ ਅਗਿਆਨਤਾ ਜਿਹੜੀ ਇਹ ਚੀਜ਼ਾਂ ਨਾਲ ਫੈਲਦੀ ਹੈ ਉਹ ਨਾ ਫੈਲੇ ਅਗਿਆਨਤਾ ਤਾਂ ਕਟਾਉਣੀ ਹੈ ਮਾਇਆ ਨਾਲ ਅਗਿਆਨਤਾ ਫੈਲਦੀ ਹੈ ਜਿਹੜੀ ਅਗਿਆਨਤਾ ਬੀਤਾ ਇਕਨੋਮੀ ਜੇ ਇਤਰਾ ਇਤਰਾ ਢੇਰਾ ਆਈ ਜਾਵੇ ਉਦੋਂ ਦਰ ਕੱਟੀ ਜਾਊ ਇਤਰਾ ਇਤਰਾ ਤਾਂ ਤੁਸੀਂ ਕੱਪੜੇ ਸੁਭੜ ਲੈ ਜਾਓ ਪਰ ਦੂਰ ਪਾਸੇ ਪਾਣੀ ਗੰਦੇ ਰੰਗ ਹੋਈ ਜਾਊ ਜਿਹੜਾ ਪਾਣੀ ਹੈ ਉਹਦੀ ਸੁੱਧ ਕਿਹਦਾ ਪਾਣੀ ਦਾ ਸੁੱਧੀ ਕਰਨੀ ਚਾਹੀਦੀ ਉਹਨੇ ਜ਼ਰੂਰੀ ਹੈ ਜਿੰਨਾ ਸਾਬਣ ਵਧੀਆ ਚਾਹੀਦਾ ਉਹਨਾਂ ਪਾਣੀ ਵੀ ਵਧੀਆ ਚਾਹੀਦਾ ਪਰ ਇਹ ਜੋ ਨਹੀਂ ਜਰੂਰੀ ਹੈ ਜਿੰਨੀ ਜਰੂਰੀ ਦਵਾਈ ਹੈ ਦੋ ਪਾਰਟ ਰਕੀਤ ਪਰ ਇਹਦਾ ਗਿਆਨ ਵੀ ਉਹਨਾਂ ਹੀ ਜਰੂਰੀ ਹੈ ਜਿੰਨਾ ਚਿਰ ਦਵਾਈ ਹੋਵੇ ਮਹਾਰੀਦਾਰ ਹੋਵੇ ਨਹੀਂ ਖਾਣੀ ਭਾਈ ਤਾਂ ਤੇ ਮਹਾਰੀਦਾਰ ਦਾ ਦਵਾਈ ਨਾਲ ਕਿਸਨ ਮਹੇ ਦਾ ਦੋਈ ਦਾ ਐ ਨਹੀਂ ਨਹੀਂ ਤਾਂ ਹੈ ਨੇ ਇਹ ਉਹਦੇ ਨਾਲ ਜੁੜ ਜਾਂਦੀ ਹੈ ਜੀ ਇੱਕੋ ਨੰਬਰ ਹੀ ਹੈ ਜੀ ਕਿਉਂਕਿ ਇਹਨੇ ਉਹ ਕਾਬੂ ਹੋੜ ਨਹੀਂ ਦੇਣਾ ਜਿਹੜਾ ਅਸੀਂ ਕਰਨਾ ਹੈ ਜੋ ਅਸੀਂ ਦਵਾਈ ਖਾ ਰਹੇ ਨੇ ਉਹ ਉਹਦਾ ਅਸਰ ਵੀ ਹੁੰਦਾ ਕਿਉਂ ਸੁਬਹ ਨਹੀਂ ਮੜਦਾ ਅੱਜ ਨਾ ਜੋ ਇਹ ਵੀ ਇੱਕ ਗੱਲ ਜੇ ਸੰਸਾਰ ਭਰਮ ਵਿਆਪਤ ਪੈਦਾ ਹੀ ਹੁੰਦਾ ਰਹਾ ਇਹ ਰੋੜੀ ਘਟੀ ਜਾਵੇ ਪੈਦਾ ਹੋਣਾ ਬੰਦ ਕਰਨਾ ਹੋਰ ਪੈਦਾ ਨਾ ਹੋਵੇ ਜਿਹੜਾ ਹੈਗਾ ਉਹ ਤਾਂ ਹੈਗਾ ਸੰਸਾਰ ਪਰ ਦਵਾ ਪੈਦਾ ਹੋਵੇ ਪੈਦਾ ਹੋਵੇਗਾ ਖਟੀ ਜਾ ਸਾਰਾ ਦਿਨ ਨੇਰੇ ਤੇ ਹਵੀ ਰਹਿੰਦਾ ਸੂਰ ਝੁਕ ਜਾਂਦਾ ਨੇਰਾ ਫੇਰ ਉਥੇ ਤੋਂ ਉਥੇ ਪੈਦਾ ਹੋ ਰਿਹਾ ਨੇ ਰਬੀ ਨਾ ਦਿਨ ਨੇਰਾ ਵੀ ਅਵਰ ਉਹ ਵੀ ਅਵਰ ਦੋਇਆ ਖਾਲੇ ਉਥੇ ਤੋਂ ਉਥੇ ਤੇ ਸੰਸਾਰ ਭਰਮ ਨਹੀਂ ਕਸ਼ਪਿਆਪਤ ਪ੍ਰਗਟ ਪ੍ਰਤਾਪ ਸਾ ਆਰ ਭਰਮ ਵਿਆਪਤ ਨਹੀਂ ਹੈ ਹੋ ਨਹੀਂ ਪੈਦਾ ਹੋ ਰਿਹਾ ਪਰ ਪੈਦਾ ਹੋ ਹੈਗਾ ਉਹ ਕੱਟ ਉਹ ਲੋ ਕੱਟ ਜਿੰਨੀ ਬਿਮਾਰੀ ਹੈਗੀ ਕਟੌੜੀ ਇਸ ਹੈ ਪਰ ਜੇ ਨਾਲ ਦੀ ਨਾਲ ਬਿਮਾਰੀ ਬੰਦ ਹੋ ਜਵੇ ਪੈਦਾ ਹੋਵੇ ਜਰਾ ਸੀ ਬੋਰ ਬੋਰ ਜਿਹੜੇ ਹੈਗੇ ਨਾ ਵਾਰ ਲਾਗੇ। ਵੈਹੀ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਪ੍ਰਗਟ ਪ੍ਰਤਾਪ ਤਾਹੂ ਕੋ। ਇਹ ਸਮਝੋ ਉਹਦੇ ਅੰਦਰ ਪ੍ਰਤਾਪ ਪ੍ਰਗਟ ਹੈ। ਉਹਦੇ ਅੰਦਰ ਗਿਆਨ ਪ੍ਰਚੰਡ ਹੈ। ਪ੍ਰਤਾਪ ਹੋਦਾ ਪ੍ਰਚੰਡ ਦਾ। ਉਹਦੇ ਅੰਦਰ प्रचंड ज्ञान है ज्ञान की प्रचंडता है जो संसार पर हो पैदा हुई है जो संसार पर पैदा हो ही जाता है फिर परच्युतकारी हो गया पेटारू रोज का बबली बड़ी एक कोई चीज ਪਰ ਹੁ ਤੋ ਪੈ ਦੋਦੇ ਪਰ ਵੀ ਜਿਹੜਾ ਵੇਰਾ ਪਹੁੰਗਿਆ ਪੌਗਾ ਸੰਤਾ ਜਿਹੜਾ ਹੈਗਾ ਡਰ ਕਰੂਗਾ ਸੋ ਤਾਂ ਸ਼ਮਤਾਲੀ ਹੁੰਦੀ ਦਰ ਨੂੰ ਕਿਹਾ ਸੈਸਾ ਬਿਕੇ ਸੈਸਾ ਜੁਤਦਾ ਸੋ ਜ਼ਾਦਾ ਨਾ ਸੈਸਾ ਡਰਾਂ ਦੀਓ ਡਰਾਂ ਦੀਓ ਕਿਹੜਾ ਜੀਵ ਹੈ ਜਿਹੜਾ ਡਰਦਾ ਦੀ ਹਰ ਕੋਣ ਡਰ ਹਰ ਕੋਣ ਡਰਾਂ ਦੀ ਪੰਡ ਦਾ ਰੂਹ ਸੰਧਾਰ ਪਰਗਰ ਪ੍ਰਤਾਪ ਤਾਹੂ ਕੋ ਜੱਪ ਮੈਂ ਵੀ ਡਰਾਂ ਦੀ ਪੰਡ ਕਹਿੰਦੀ ਗੁੱਥਲੀ ਕਹਦੀ ਹੈ ਸੰਧਾਰ ਹੈ ਦਰਪਾਇਦਾ ਦੀ ਜਿਹੜੀ ਪੰਡ ਹੈ ਉਹ ਸੱਚਾ ਕੰਡ ਕਰਦਾ ਵੀ ਡਰਦਾ ਸੱਚਾ ਕੰਡ ਸੁਖ ਸਾਗਰ ਤਾਹੀਏ ਦਰਪਾਇ ਉਹ ਪਰਮੇਸ਼ਰ ਕਰਦਾ ਵੀ ਇੱਥੇ ਦੁਖ ਸੰਗਰਤਾ ਹੈ ਇੱਥੇ ਦੁਖ ਸੰਗਰਤਾ ਹੈ ਭਰਮ ਪਰਮੇਸ਼ਰ ਕਰਦਾ ਵੀ ਇਹ ਡਰਦਾ ਵੀ ਹਾਂ ਡਰਦਾ ਸੋ ਸਾਧੂ ਇਹ ਪਹੁੰਚਣ ਹਾਰਾ ਸੋ ਸਾਧੂ ਇਹ ਪਹੁੰਚਣ ਹਾਰਾ ਇਹ ਪਹੁੰਚਣ ਹਾਰਾ ਸਭ ਉਹ ਹੈ ਜਿਹੜਾ ਇਸ ਅਵਸਥਾ ਵਿੱਚ ਬੋਹ ਜਵੇ ਇਹ ਪਹੁੰਚਣ ਵਾਲਾ ਇਹ ਪਹੁੰਚ ਇਹ ਪਹੁੰਚਣ ਹਾਰਾ ਕੀ ਇਹਦਾ ਦੋ ਹੋ ਗਏ ਸਾਧੂ ਕਿਹਾ ਇਹ ਇਹ ਜਿਹੜਾ ਫਿਰ ਸਾਧੂ ਵਰਗੜ ਕੋਪਾ ਕੀ ਸਾਥ ਆਪ ਜੀ ਕੀਤੇ ਅੰਦਰ ਸੰਧਾਰ ਪਰ ਨਹੀਂ ਵਿਆਪਦਾ ਪਤਾ ਨਹੀਂ ਜਿਹੜਾ ਹੈਗਾ ਪਿਆਰ ਹੋਵੇ ਘਟ ਜਾਊਗਾ ਸੋ ਸਾਧੂ ਦੇ ਪਹੁੰਚ ਨਾਲ ਨਾਨਕ ਜਿਹੜਾ ਹੈਗਾ ਹੈਗਾ ਵਧਦਾ ਨਹੀਂ ਹੈ ਬੰਨ ਕੇ ਬੱਧਾ ਇਹ ਪਹੁੰਚਣ ਹਾਰਾ ਨਾਨਕ ਤਾਂ ਕੇ ਸਦ ਬਲੇ ਹਾਰਾ ਨਾਨਕ ਤਾਂ ਕੇ ਸਦ ਬਲੇ ਜਿਹਨੂੰ ਹੋਰ ਪਰਵਾਰ ਸੰਸਾਰ ਦੇ ਬੱਪੇ ਉਹ ਵੀ ਕਹਦੇ ਸਮਝ ਲਓ ਕਿ ਬਿਵਾਰੀ ਬਦਲ ਉਹ ਕੀ ਹੋ ਗਿਆ ਬਣਸ ਤੋਂ ਦੇਲਦਾ ਹੋਵੇ ਇਹ ਵਿਆਹ ਨਹੀਂ ਮੁੜ ਪਿਆ ਸੰਸਾਰ ਲੋ ਉਠਾ ਚੱਲ ਪਿਆ ਉਦੈ ਵੀ ਕਰਨੀ ਕੁਰਬਾਨ ਸੰਸਾਰ ਨੂੰ ਪੁਠਾ ਚੱਲਣਾ ਵੀ ਔਖਾ ਦਾ ਸੰਸਾਰ ਨੂੰ ਪੁਠਾ ਚੱਲਣਾ ਉੱਥੋਂ ਨੂੰ ਸਾਧੂ ਕਹਿ ਸਕਦੇ ਹਾਂ ਅਸੀਂ ਸਭ ਆਵਦ ਲੱਗਦਾ ਉਹਨੇ ਆਪਣਾ ਸਭ ਆਦੂ ਪੁਠਾ ਕਰਿਆ ਧੰ ਤਨ ਕਹਾ ਪੁਕਾਰ ਤੇ ਮਾਇਆ ਉਹ ਸਭ ਪੂਰ ਧੰ ਤਨ ਕਹਾਂ ਪੁਕਾਰ ਤੇ ਕੀ ਤੁਹਾਨੂੰ ਸਾਰਾ ਦਿਨ ਪੈਸਾ ਹੀ ਬੈਠਾ ਕਰੀ ਜਾਂਦੇ ਹੋ ਤਨ ਤਨ ਕਹਾ ਪੁਕਾਰ ਤੇ ਮਾਇਆ ਮੋਹ ਦਾ ਮਾਇਆ ਮੋਹ ਦਾ ਸਭ ਕੂੜਾ ਨਾਮ ਬਿਘੂਨੇ ਨਾਲ ਕਾ ਬਹੁਤ ਜਾਤ ਸਭ ਧੂਰ ਦੇਖੋ ਧੂੜ ਲੱਗਦਾ ਹੈ ਉਹਦੇ ਧੂੜ ਨਾਲ ਆਰਾਮ ਹੁੰਦਾ ਹੈ ਇਹਨਾਂ ਖੇ ਤੇ ਸਿਹਾਰੀ ਆਉ ਲੋ ਉਹ ਦੂਈ ਤੂੜੀ ਪਦੀ ਤੇ ਤੇਰੇ ਜਲਵਾ ਨਾਮ ਵੀ ਹੁਣੇ ਨਾਨਕਾ ਹੋਦ ਜਾ ਤੂ ਨਾਮ ਵੀ ਹੁਣੇ ਨੇ ਜਿਹੜੇ ਤੂੜ ਦੇ ਤੇਰੇ ਧੂੜ ਕਹਿ ਲਾਂਗੇ ਆ ਤੂਰੀ ਤੂਰੀ ਤੇਰੇ ਜਲਵਾ ਤੂੜੀ ਤੇਰੇ ਜਲਵਾ ਤੂਰੀ ਅਸਲ ਦੇ ਤੇਰੇ ਜਲਵਾ ਹੋ ਜਾਂਦੇ ਜੇ ਕਰਕੇ ਘਾਲਿਆ ਆਸ ਦਾਲ ਚਾਈ ਤੇ ਤੇ ਹੈ ਬਾਤ ਰੁ ਪੁੱਛੀ ਲੋ ਕਬੂਰ ਲਾਈ ਪਾਇ ਤੇ ਆਪਣੇ ਚੜਦਰਾਲੇ ਨਹੀਂ ਲਾਇਆ ਤਾ ਦਤੂਰੀ ਪਨੀਰ ਤੇਰੇ ਜਨੂਆ ਤੇਰੇ ਜਨੂ ਜਨ ਜਨਮ ਦੇ ਤੇ ਪਨੀਰ ਢੂਲ ਹੁੰਦੇ ਨੇ ਉਹ ਪੁੱਛੀ ਨਹੀਂ ਹੁੰਦੇ ਸਿਰਜੋਤ ਹੁੰਦੇ ਰਹੋ ਉਹ ਉਹ ਜੋ ਬੋਲਦੇ ਨੇ ਉਹ ਪੁਰੇਤ ਥੋੜੀ ਗਾਇਕੀਆਂ ਰੁਚੀ ਆ ਬਨਵਾ ਤਨ ਦੇ ਅੰਦਰ ਜਿਨ੍ਹਾਂ ਦੇ ਮਨ ਅੰਦਰ ਇਸ ਦੀ ਰੁਚੀ ਹੈ ਇਸ ਦੀ ਭੁੱਖ ਹੈ ਉਹ ਰੁਚੀ ਆ ਉਹ ਭੁੱਖ ਹੈ ਉਸ ਗਾਣ ਦੀ ਭੁੱਖ ਹੈ ਰੁਚੀ ਆ ਉਹ ਲੋ ਜਿਹੜੀ ਪੁਨੀਤ ਤੋਂ ਉੜਿਆ ਨਾ ਉਹਦੀ ਰੁਚੀ ਹੈ ਉਹਦੀ ਭੁੱਖ ਹੈ ਜਿਹਨੋਂ ਦੇ ਮਨ ਵਿੱਚ ਉਹ ਵੀ ਨੇ ਦੀ ਸੋਚੀ ਦੀ ਭੁੱਖ ਹੈ ਉਹ ਵੀ ਕਹਿੰਦੇ ਤੱਨ ਨੇ ਦੇਖੋ ਉੱਥੋਂ ਸ਼ੁਰੂ ਹੋ ਗਈ ਆ ਤੱਨ ਤੋਂ ਉਹ ਵੀ ਤੱਨ ਕਿਉਂਕਿ ਲਾਈਨ ਬਦਲੀ ਆ ਉਹਦੇ ਲਾਈਨ ਬਦਲਣੇ ਕੋਈ ਸੌਖੀ ਗੱਲ ਨਹੀਂ ਲਾਈਨ ਬਦਲਨੀ ਕੋਈ ਸਕੂਰ ਨਹੀਂ ਜਿਹਨੇ ਲਾਈਨ ਬਦਲਨੀ ਪਹੁੰਚੂਗਾ ਬਿਸ਼ਰਤਾ ਹੈ ਕਿ ਲਾਈਨ ਬਦਲ ਲਈ ਹੋਵੇ ਬਈ ਹੋਰ ਰਾਜੋ ਫੇਰ ਨੂੰ ਨਾ ਬਦਲਦੇ ਐਵਲਿਊਬਲ ਚੱਲ ਦੇਖਦੇ ਆ ਦੇਖਦੇ ਆ ਰਾਜੋ ਫੇਰੇਗਾ ਛੱਡ ਪਰ ਬਦਲ ਲਈ ਹੋਵੇ ਅੰਦਰੋਂ ਆਇਆ ਦੀ ਬੜਾਈ ਨੂੰ ਕੱਟ ਕੇ ਕੂੜ ਗਹਿ ਗੇ ਨਾਮ ਧਰਨੀ ਤੁੜੀ ਹੁੰਦਾ ਸੁਰਗ ਨਾ ਅੱਛਾ ਸੁਰਗ ਦੀ ਸੁਰਗ ਹੁੰਦਾ ਸੋ ਸਾਡੀ ਸੰਸਾਰੀ ਸੁਖ ਦੀ ਸੰਸਾਰੀ ਬੁੜਾਈ ਦੀ ਸੰਸਾਰੀ ਤਰਦੀ ਬੰਛਾ ਨੌਂ ਦਾ ਭੁਖ ਅਕਸ਼ਰ ਦਾ ਇੱਛਾ ਕਰਨ ਉਹ ਇੱਛਾ ਸੁਰਗ ਦੀ ਇੱਛਾ ਜਿਹੜੀ ਇਹ ਚਿੱਤ ਵਿੱਚ ਹੁੰਦੀ ਹੈ ਉਹ ਸੁਭਿਖ ਹੈ ਜਿਹੜਾ ਸੰਸਾਰੀ ਤਲ ਦੀ ਬਾਸ਼ਗਲ ਬੰਛਤ ਹੈ ਲੋੜ ਇਹ ਮਨ ਜੁਤੀ ਦੇ 28 ਡਾਲਰ ਦੇ ਚੰਗੇ ਕੰਮ ਤੂੰ ਕਰਦਾ ਹੈ ਸੁਰਗ ਬਾਸਤੇ ਕਰਦਾ ਧਾਨਪੁਰਨ ਕਰਦਾ ਹੈ ਜਪ ਤਪ ਕਰਦਾ ਹੈ ਧਨ ਕਰਦਾ ਹੈ ਜੋ ਦੀ ਪ੍ਰਾਪਤੀ ਦੁਨੀਆ ਦੀ ਵੜੇਗੀ ਬੰਦੀ ਇਹ ਚੱਲ ਪੂਰਨ ਹੋਈ ਜਿੱਤ ਕੀ ਛਾ ਤਾਹੀਂ ਲਿਖਿਆ ਦਸੂ ਬਾਸ ਸੁਰਗ ਦੇ ਬਣਾ ਸੁਰਗ ਦੇ ਇਚਾਂ ਦੀ। ਉਹ ਮੇਰੀ ਸੰਗ। ਸੁਰਗ ਦੇ ਚਾਚੇ ਤੁਚੂੰਦੇ। ਉਹ ਬੇਹਾਨੀ। ਉਹ ਇਹ। ਨਾ ਸਾਰੀ ਬੜਾਈ ਦੀ। ਨਾ ਸੋ ਜਿਹੜਾ ਉਹ ਤਾਂ ਹੋਏ ਨੇ ਮੰਦਿਰ ਬਣੇ ਨੇ ਕਈਆਂ ਦੀ ਆਹ ਬੜੇ ਜੋ ਬੈਠੇ ਨੇ। ਕਬਰਾਂ ਬਣਾਈ ਬੈਠੇ ਨੇ ਇੱਥੇ ਹੋਇਆ, ਢੋਲਾ ਪੀਰ ਹੋਇਆ ਫਲਾਣਾ। ਏ ਯੂ ਬ੍ਰੇ ਜੈਨੀਅਸ ਬੋ। ਇਹ ਬਾਤ ਤੇ ਮੇਰੀ ਲੈ ਤਾਰਾ ਕੇ ਬੰਦਰ ਬਣਾ ਕੇ ਬਈ ਕੋ ਕੀਆ ਕਰੇ। ਤਨੀ ਬੁਲਾ ਦੇ। ਤੇ ਯੂ ਇਚਾ। ਅਤ ਤੇ ਚਾਹ ਤਾ ਸੰਸਾਰੀ ਵਿਡਿਆਈ ਦੀ ਛਾ। ਇਹ ਛਾ ਸੰਸਾਰੀ ਵਿਡਿਆਈ ਦੀ ਛਾ। ਸੰਸਾਰੀ ਵਿਡਿਆਈ। ਕੌਣ ਕਰੂਗਾ ਹੈ ਸੰਸਾਰੀ ਵਿਡਿਆਈ ਬੋਲ। ਬੁਰ ਕਰਨਗੇ। ਅੱਤ ਕਾ ਕਰਦੀ ਸਕਦੇ ਜਿਹੜੇ ਪੂਜਦੇ ਨੇ ਉਹ ਔਰਗੇਨਾਈਜ਼ ਕਰਦੇ ਕਿਉਂਕਿ ਉਸ ਤੇ ਦਿੰਦਾ ਦੂਹ ਵਾਰ ਜਿੱਤਰੇ ਉਸ ਤੇ ਦਿੰਦਾ ਦੂਹ ਵਾਰ ਜਿੱਤਰੇ ਜਾਤ ਅੱਤ ਸਕਦੇ ਇਸ ਕਰਕੇ ਉਹ ਪੂਜਦੇ ਅੱਤ ਜਿਹਨਾਂ ਜਿਹੜੀਆਂ ਹੁੰਦੀਆਂ ਨੇ ਸਥਾਨ ਜਿਹੜੇ ਹੁੰਦੇ ਨੇ ਉਹ ਨਾਲ ਜੁੜੇ ਦੇ ਮਿਲ ਕਰ ਤਾਹੀ ਬਦਲਦਾ ਰਿਹਾ ਵੀ ਸਰਵਰੇ ਜੁੜਨਾ ਚਾਹਣੋ ਉਹਨੂੰ ਜਿਆਦਾ ਜੁੜ ਗਏ ਜਿੰਨੇ ਜਿਆਦਾ ਸਰਵਰ ਨੇ ਤੇ ਉਹਨਾਂ ਦੀ ਵੱਧ ਬਣਦੀ ਫੋਟੋ ਵਾਲੇ ਨਾਲ ਨਾਤਕ ਵੀ ਜੀ ਬਰਲਦਾ ਵਧ ਰਿਹਾ ਵੀ ਸੀ ਤਾਂ ਗਰੀ ਵੀ ਇੱਕ ਦਾਲੀ ਚਲਾ ਜਾ ਤਤ ਪ੍ਰਿਆ ਪ੍ਰੀਤ ਸਾਧ ਰਾਜ ਰਾਜ ਹੈ ਇਹ ਸ਼ਬਦ ਨੇ ਉੱਥੇ ਪਹਿਲਾਂ ਦਿੱਤਾ ਹੋਇਆ ਵੀ ਭਾਵੇਂ ਮੈਨੂੰ ਮਗਰ ਦੇ ਵਿੱਚ ਪਹਿਲਾਂ ਨਰਸ਼ਨ ਹੋਇਆ ਕਾਸ਼ੀ ਜ ਮੇਰੀ ਉਮਰ ਅਜਾਈ ਚਲੀ ਗਈ ਨੂੰ ਮੈਂ ਬਰਾਬਰ ਸਮਝਦਾ ਧਰਤੀ ਦਾ ਕੀ ਰੋਣਾ ਜਿਹੜਾ ਕੋਈ ਰੋਣੇ ਜਿਹੜੀ ਗੱਲ ਕੋਈ ਵਿੱਥੇ ਮਿਲ ਜਾਂਦਾ ਉਹ ਤੇ ਹਈ ਨਹੀਂ ਜੀ ਕੰਮ ਗਿਆ ਅੰਨੇ ਕਰਿਆ ਕੰਮ ਤਾਂ ਗਿਆ ਅੰਨੇ ਕਰੇ ਆ ਜੀ ਮਗਰ ਸਾਹਮਣੇ ਜਾ ਰਹੀ ਆ ਹਾਂ ਉੱਚੀ ਭਗਤ ਕਰਦਾ ਉਹ ਤਾਂ ਸਾਰੀ ਇਹ ਹਿਸਟਰੀ ਕੱਢਣੀ ਆ ਤੇ ਖੇਤ ਦਾ ਅੰਨ ਖਾਦਾ ਪਾਣੀ ਵੀ ਤੇ ਦਾ ਸਾਰੇ ਹਿਸਟਰੀ ਰੋਲ ਨਹੀਂ ਕੋਈ ਧਰਤੀ ਦਾ ਰੋਲ ਨਹੀਂ ਜੇ ਅੰਨ ਖਾਦਾ ਜਾਗੇ ਬਹਿ ਗਿਆ ਉੱਥੇ ਤਾਂ ਧਰਤੀ ਤੇ ਭਾਰੇ ਸੀ ਜਿੱਤੇ ਅੰਧ ਖਾਂਦਾ ਜਿਹੜੀ ਧਰਤੀ ਨੇ ਉਹ ਤੇ ਦੱਸਣ ਕੀਤੀ ਆ ਉਹ ਜਿੱਤੇ ਬੇਰ ਖਾਦੇ ਨੇ ਕੋਈ ਸਵਾਲ ਖਾਦਾ ਜਰਾ ਦਾ ਉਹ ਤਰਫ ਲਾਉਦੇ ਉਹਨਾਂ ਸਵਾਏ ਮੂਰਖ ਸਰੀਰ ਦਾ ਕੀ ਰੋਡ ਸੀ ਜਿਹੜੇ ਮਾਇਆ ਧਾਰੀ ਨੇ ਉਹ ਮਾਇਆ ਦੀ ਦ੍ਰਿਸ਼ਟੀ ਰੱਖ ਲੈਣੇ ਉਹ ਮਾਇਆ 'ਚ ਉਲਝ ਗਈ ਪੰਡਤ ਉਹ ਅੱਜ ਉਲਝ ਕੇ ਕਰ ਰੋਗਾ ਪ੍ਰਕਾਰ ਦਾ ਗਿਆਨ ਸਰੂ ਕਰੇ ਇੱਕ ਪ੍ਰਕਾਰ ਦਾ ਗਿਆਨ ਚਾਹੀਦਾ بس ਇੱਕੋ ਰੋ ਜਪੋਤੋ ਇਕੋ ਜਾਂ ਜਪੜ ਨੂੰ ਇਕੋ ਨਾਮ ਆ ਗਏ ਤੁਸੀਂ ਇਹ ਤਾਂ ਹਾਸਤਾ ਦੁਆਰਾ ਹੋ ਗਿਆ ਫਿਰ ਉਹ ਤਾਂ ਹੋਰ ਗੱਲ ਹੋ ਗਈ ਇਕੋ ਨਾਮ ਇਹ ਰਲਦਾ ਕਿਸ ਬੰਦਾ ਹਾਂ ਜਿਹੜਾ ਆਪਣੇ ਬੁੱਧੀ ਹੈ ਨਹੀਂ ਨਾ ਇਕੋ ਰਬ ਜਪਣ ਵਾਲੀ ਫਿਰ ਉਹਨਾਂ ਦੀ ਇੱਜ਼ਤ ਕਦੇ ਹੋਵੇ ਮੂਰਖਾਂ ਦੀ ਇੱਜ਼ਤ ਕਦੇ ਹੋਵੇ ਮੂਰਖਾਂ ਇੱਜ਼ਤ ਬਣਾਉਣੀ ਚਾਹੁੰਦੇ ਨੇ ਸ਼ਿਆਣੇ ਨਿਵਣਾ ਚਾਉਂਦੇ ਮੂਰਖ ਚਾਉਂਦੇ ਨਹੀਂ ਜਿੰਦਗੀ ਹੋਵੇ ਰਹਿਣਾ ਵੀ ਮੂਰਖ ਭਾਈ ਬੰਝ ਵਰਗਿਆ ਇੱਜ਼ਤ ਹੋ ਗਈ ਜਿਵੇਂ ਵਸੇ ਜੜ ਪੜ ਗਈ ਜਿਤਨੀ ਹੋਣੀ ਹੈ ਇੱਜ਼ਤ ਮਨ ਬਦਲੇ ਤੇ ਹੁੰਦੀ ਬਾਣੀ ਬਾਣੀ ਨਾਲ ਬਦਰਾ ਇੱਜ਼ਤ ਫਿਰਾਰੇ ਇਹ ਤਾਂ ਸੰਸਾਰ ਦੀ ਜਿੰਦੂ ਪੁੱਛਦਾ ਕੌਣ ਇੱਜਤ ਤਾਂ ਦਰਗਾਹ ਹੋਣੀ ਹੈ ਤਾਂ ਸੰਸਾਰ ਚਾਪੇ ਹੋ ਜਾਂਦੀ ਸਜ਼ਾ ਹੁਣ ਹਣੀ ਕੌਣ ਕੋਈ ਤੇ ਇਹਨੂੰ ਪੁੱਛਿਆ ਭਗਤ ਤੇ ਰਾਜਨ ਨੂੰ ਪੁੱਛਿਆ ਸੰਸਾਰ ਨੂੰ ਜੇ ਸੰਸਾਰ ਦੀ ਇੱਜਤ ਨਾਂ ਬੰਦਾ ਸੰਸਾਰ ਨੂੰ ਲਹਿਾਇਰ ਕਰਦਾ ਅਸਾਂ ਖਬੂਰ ਖੰਦ ਕੋਰ ਅਸਾਂ ਚੋਰ ਆਰਾਮ ਖੋਰ ਕਹਿੰਦਾ ਕਹਤਾ ਤੇ ਸੰਸਾਰੀਓ ਜੋੜ ਤੇ ਨੇ ਆਇਆ ਕਹਦਾ ਹੀ ਨਹੀਂ। ਉਹ ਪਗਦਾ ਢੀ ਗੱਲ ਤੇ ਤਾਂ ਤਬੂ ਸੰਸਾਰ ਔਰ ਸੰਸਾਰੀਆਂ ਦੀ ਕੋਈ ਲੋੜ ਨਹੀਂ ਲੋੜ ਨੇ ਕਰਦੇ ਰਹਿਣ ਕਰਦੇ ਰਹਿਣ ਭਗਤ ਤੇ ਭਗਤ ਕਰਦੇ ਫਿਰਦੇ ਦੇ ਇਹਦਾਸ ਧੱਕੇ ਦੇ ਭਗਤਾਂ ਦੀ ਗੱਲ ਤਾਂ ਇੱਕ ਬਣੀ ਬੰਦ ਉਹ ਦਾਨ ਹੀ ਭਗਤੇ ਦਾ ਰੂਪ ਘਾਹੇ ਦੇ ਉਹ ਨਹੀਂ ਘਾਹੇ ਦੇ ਇਹਨਾਂ ਨੇ ਕਹਿੰਦੇ ਬੰਦਲੀ ਹੈ ਗੱਲ ਨਾ ਨਾ ਨੇ ਨਹੀਂ ਅਜੇ ਤੱਕ ਦੋ ਬੰਦੜੀਆਂ ਸੰਸਾਰੀਆਂ ਦੇ ਜਿਹਨਾਂ ਮੰਡੜੀਆਂ ਉਹ ਕਿੰਨੇ ਅੰਗਰੇ ਆਟੇ ਚ ਡੋੜ ਜਦੇ ਤੋਸ ਹੈਨ ਵਿਰਲੇ ਨਹੀਂ ਕਣੇ بس ਉਹਨਾਂ ਉਹਨਾਂ ਨਾਲ ਉਹਨੂੰ ਤੁੰਗਾਇ ਰਹਿ ਰਿਹਾ ਇੱਥੇ ਤਾਂ ਮੈਂ ਰੁਚੀ ਰਿਹਾ ਜੀ ਰੁਚੀ ਹੈ ਸਿਰਫ ਇਸ ਗੱਲ ਦੀ ਜਿਹਨੂੰ ਇਤਿਹਾਸ ਦੀ ਰੁਚੀ ਹੈ ਉਸ ਸੰਸਾਰੀ ਜਿਹੜੂ ਸੁਰਗ ਦੀ ਇੱਛਾ ਹੈ ਸੰਸਾਰੀ ਦੌਲਤ ਦੀ ਭੁੱਖ ਹੈ ਉਹ ਸੰਸਾਰੀ ਉਹ ਤਨ ਨਹੀਂ ਹੈ ਉਹ ਤਦਰਕੀ ਜੀਵ ਹੈ ਉਹ 달 ਮਿੱਠੇ ਦੀ ਮੱਖੀ ਹੈ ਵਾਇਆ ਦੀ ਮੱਖੀ ਹੈ ਸ਼ਹਿਦ ਦੀ ਮੱਖੀ ਨਹੀਂ ਉਹਰਾਮ ਕੀ ਮੱਖੀ ਨਹੀਂ ਹੈ ਸੋਜੀ ਅਤ ਪ੍ਰਿਆ ਪ੍ਰੀਤ ਸਾਧ ਰਜ ਰਚੈ ਅਤ ਪ੍ਰਿਆ ਪ੍ਰੀਤ ਅਤ ਦੀ ਪ੍ਰੀਤ ਐ ਸਾਧ ਦੇ ਸੋਜੀ ਦੇ ਗਿਆਨ ਨਾਲ ਅਤ ਦੀ ਪ੍ਰੀਤ ਐ ਤੋਂ ਅਤ ਧੰਦੇ ਕਹਾ ਵਿਆਪੇ ਤਾਹੂ ਜੋ ਨਾਲ ਅਤ ਦੀ ਪ੍ਰੀਤ ਐ ਬਸ ਇੱਥੇ ਐਂਡ ਹਾਂ ਐਂਡ ਕੀ ਹੁੰਦਾ ਪ੍ਰੀਤ ਦਾ ਸਵਾਦ ਰਜ ਜੇ ਡੀ ਪ੍ਰੀਤ ਸਾਰੇ ਸੰਸਾਰ ਨੂੰ ਛੱਡਾ ਦੇਵੇ ਉਹ ਆਤਮਿਕ ਪ੍ਰੀਤ ਸਭ ਕੁਝ ਛੱਡਾ ਦੇਵੇ ਸਭ ਕੁਝ ਛੱਡਾ ਦੇਵੇ ਸਭ ਕੁਝ ਮਾਇਆ ਵੀ ਆ ਗਈ ਚੜ ਵੀ ਆ ਗਈ ਕਿਦਰ ਗਿਆ ਜਦੋਂ ਕਿਦਰ ਦੋਇਆ ਸੀ ਪ੍ਰੀਤ ਹਮ ਤੁਮ ਸਭ ਤੋ ਸਭ ਨੂੰ ਅਬਰ ਸਭ ਤੋਂ ਹੋਰ ਕਿਸੇ ਚੀਜ਼ ਨਾਲ ਕਿਸੇ ਵਸਤੂ ਨਾਲ ਜਾਂ ਕਿਸੇ ਬੰਦੇ ਨਾਲ ਫ੍ਰੀ ਨਹੀਂ ਇਹ ਅਤਿ ਫ੍ਰੀ ਤੇ ਹੋਰ ਕਿਸੇ ਵਾਸਤੇ ਕੋਈ ਜਗਾ ਹੈ ਜਿਹਦੀ ਹੋਰ ਕਿਸੇ ਵਾਸਤੇ ਜਗਾ ਹੈ ਨਹੀਂ ਉਹ ਸੰਸਾਰ ਨੂੰ ਕਿੰਨੀ ਘਾਤ ਘੇਰਦਾ ਪਤਾ ਲੱਗਿਆ ਤਾਂ ਉਹ 4-4 ਲੱਖ ਦੇ ਰਬਾਲਿਆਂ ਨਾਲ ਨਹੀਂ ਕੋਈ ਝੂਲ ਵਾਲੇ ਸੱਚਾਣ ਕੋਈ ਬੋਲ ਨਹੀਂ ਰੋਜੀ ਤੇ ਨਾ ਭਗਤਾਂ ਨੂੰ ਇਹ ਚੀਜ਼ ਦਾ ਕੋਈ ਮਤਲਬ ਹੈ ਭਗਤਾਂ ਦੀ ਤਾਂ ਖਰ ਗੱਲ ਨਹੀਂ ਉਹ ਤਾਂ ਸੱਚਾਣ ਦੀ ਗੱਲ ਸੀ ਦੱਸ ਦੇ ਬੋਲੜੀ ਰਾਵੜੀ ਤੁਹਾਡੀ ਮਰਜੀ ਹੈ ਖਰੀਦੀ ਨਹੀਂ ਜਾ ਸਕਦਾ ਪਰਮੇਸ਼ਰ ਦੀ ਸਿਫਤੀ ਖਰੀਦੀ ਨਹੀਂ ਜਾ ਸਕਦੀ ਸਾਰਾ ਕੁਝ ਤਹਾਉਦ ਹੈ ਖਰੀਦਦਾਰ ਕਹਿੰਦਾ ਖਰੀਦਦਾਰ ਦੀ ਇੱਛਾ ਰੱਖਣ ਵਾਲਿਆਂ ਦੀ ਤਾਂ ਮਤ ਪਹਿਲਾਂ ਹੀ ਵਾਰੀ ਹੋਈ ਹੈ ਇਹ ਗ੍ਰੀਡਰ ਦੀ ਇੱਛਾ ਤਾਂ ਮਤ ਪਹਿਲਾਂ ਹੀ ਵਾਰੀ ਹੋਈ ਹੈ ਪਹਿਲਾਂ ਹੀ ਵਾਰੀ ਹੋਈ ਗੱਤ ਨਹੀਂ ਇਹ ਬਤਵ ਦੀ ਇਹਨਰ ਮਤ ਸੀਗੀ ਜੇ ਇਹ ਵਾਰ ਪ੍ਰਗਟ ਹੋਈ ਹੈ ਜਾਗੀ ਹੈ ਤਾਂ ਤਨ ਬਲ ਤਨ ਸਰ ਸੋਪ ਗੁਰ ਕੋ ਤਾਂ ਹੁਕਮ ਅੰਦਰ ਆ ਪਾਈ ਹੈ ਪ੍ਰਾਪਤੀ ਤਾਂ ਹੁਕਮ ਅੰਦਰ ਨਾਲ ਹੋਣੀ ਹੈ ਤਨ ਮਨ ਤਨ ਦੇਣ ਨਾਲ ਵੀ ਕੋਈ ਪ੍ਰਾਪਤੀ ਵੀ ਹੈ ਲੱਕ ਦਦਰ ਹਰੇ ਬੰਨੋ ਕੁਝ ਵੀ ਪ੍ਰਾਪਤੀ ਦੀ ਜਿਹਨ ਹੁਕਮ ਦੀ ਵੀ ਉਹ ਪ੍ਰਾਪਤੀ ਕੇਵਲ ਹੁਕਮੰਦਾਰ ਨਾਲ ਹੈ ਜਿਹੜਾ ਹੁਕਮੰਦਾਰ ਤਨਮਨ ਤੋਂ ਦਿੱਤਾ ਹੋਇਆ ਹੈ ਹੁਕਮ ਮੰਨਿਆ ਜਾ ਸਕਦਾ ਹੈ ਜਾਂ ਤਨਮਨ ਤੋਂ ਦਿੱਤਾ ਹੋਇਆ ਤਨਮਨ ਤਾਨੀ ਨੇ ਦੇ ਤੁਹਾਨੂੰ ਪੁੱਛਿਆ ਜਾਏ ਜਵਾਬ ਦੋਇ ਕਰ ਸਲਾਮ ਦਾ ਮਤਲਬ ਹੈ ਕਿ ਮੈਂ ਤੁਹਾਡੇ ਪਿੱਛੇ ਹਰ ਫਰਮਾਨ ਸਰ ਉੱਤੇ ਤੇ ਜੇ ਲਾਭ ਨਹੀਂ ਨਹੀਂ ਦੋਖਾ ਕੋਈ ਫਰਮਾਨ ਆਇਆ ਫਿਰ ਓਖਾ ਜਵਾਬ ਜਦਿਆ ਆ ਗਿਆ ਇੱਥੇ ਖੜੇ ਆ ਸਿਕ ਖੜਾ ਅਜ ਵੀ ਦੇ ਸਕਦਾ ਕੀਂਤੀ चीज़, पैसा दे सकता है। ਜੀ ਦੋਸ ਇਹੋ ਪ੍ਰਾਪਤੀ ਦਾ ਹੁਕਮ ਦੋਸ की ਕੀ ਅਸਲ ਵਿੱਚ ਬਰਦਾ बदल ਜਾਣਾ ਹੀ ਪ੍ਰਾਪਤੀ ਹੈ ਬਰ ਬਸ ਆਵੇ ਨਾਲ ਕਾਜੇ ਪੂਰਣ ਕਿਰਪਾ ਹੋਏ ਉਹ ਬਰਦਾ ਬਦਲਣਾ ਹੀ ਪ੍ਰਾਪਤੀ ਹੈ ਔਰ ਪ੍ਰਾਪਤੀ ਹੈ ਕੀ ਇਥੇ ਜੇ ਮੰਦੀ ਬਦਲਿਆ ਪ੍ਰਾਪਤੀ ਕੁਛ ਨਹੀਂ ਹੈ ਜੇ ਮਨ ਸਦਾਜ ਰਹਿਣਾ ਚਾਹੁੰਦਾ ਤਾਂ ਨਰਕ ਹੈ ਰੋ ਨਰਕ ਦਾ ਰਾਜ ਕਰ ਲੋ ਤਾਂ ਕੋਈ ਫਰਕ ਨਹੀਂ ਨਰਕ ਚ ਭੀਗ ਉਹ ਉਤਾਰਿਆ ਜਾਂਦੇ ਤੁਹਾਨੂੰ ਤੇ ਸਭ ਕੋਈ ਸਾਨੂੰ ਹਰ ਐ ਸੰਸਾਰ ਦੇ ਵਿੱਚ ਰਾਜ ਵੀ ਦੇ ਦੂਏ ਤਾਂ ਅਸੀਂ ਨੂੰ ਨਹੀਂ ਸਮਝਦੇ ਸੰਸਾਰੀ ਲੋਕਾਂ ਵਡਿਆਈ ਕਰਦੇ ਸਰਦਾਰ ਦੇ ਰਾਜ ਦੀ ਵਿੜਿਆਈ ਸੰਸਾਰੀ ਲੋਕਾਂ ਕੇ ਕਰਨ ਜੇ ਰੋ ਰਾਜ ਦੇ ਤੱਕ ਆ ਬੜਾਈ। ਕਿਆ ਬ। ਪੀਰ ਘਬੜਾਈ ਤਾਂ ਕਿਆ ਕੱਟ ਜਾਏ। ਸੰਸਾਰ ਦੇ ਲੋਕੇ ਦਿੰਦਿਆ ਕਰਨ ਜੇ ਰੋ ਪੀ ਹੋਦ ਲੈ। ਤੇ ਸੰਸਾਰ ਦੀ ਵਿੜਿਆਈ ਦੀ ਤੇ ਸੰਸਾਰ ਦੀ ਦਿੰਦਿਆ ਦੀ ਕੋਈ ਚੰਤਾ ਨਹੀਂ। ਕੀ ਵਰਕ ਬੰਦਾ ਕਰੀ ਜਾਂਦਾ ਦਿੰਦਿਆ। ਲੋਕ ਜਿੰਦ ਦੇ ਵਾਪਰਾ ਜਨ ਬੰਦ ਰਹੀ ਗਿਆ। ਇਹ ਨਾ ਮੈਂ ਕਿਤੇ ਗਿਆਨ ਇਹਨਾਂ ਦੀਦਾ ਕੁਝ ਅੰਨਾ ਕੀ ਦਿੰਦਿਆ ਕਰ ਦੂ ਕੀ ਵੜਿਆਈ ਕਰ ਦੂ ਤਾਂ ਦਿੰਦਿਆ ਕਰ ਦੂਗਾ ਕੀ ਵੜਿਆਈ ਕਰੂ ਇਹ ਕਰਦਾ ਉਹ ਵੀ ਝੂਠੀ ਏ ਤੇ ਝੂਠੀ ਏ ਧੰਦੇ ਕਹਾ ਵਿਆਪੇ ਤਾਹੂ ਧੰਦਾ ਕਹਾ ਵਿਆਪੇ ਤਾਹੂ ਉਹ ਧਰਮ ਦੇ ਵਿੱਚ ਨਿਪੁੰਨ ਹੁੰਦਾ ਹੈ ਧਰਮ ਨੂੰ ਤੱਦਾ ਨਹੀਂ ਬਣਾ ਸਕਦਾ ਉਹਦੇ ਅੰਦਰ ਧਰਮ ਤੱਦਾ ਬਣ ਕੇ ਵਿਆਪਤ ਨਹੀਂ ਹੁੰਦਾ ਧਰਮ ਨੂੰ ਤੱਦਾ ਬਣ ਕੇ ਵਿਆਪਤ ਨਹੀਂ ਹੁੰਦਾ ਉਹਦੇ ਅੰਦਰ ਕਿਵੇਂ ਵਿਆਪਜੂ ਉਹ ਪਰਪੰਚ ਨਹੀਂ ਰਚ ਸਕਦਾ ਪਰਪੰਚ ਰਚਣਾ ਤੱਦਾ ਬਣਾਉਣ ਦਾ ਭਗਤ ਭਗਵਾਨ ਰਹਿਤ ਆਇਆ ਲਫਤਰ ਰਾਂਚ ਬਿਰਲੇ ਕਈ ਨਾਨਕਾ ਜਿ ਜਿਨਾਂ ਜੇ ਜੋਨ ਰਤੇ ਪਰਪੋਨਾਂ ਦੇ ਪਰਪੰਜ ਗੋ ਪਰਪੰਜ ਕਰ ਪਰਤਨ ਲਿਆਵਾ ਸੁਤਦਾਰਾ ਪੈ ਫੌਲ ਰੋ ਬਰਬਰੇ ਭੁੱਲੇ ਕਪੜੇ ਭੁੱਲ ਕੇ ਵੀ ਅੰਤਨ ਵੇੜਾ ਤੇ ਜੀਪੇ ਲਿਜੇ ਉਹ ਤਾਂ ਦੇ ਆਲੇ ਨੇ ਉਹਦਾ ਆ ਕੰਮ ਉਹ ਚਾਹੇ ਸੰਤਰੇ ਚਾਹੇ ਕੋਈ ਜਿਹਨਾਂ ਨੂੰ ਧਰਮ ਤੋਂ ਡਬੜਾ ਉਹਦਾ ਆ ਹਰ ਗੱਲ ਹਰ ਪੁਆਇੰਟ ਕੋਈ ਬਚ ਨਹੀਂ ਸਕਦਾ ਉਹ ਸੱਚ ਮਾਰ ਤੇ ਬਚੋਗੇ ਤੁਸੀਂ ਜਿਹੜਾ ਘਟ ਘਟ ਕੇ ਅੰਦਰ ਕੀ ਜਾਣਦਾ ਉਹ ਤੇ ਬਚੋਗੇ ਅੱਖਾਂ ਬੀਚ ਕੇ ਬੈਠਾ ਰਹੇ ਕਬੂਤਰ ਬਿੱਲੀ ਤੇ ਬੈਠਾ ਰਹੇ ਕੀ ਵਰਕ ਕਰਦੇ ਹਾਂ ਲੱਭੜਿਆ ਹਾਂ ਹਾਂ ਜੀ ਦੋਲੀ ਧੰਦੇ ਕਹਾ ਬਿਆਪੇ ਤਾਹੂ ਜੋ ਇੱਕ ਅਨਕਤੇ ਨ ਜਾਹੂ ਜਿਹੜਾ ਇੱਕ ਨੂੰ ਛੱਡ ਕੇ ਜਿਹੜਾ ਜੋਤ ਨੂੰ ਛੱਡ ਕੇ ਦੇਖੋ ਇੱਕ ਦਾ ਮਤਲਬ ਜੋਤ ਨੂੰ ਛੱਡ ਕੇ ਉਹ ਇੱਕ ਛੜ ਅਨਕਤੇ ਨ ਜਾਓ ਹੋਰ ਕੁਝ ਨੀ ਦੇਖਦਾ ਘਟ ਘਟ ਬੇ ਹਰ ਜੂ ਹੀ ਦੇਖਦਾ ਦੂਈ ਕੀ ਦੀ ਦੂਈ ਬਾਇ ਨਾਮਾਇਆ ਦੀ ਬੜਾਈ ਬਗਵਾਇਆ ਦਾ ਰੰਗ ਨਾ ਰਾ ਬਾਇਰ ਰੂਪ ਨਾਮਾਇਆ ਦਾ ਛੋਟਾ ਨਾਮਾਇਆ ਦਾ ਬੜਾ ਕੋਣ ਕਤੇ ਜਰਦਾਈ ਦੀ ਕਿਸੇ ਅਵਸਥਾ ਚ ਦੇਖਦਾ ਕੀ ਦੇਖਦਾ ਦੇਖੋ ਜੋਤ ਲੋਕ ਮੁਛਾ ਜਾਤੀ ਉਹਨੋਂ ਉਹਦੇ ਬਹੁਤ ਕੁ ਲੈਵਲ ਸੇ ਮਤਲਬ ਹੈ ਕਿ ਕਿੰਨਾ ਇਹ ਵਿਕ ਹੋਇਆਗਾ ਕਿੰਨਾ ਇਹ ਡਿਵੈਲਪ ਕਰਨ ਦੀ ਲੋੜ ਹੈ ਉਹਦੇ ਅਕੰਧੇ ਮਤਲਬ ਹੈ ਸ਼ਕਲ ਤੇ ਕਿਲੇ ਸ਼ਕਲ ਤੇ ਕਿਲੇ ਸ਼ਕਲ ਦਾ ਅਸਤਕਾ ਬਖਰੀ ਵੀ ਸ਼ਕਲ ਡਿਵੈਲ ਕੀਤੀ ਹੋਈ ਹੈ ਸ਼ਕਲ ਡੇਗਰੀ ਸੀ ਅਕੜ ਦੀ ਸੀ ਉਹ ਕਹਿੰਦਾ ਵੇ ਸ਼ਕਲ ਤਾਂ ਜਿਹੜੇ ਦੇਖਣ ਵਾਲੇ ਰਿਗਰੇ ਹੋ ਚਬੜੇ ਨੂੰ ਦੇਖਣ ਵਾਲੇ ਜਵਾਰ ਹੁੰਦੇ ਪੰਡਤਾ ਹੁੰਦੇ ਤਾਂ ਹੀ ਨੂੰ ਜਵਾਰ ਕਹਿੰਦਾ ਸੀ ਉਹ ਵਿੱਚ ਚਬੜੇ ਦੇ ਪਰਸਦਾ ਹੁੰਦੀ ਹੈ ਉਹ ਪੰਡਤ ਕਹਿੰਦੇ ਵੇ ਇਹ ਨੇ ਉਹ ਵੀ ਸਾਡੇ ਜਵਾਰ ਨੇ ਜੰਮਰ ਤੇਰਾ ਉਹਦਾ ਤੇਰਾ ਕਹਿੰਦਾ ਤੇਰਾ ਆਪਣਾ ਜਬਰਪੋਸ ਦਾ ਤੇ ਜਮਾਰ ਹੋੜਾ ਹੀ ਤੇਰਾ ਕਹੇ ਆ ਇਹ ਤੇਰਾ ਬੁੱਧਾ ਰੈ ਜਬਰਪੋਸ ਕਾ ਹੀ ਜਬਰਪੋਸ ਇਹਦੇ ਵਿੱਚ ਬੰਦਰਾ ਰਹਦਾ ਬੰਦੇ ਬੰਦਾ ਜਨ ਬਰੂ ਵੀ ਕਰੀਏ ਜੇ ਜਬਰਪੋਸ ਕਾ ਬੰਦਰਾ ਰਹੇ ਇਹਦੇ ਵਿੱਚ ਰਹਿੰਦਾ ਦੇਦਾ ਜੋ ਜੀਪੀ ਫਾਇਦਾ ਹੋਇਆ ਚਲੋ ਉਸ ਦੇ ਬਦਲੇ ਲੈ ਲੇ ਫਿਰ ਆ ਤਾ ਲਾਉੜੇ ਕੋਲ ਆ ਬੋ ਠੀਕ ਹੈ ਸਾਰੇ ਜੀਵੇ ਚ ਮਾਰੋ ਹਾਂ ਜੇ ਕਿਸੇ ਦਾ ਲਾਉੜੇ ਨੂੰ ਲੱਗਾ ਅਪਲੀਤ ਹੋ ਗਿਆ ਕਿਰਾਸੀ ਦਾ ਕੋ ਜਮਾਲ ਆ ਫਿਰਦੀ ਹੈ ਜੇ ਹੋਰ ਕੋ ਮਾਲ ਮੂਝ ਬੈ ਜਾ ਅਪਲੀਤ ਹੋ ਗਿਆ ਜਾ ਕੇ ਹੀਏ ਦਿਓ ਪ੍ਰਭ ਨਾਮੋ ਕਹਿੰਦੇ ਬੰਮਾ ਬਾਤ ਕਰਾਸ ਚਲ ਬਾਹੂਜ ਪਾਉਂ ਲੁਕੇ ਨੇ ਬਾਪ ਐ ਪਹਿਲਾਂ ਜੱਜਬੇ ਦਾ ਮੂੰਹ ਮਾਸੇ ਦਾ ਜਾ ਕੇ ਹਿਰਦੇ ਵਿੱਚ ਤੇ ਕੋ ਹਿਰਦੇ ਵਿੱਚ ਦਿਮਾਗ ਇੱਤ ਨਹੀਂ ਹੀਏ ਬਿਓ ਪ੍ਰਭ ਨਾਮੋ ਨਾਨਕ ਸਾਧ ਪੂਰਨ ਭਗਵਾਨ ਹੋਇਆ ਉਹ ਸਾਧ ਵੀ ਹੈ ਪੂਰਨ ਭਗਵਾਨ ਵੀ ਹੈ ਭਗਵਾਨ ਭਗਵਾਨ ਕੌਣ ਹੋਇਆ ਭਗਵਾਨ ਦੀ ਫੇਡਗਨੇਸ਼ਰ ਆ ਗਈ ਕਿਹੜਾ ਭਗਵਾਨ ਹੋਇਆ ਬਾਹਰ ਵਿਅਕਤੀ ਰੂਪ ਜੰਦ ਦੇ ਪਰ ਫਿਰ ਵੀ ਭਗਵਾਨ ਗੁਰੂ ਦੀ ਜੀ ਇਸ ਕਰਕੇ ਕ੍ਰਿਸ਼ਨ ਭਗਵਾਨ ਦਾ ਗੁਰੂ ਹੈ। ਮੰਮਾ ਮੰਮਾ। ਰਾਮ ਭਗਵਾਨ ਦਾ ਗੁਰੂ। ਬਿਸ਼ਰੂ ਭਗਵਾਨ ਨੂੰ ਵੀ ਕਹੇ ਵੀ ਗੁਰੂ ਦੀ ਲੋੜ ਹੈ ਉਹ ਕਹਿੰਦੇ ਭਾਈ ਗੁਰੂ ਦੀ ਤਾਂ ਲੋੜ ਪਰ ਇੱਥੇ ਫਰਕ ਕੀ ਹੈ? ਗੁਰੂ ਫਿਰ ਵੱਡਾ ਹੈ। ਭਗਵਾਨ ਭਗਵਾਨ ਗੁਰੂ ਨੇ। ਗੁਰੂ ਨਹੀਂ ਹੁੰਦਾ ਆ ਨਹੀਂ ਹੁੰਦਾ ਗੁਰੂ ਨਹੀਂ ਹੁੰਦਾ ਗੁਰੂ ਦੀ ਫੇਲ ਉਹੜੇ ਗੁਰੂ ਕੋਲ ਹੁੰਦਾ ਭਗਵਾਨ ਕੋਲ ਹੁੰਦਾ ਭਗਵਾਨ ਨਾਲ ਤੋੜ ਹੁੰਦਾ ਸੰਸਾਰੀ ਧਨ ਵਾਲੇ ਨੂੰ ਭਗਵਾਨ ਬੁਲਾ ਰਿਆ ਇੱਥੇ ਇਹ ਹੱਕ ਤੇ ਸੰਸਾਰੀ ਧਨ ਰਾਜੇ ਕੋਲ ਪਈ ਤਾਂ ਹੁੰਦਾ ਹੈ ਹੁੰਦਾ ਉਹਦਾ ਹੁੰਦਾ ਜਿਆਦਾ ਹੁੰਦਾ ਭਗਵਾਨ ਹੈਗਾ ਨਾਂ ਤਾਂ ਆ ਬਸ ਗੁਰਬਾਣੀ ਦਾ ਭਗਵਾਨ ਤਰਵਲ ਉੱਚੇ ਤੇ ਉੱਚਾ ਭਗਵਾਨ ਇਹਨਾਂ ਦੇ ਨੀਵੇਂ ਨੂੰ ਉੱਚੇ ਕਰ ਲੈ ਇੱਥੋਂ ਬੜਤ ਬਾੜੀ ਕਿ ਰੋਟੀ ਖਾਣ ਨੂੰ ਦਿੰਦਾ ਸੀ ਰੱਖਾਂ ਨੇ ਤਾਂ ਬਾਦਲ ਨੂੰ ਭਗਵਾਨ ਬਣਾਉਣਾ ਜਿੱਥੇ ਭਾਈ ਪੈਸੇ ਮਿਲਦੇ ਠੀਕ ਹੈ ਉਹ ਲਾ ਲਾ ਵਿਲੇ ਪੈਸਾ ਦੂਸਰਾ ਦੂਸਰੀ ਖਦਾਈ ਹੈ ਸੰਸਾਰ ਦੀ ਸੰਸਾਰ ਦੇ ਲੋਕ ਬੰਦੇ ਨੇ ਦਸਤ ਪਾਸ਼ਾ ਵੀ ਬੰਦੇ ਨੇ ਪੈਸਾ ਭਗਵਾਨ ਹੈ ਤਨ ਤਨ ਕੋ ਪੱਖੀ ਹੈ ਤਨ ਤਨ ਤਨ ਤਨ ਕੋ ਕਹਿਣਾ ਚਾਹੀਦਾ ਜੀ ਤਨ ਤਨ ਅਧੁਰੂ ਵੀ ਕਹਿੰਦੇ ਨੇ ਜਿਹੜਾ ਨਾਮ ਲੈ ਤਨੂ ਵੀ ਕਹਿੰਦੇ ਨੇ ਕਹਿੰਦੇ ਭਾਈ ਤਨ ਤਨ ਤਨ ਵੀ ਕੋ ਬਾੜੀ ਹੈ ਤਾਨੂੰ ਤਾਨੂੰ ਤਨ ਕੋ ਪਾਕੀ ਹੈ ਆਖੀ ਦਾ ਹੈ ਆਖ ਰਹੇ ਨੇ ਲੋਕ ਆਖੇ ਜਾਂਦਾ ਹੈ ਪਾਕੀਏ ਮੈਂ ਕਹਿਣਾ ਨਹੀਂ ਕਿਆ ਲੋਕ ਕਹਿ ਕੇ ਕਹਿੰਦੇ ਪਾਕੀ ਹੈ ਆਖਿਆ ਜਾਂਦਾ ਹੈ ਜਾਂ ਕੋ ਜਗਤ ਗੁਲਾਮ ਜਗਤ ਗੁਲਾਮ ਗੁਰੂ ਗੁਲਾਮ ਨਹੀਂ ਹੈ ਗੁਰੂ ਗੁਲਾਮ ਨਹੀਂ ਹੈ ਖਰਦਾ ਗੁਲਾਮ ਨਹੀਂ ਹੈ ਸਭ ਦਰਖਤਾਂ ਕੋ ਫਰੇਂ ਲੈ ਟੋਟ ਕਰੇ ਸਲਾਮ ਲੈ ਟੋਟ ਕਰੇ ਸਲਾਮ ਸਲਾਮ ਕਰਦੇ ਸਾਰੀ ਤਾਂ ਸਾਰੇ ਸਿਰਪ ਸਲਾਮ ਕਰਦੇ ਨੇ ਸੰਸਾਰ ਦੀ ਖੁਦਾਈ ਤਾਂ ਹੈ ਇਸ ਕਰਕੇ ਇਹ ਮਤ ਸੰਸਾਰੀ ਮਤ ਬਣ ਕੇ ਰਹਿ ਗਈ ਜਿਹੜੀ ਮਤ ਨੇ ਰਾਜੇ ਨੂੰ ਭਗਵਾਨ ਬਨ ਲਿਆ ਉਦਸ ਸਾਰੀ ਬਤ ਹੋ ਕੇ निराकारी मत नहीं ਬਤ ਦਈ ਰਹੀ ਤੇ ਵੇਦ ਕੀ ਬਾਣੀ ਦਈ ਰਹੀ ਇਹ ਤੋਂ ਬਾਟ ਪਾੜੀ ਗਈ ਪੰਡਤ ਪਾੜੀ ਬਾਹ ਬਾਹ ਇਹ ਤੋਂ ਬਾੜ ਪਾੜੀ ਹੁਣ ਜਿਹੜੇ ਬਾਂਬੜ ਸੀ ਪੰਡਤ ਹੋ ਗਏ ਬ੍ਰਿਗ ਜੀ ਤਾਂ ਹੀ ਕਵੀਰ ਉਹਨਾਂ ਕਰਦਾ ਕੌਰ ਪੱਡਿਆ ਕੱਬ ਕਹਿ ਵਾਂਗਲ ਹੋਏ ਉਹ ਤੁਸੀਂ ਦੁਬਾਰਾ ਬਾਬੜ ਦਾ ਦੋਦ ਬਣ ਗਏ ਤੁਸੀਂ ਤਾਂ ਪੱਡਿਆ ਪੰਡਤ ਰਹੇ ਸੀ ਤੁਸੀਂ ਤਾਂ ਰਾਜਾ ਨੂੰ ਭਗਵਾਨ ਬਣਾਉਂਦਾ ਸੀ ਤੁਸੀਂ ਤਾਂ ਬਾਇਦੇ ਬੁਜਾਰੀ ਹੋ ਗਏ ਹੋ ਹੈਗੇ ਹੋ ਕਹਿ ਕਹਿ ਜਨੂ ਬਦ ਕੋਏ ਕਿਉਂਕਿ ਜਦੋਂ ਖਰਾਬ ਕਰਦਾ ਆਪਣੇ ਆਪ ਨੂੰ ਬਾਬੜ ਬਣ ਮਾੜਾ ਨਹੀਂ ਪਰ ਆਮਰ ਜੋ ਜੋ ਬ੍ਰਹਮਚਾਰ ਸੋ ਬ੍ਰਹਮ ਬੁੜ ਕਈ ਅਧਰ ਵਾਲੇ ਏਡਾ ਬ੍ਰਹਮਚਾਰ ਦਾ ਤੂੰ ਬ੍ਰਹਮ ਜਾ ਛੱਡੇ ਦਿੱਤੀ ਬੱਤ ਬ੍ਰਹਮਚਾਰ ਛੱਡਦੇ ਕ੍ਰਿਸ਼ਨ ਨੂੰ ਉਹ ਵਾਰ ਦਿੱਤੇ ਤੇ ਤੈਨੂੰ ਜੰਮ ਜੁਗ ਦੇ ਰਾਜੇ ਨੇ ਬਾਕੀ ਰਿਹਾ ਗਿਆ ਅਵਤਾਰ ਸ਼ਬਦ ਅਵਤਾਰ ਵੀ ਕੋਈ ਬਹੁਤ ਵਧੀਆ ਕਹਿੰਦਾ ਲੀਖ ਉਹ ਤਾਂ ਸਾਰੇ ਕਾ ਚਮਕਾਰ ਮਾ ਚਮਤਾਰ ਜੇ ਮੈਂ ਪਕਲ ਕੇ ਦੇਸੀ ਉਹ ਤਾਂ ਤੇ ਜਲੂ ਲੈ ਲੇ ਤਰੋਂ ਅੰਬੇ ਨਰਕ ਸੁਰਗ ਉਪਦਾ ਦਰ ਕੀ ਹੈ ਸੁਰਗ ਵਾਲਾ ਜੀਵਨ ਹੋਵੇ ਤਾਂ ਰਸੇ ਜਿਹੜੇ ਕਹਿ ਦੱਸ ਜਿਹੜੇ ਸਾਰੇ ਉਪਦਾ ਤੇ ਕਿਹੜਾ ਗੁਰਮਖ ਹੈ ਉਦਾ ਉਦਾ ਉਤਾਰ ਉਤਾਰ ਦੀ ਤੇ ਤੇ ਰੂਪ ਰਬ ਦੇ ਰੇਖਾ ਉਤਾਰ ਕਿਤੇ ਅਵਤਾਰ ਸਧਾਰ ਤੇ ਪਰੇ ਜੋ ਜਨੂ ਬਨ ਤੇ ਪਰੇ ਅਵਤਾਰ ਹੁੰਦਾ ਹੀ ਅਵਤਰ ਆਏ ਕਹਾ ਤੂੰ ਕਿਦ ਅਵਤਰ ਆਇ ਤੇ ਜਿਹੜੇ ਜਰਮ ਲੈ ਆਇਆ ਜੋ ਉਤਾਰ ਇਸ ਤਰ੍ਹਾਂ ਕਿ पाचਵਾਂ ਉਤਾਰ ਮੱਥਵਾਰ ਸੋਰੇ ਉਤਾਰ 24 ਉਤਾਰ ਦੇ ਅਸੀਂ ਉੱਥੋਂ ਹੀ ਅਵਤਾਰ ਲੈਣੇ ਲੱਗਦਾ ਉੱਥੋਂ ਹੀ ਆਇਆ ਹੋਇਆ ਉਤਾਰ ਕਹਿਣ ਲੱਗੇ ਵਾਹ ਚੰਗੀ ਗੱਲ ਇਹ ਤਾਂ ਕੱਢਿਆ ਸਾਬਤ ਕਰਤਾ ਨਾਲ ਕਵਤਾਰ ਰਹੀ ਹੈ अवतार लो पर। ਲੈ ਅਵਤਾਰ ਦੇ ਤਾਰੀਦਾਂ। ਨਾਕ ਤਾਂ ਜਿਉ ਜਲ ਬਿਜਲਾਇ ਘਟਾ ਲੋ ਤੇ ਜੋਤੀ ਸਭ ਜੋਤ ਬਿਟ ਕੇ ਗਵਰ ਪਾਇ ਬਿਸ਼ਰਾਮ। ਦਵੜਾ ਜਿਹੜਾ ਖਤਮ। ਉਤਾਰ ਤਾਂ ਫੇਰ ਹਉਂਦੇ ਜਾਂਦੇ ਰਹਿੰਦੇ ਨੇ। ਮਿਸ਼ਰੂ ਦੇ ਕਿਨੇ ਅਵਤਾਰ ਹੋਏ ਨੇ? ਹੂੰ। ਉਹਨੇ ਹਉਂਦੇ ਜਾਂਦੇ ਰਹੇ। ਦਿਰਾਕਾਰ ਦਾ ਕੋਈ ਉਤਾਰ ਨਹੀਂ ਹੁੰਦਾ। ਦਿਰਾਕਾਰ ਵੀ ਲੈਣ ਦਖਦੇ ਨਹੀਂ। ਦਿਰਾਕਾਰ ਜੇ ਉਤਾਰ ਲੱਗਦਾ ਹੁੰਦਾ ਉਹ ਸਤਗੁਰੂ ਕੇ ਚਰਨ। ਹੰਗਾਮਾ। ਜਦੋਂ ਉਹ ਅਵਤਾਰ ਧਾਰਦਾ ਤਾਂ ਉਹ ਅਰਾਮ ਗਰਮ ਛੱਡ ਕੇ ਬਾਹਰ ਚਲਾ ਜਾਂਦਾ ਸੁਸਾਸ ਨਹੀਂ ਕਹਿੰਦਾ ਜਦੋਂ ਉਹਦਾ ਅਵਤਾਰ ਧਾਰਦਾ ਚੱਲੁੰਦਾ ਹੈ ਵਿਰਾਂਕਾਰੀ ਅਵਤਾਰ ਹੁੰਦਾ ਚੱਲੁੰਦਾ ਹੈ ਹਰਕਾ ਸੇਵਕ ਦੋ ਹਰ ਗਿਆ ਭੇਦ ਨੂੰ ਜਾਣੋ ਬਰਡਸ ਦੇ ਹੀ ਹੈ ਜਿਹੜੀ ਉਹਦੇ ਕਰਕੇ ਹੁਣ ਤੁਸੀਂ ਉਹਨੂੰ ਵੱਖਰਾ ਲੱਗੂ ਗੋਲ 23 ਦੇ ਨਾਲ ਉਹਦਾ ਕੋਈ ਸਮਝ ਨਹੀਂ ਉਹ ਹੈ ਜਿਹੜੀ ਉਹਦਾ ਸਮਾਵਤਾਰ ਬਣਾਉਂਦਾ ਕੱਟਿਆ ਕੱਟਿਆ ਉਹਦਾ ਉਹਦਾ ਕਪੜਾ ਅੱਡ ਕੀਤਾ ਉੱਥੇ ਉਤਾਰਨ ਦੀਪ ਜੋ ਪੂਜਾ ਹੋ ਰਹੀ ਉਤਾਰਨ ਦੀ ਜੋ ਬੜਿਆਈ ਸੀ ਸੰਸਾਰ ਦੇ ਦਬਾਅ ਦੇ ਫਸਾਈ ਹੋਈ ਸਿੱਧੂ ਬਾਤਰੇ ਉਹ ਸ਼ਾਇਦ ਜ਼ਕਰ ਤੋਂ ਵੀ ਨਹੀਂ ਉਹ ਬਾਣੀ ਦੇ ਦੇ ਕੀ ਵੈਲੂ ਜੇ ਇਹ ਬੋਲਤਾ ਹੈ ਇਹਨੂੰ ਸਮਝ ਨਹੀਂ ਲੱਗੀ ਸਮਝੇ ਪਤਾ ਨਹੀਂ ਸੀ ਦੇ ਬਾਰੇ ਦੇਣ ਲੱਗੇ ਤਾਂ ਸਖੰਚ ਉੱਜੜ ਲੱਗੇ ਬੋਲੇ ਬੋਲੇ ਵਿਸ਼ਨੂ ਦਾ ਦਰ ਕਰੂ ਜੇ ਵਿਸ਼ਨੂ ਦਾ અવਤਾਰ ਬਣਿਆ ਤਾਂ ਉਹਨੂੰ ਵੱਡਾ ਕਰਤਾ ਦਰ ਕਰੂ ਤਾਂ ਇਹਨੇ ਬਰਦਾਸ਼ਤ ਕਰ ਲਿਆ ਹੋੜ ਵਿਦਵਾਨ ਕੁਲੂ ਰੋਗ ਹੋ ਰਿਹਾ ਬਦ। ਐਂ ਤਾਂ ਜਾਣਦੇ ਰਹੇ ਵੀ ਤੂੰ ਬੱਤੋ ਸੀ। ਇਹਨਾਂ ਦੇ ਨਾਲ ਨਹੀਂ ਚੱਲਦਾ। ਪਰ ਆ ਢੋੜਦਾ ਵੀ ਪਤਾ ਵੀ ਕਿਵੇਂ ਆ ਢੋੜ। ਆੜ ਤਾਂ ਹੈਗੇ ਨੇ ਅਸੀਂ ਅੱਧੇ ਨਾਲ ਕਿੱਥੇ? ਪਰ ਫਸੇ ਹੋਏ। ਜਿਹੜੀਆਂ ਖਦਾਬਾ ਪੜਦੇ ਨੇ ਫਸੇ ਹੋਏ ਹੁੰਦੇ ਛੱਲੇ ਨੇ। ਉੜ ਜੇ ਉਹ ਕਿਤਾਬਾਂ ਪੜ੍ਹ ਕੇ ਆ ਉੜ ਜੇ ਬੈਠੇ ਆ ਉੜ ਬੈਠੇ ਦੇ ਦੀ ਸਿੱਧੀ ਉਹਨਾਂ ਨੇ ਗੁਰਬਾਣੀ ਨੂੰ ਸਮਝੇ ਤੇ ਗੁਰੂ ਈ ਬਾਰੇ ਲਿਖਣ ਲੱਗੇ ਹਾਂਜੀ ਹਾਂ ਜਾ ਕੇ ਨਾਨਕ ਸਾਧ ਪੂਰਨ ਭਗਵਾਨ ਉਹ ਸਾਧਾ ਪੂਰਨ ਭਗਵਾਨ ਇਹ ਨਾਮ ਉਹ ਘੱਟ ભગવાન ਮੀਨ ਤੇ ਆਪਾਂ ਨੂੰ ભગવાન ਕੱਟ ਵੀ ਇਹ ਤੇ ਘੱਟ ਘੜੇ ਹੁੰਦੇ ਨੇ ਜਿਹੜੇ ਸਭ ਵੀ ਦੇ ਅਖਿਆਲੀ ਹੋ ਵੀ ਤੇ ਨਾਮ ਨਹੀਂ ਹੈ ਇਹਦਾ ਨਾਮ ਕੀ ਤੇਨਰ ਗੁਨੀ ਕੀ ਹੀ ਤੇਸਦ ਬਸ ਕਾ ਦਾ ਰੋ ਪਕੀਰ ਜਿਸਕੇ ਰਦੇ ਤੂੰ ਬਸ ਤੇਨਰ ਗੁਨੀ ਬਸ ਹੈ ਗਿਆਨੇ ਰਸਿਆ ਭਗਵਾਨ ਭਗਵਾਨ